ਤੂੰ ਦਮਤੇ ਕਾਰਨ ਕਰੀ ਲਈ ਸ੍ਰਿਸ਼ਟੀ ਦੇ ਰਚਨਾ ਦਾ ਕਾਰਨ ਕਾਰਨ ਕਾਰਨ ਪ੍ਰਭੂ ਇੱਕ ਹੈ ਦੂਸਰ ਨਹੀਂ ਕੋਈ ਕਾਰਨ ਜਿਹੜਾ ਹੈ ਉਹ ਤੇ ਕਰਨ ਵਾਲੀ ਤੂੰ ਕਾਰਨ ਕਰੀ ਲਈ ਕਰਮ ਗਹਿਲੀ ਲਫ਼ਜ਼ ਤੇ ਵਰਤਿਆ ਉੱਥੇ ਗਹਿਲੀ ਵਰਤੇ ਆਦ ਦੇ ਵਿੱਚ ਕਵੀਲ ਨੇ ਗਹਿਲੀ ਵਰਤੇ ਗਹਿਲੀ ਗਹਿਲੀ ਤੋਂ ਉਲਟ ਹੁੰਦਾ ਇਹ ਗਰਭ ਗਹਿਲੀ ਤੇ ਗਰਭ ਨੂੰ ਫੜਿਆ ਇਹਨੇ ਗਰਦਨ ਤੋਂ ਕਾਰ ਨੂੰ ਫੜਿਆ ਬੋਦੀ ਤੋਂ ਉੱਥੇ ਕਾਰ ਦਾ ਆਤਮਾ ਨੂੰ ਫੜਿਆ ਹੈ ਸਖੀ ਸਹਿਲੀ ਨੰਦ ਗਹਿਲੀ ਗਹਿਲੀ ਗੈਲੀ ਫੜਲੀ ਉਹ ਗਹਿਲੀ ਐ ਇਹ ਗਹਿਲੀ ਐ ਗਹਿਲੀ ਦਾ ਮਤਲਬ ਹੈ ਮਤਲਬ ਉਹਨਾਂ ਨੂੰ ਆਇਆ ਨੇ ਫੜ ਲਿਆ ਗਰਭ ਨੇ ਉਹਨਾਂ ਨੂੰ ਘਰਸ ਲਿਆ ਕਲਪਣਾ ਨੇ ਉਹਨਾਂ ਨੂੰ ਘਰਸ ਲਿਆ ਇੱਥੇ ਐ ਇਹਨੇ ਕਲਪਣਾ ਨੂੰ ਘਰਸ ਲਿਆ ਗਰਭ ਗਹਿਲੀ ਹੁਕਾਰ ਕਲਪਣਾ ਹੀ ਹੈ ਹੁਕਮ ਦਾ ਅਵरोध ਕਰ ਰਹਾ ਹੈ ਜੋ ਖਿਆਲ ਸਾਡੇ ਖਿਆਲ ਪੈਦਾ ਹੁੰਦੇ ਨੇ ਹਕੂਮਤ ਦੇ ਵਿਰੋਧ ਉਹੀ ਗਰਭ ਹੈ ਮੈਂ ਕਰੂੰਗਾ ਮੈਂ ਕਰ ਸਕਦਾ ਇੱਥੇ ਇਹਨੂੰ ਅਦੀ ਬੋਲਤੀ ਹੋਈ ਬਦ ਕਰ ਫੜ ਲੈਣ ਤੂੰ ਨਹੀਂ ਕਰ ਸਕਦਾ ਤੂੰ ਕੁਛ ਹੈ ਗਰਭ ਨੂੰ ਫੜ ਲੈਣ ਇਹ ਇਹ ਹੀ ਲీల ਹੈ ਕਾਰਨ ਕਰੀਲੀ ਗਰਭ ਘੇਲੀ ਗਰਭ ਘੇਲੀ ਗਰਭ ਨੂੰ ਫੜ ਲਦੀ ਗਰਭ ਨੂੰ ਠਣੇ ਨਹੀਂ ਨਦੀ ਫੜ ਕੇ ਉੱਤੋਂ ਗਰਭ ਦੇ ਸਰ ਤੇ ਹੱਥ ਰੱਖ ਦਿੰਦੀ ਹੈ ਉਹ ਜਿਹੜਾ ਸਰ ਤੇ ਹੱਥ ਰੱਖਿਆ ਉਹ ਮਨ ਨੂੰ ਠੜੀ ਦਿੰਦਾ ਹੱਥ ਅਸਲ ਚ ਉੱਠਦਾ ਨਾ ਉਹ ਤੈਨੂੰ ਉੱਠੇ ਨਹੀਂ ਸਕਦਾ ਖਰਕਾ ਪੈਖੜ ਛੱਡਿਆ ਹੋਇਆ ਹੈ ਜਾਂ ਉੱਪਰ ਲਾਦਾ ਉੱਪਰ ਹੱਥ ਰੱਖਤਾ ਖਰਕਾ ਪੈਖੜ ਤਾਂ ਛੱਡਿਆ ਜਾਂ ਉੱਪਰ ਲਾਦਾ ਲਾਦਾ ਉੱਪਰ ਲੱਤਾਂ ਤੇ ਬੋਝ ਉੱਠਦਾ ਹੀ ਨਹੀਂ ਬੋਝ ਅੱਜ ਉਹ ਅੱਜ ਦੇਖ ਰਿਹਾ ਸਭ ਕੁਝ ਹੋਤਾ ਰਿਹਾ ਹੁਕਮ ਨਾਲ ਤੇ ਅਦੋਂ ਦੇਖਣੇ ਲੱਗ ਗਿਆ ਫਿਰ ਉਹਨੇ ਬੋਲਣਾ ਹੀ ਕੀ ਜਿਨਾ ਜਰ ਪੜਦੇ ਸੀ ਗੱਲ ਉਹਨਾਂ ਜਰ ਭਰਮ ਸੀਗਾ ਜਾਂ ਪੜਦੇ ਚੱਕਿਆ ਜਾਂ ਭਰਮੇ ਨਹੀਂ ਰਿਹਾ ਫਿਰ ਉਹਨੇ ਕਾਸ ਨੂੰ ਉਠਣਾ ਸੀ ਫਰਦਾ ਪਰਮ ਦਾ ਕਟਿਆ ਗਿਆ ਕਾਰਨ ਕਰੀਲੀ ਗਰਭ ਗਿਲੀ ਗਰਭ ਤੋਂ ਪ੍ਰਹਾਰ ਕਰਦੀ ਹੈ ਗਰਭ ਗੇਲੀ ਜੋਤ ਜਤੀਲੀ ਜੋਤ ਜਤੀਲੀ ਜੋਤ ਕਿ ਸੱਚ ਕਿੰਨੀ ਵੀ ਹੋਵੇ ਤੇ ਗਰਭ ਦੇ ਪਿੱਛੇ ਵੀ ਅਕਲ ਹੁੰਦੀ ਹੈ ਗਰਭ ਦੇ ਪਿੱਛੇ ਵੀ ਅਕਲ ਹੈ ਜਿੰਨਾ ਆਜਵਾ ਆਦਮੀ ਅਕਲਮੰਦ ਹੋਊ ਸੰਸਾਰ ਚ ਗਰਭ ਜ਼ਿਆਦਾ ਹੋਊਗਾ ਸੰਸਾਰੀ ਜਿੰਨੀ ਅਕਲ ਆ ਉਹਦੇ ਪਿੱਛੇ ਉੱਡਾ ਹੀ ਵੱਡਾ ਗਰਭ ਹੋਊਗਾ ਜਿੱਡਾ ਵੱਡਾ ਕੋਈ ਅਫਸਰ ਹੋ ਉਹਦਾ ਹੀ ਵੱਡਾ ਘਰ ਬਹੁ ਜਿੱਡਾ ਵੱਡਾ ਹੋਏ ਰਾਜਾ ਹੋ ਉਹਦਾ ਹੀ ਵੱਡਾ ਘਰ ਬਹੁ ਜਿੱਤੀ ਵੱਡੀ ਕਿਸੇ ਕੋਈ ਪਾਵਰ ਹੋ ਪਾਵਰ ਵੀ ਅਕਲ ਨਾਲੇ ਮਿਲਦੀ ਏ ਜਿੱਡਾ ਵੱਡਾ ਕੋਈ ਵੈਦ ਹੋ ਉਹਦਾ ਵੱਡਾ ਘਰ ਬਹੁ ਜਿੱਡਾ ਵੱਡਾ ਕੋਈ ਵਕੀਲ ਹੋ ਉਹਦਾ ਹੀ ਵੱਡਾ ਘਰ ਬਹੁ ਜਿੰਨਾ ਵੱਡਾ ਕਿਸੇ ਕੋਈ ਹੁਨਰ ਹੋ ਡਾਕਟਰ ਹੋ ਉਹਦਾ ਹੀ ਵੱਡਾ ਘਰ ਬਹੁਤ ਪਿੱਛੇ ਵੀ ਅਕਲ ਕੰਮ ਕਰਦੀ ਜਿੰਨੀ ਜ਼ਿਆਦਾ ਕਰਮ ਉਹ ਨਾ ਜ਼ਿਆਦਾ ਕਰਮ ਉਹ ਉਹਦੀ ਜ਼ਿਆਦਾ ਬੈ ਹੋ ਜਿੱਡਾ ਵੱਡਾ ਕੋਈ ਵਿਦਵਾਨ ਹੋ ਉਹਦੇ ਵੱਡਾ ਕਰਮ ਉਹ ਇਸ ਕਰਕੇ ਕਰਮ ਉਹ ਕੋ ਵਿਦਵਾਨ ਨਹੀਂ ਹੁੰਦੇ ਵਿਦਵਾਨ ਨਹੀਂ ਹੁੰਦੇ ਇਹਨਾਂ ਨੂੰ ਸਮਝ ਆਏ ਵਿਦਵਾਨ ਕਿਉਂ ਨਹੀਂ ਹੁੰਦੇ ਵਿਦਵਾਨਾਂ ਨੂੰ ਕੀ ਬਿਮਾਰੀ ਹੁੰਦੀ ਹੈ ਇਹ ਵੀ ਇਹਨਾਂ ਨੂੰ ਪਤਾ ਹੁੰਦਾ ਜਿਹੜੇ ਆਦਮੀ ਸਮਝਦਾਰ ਨੇ ਉਹ ਸੰਤਰ ਭਗਤ ਨਹੀਂ ਕਹਉਦੇ ਜੇ ਉਹਨੂੰ ਕਹਿਵੇ ਆਉਜੀ ਸੰਤ ਜੀ ਉਹ ਕਹਾਂ ਵੀ ਦੋ ਜੁੱਤੀਆਂ ਮਾਰ ਲੈ ਪਰ ਸੰਤ ਨਾ ਕਹੇ ਭਾਵੇਂ ਤੂੰ ਵੀ ਇਹ ਮੈਂ ਕਹਿੰਦਾ ਨੇ ਜਿਹੜੇ ਸਿਆਣੇ ਨੇ ਵੀ ਭਾਈ ਤੂੰ ਦੋ ਵਾਲਾ ਘੜ ਲੈ ਮੈਨੂੰ ਭਗਤ ਨਾ ਕਹੇ ਪਰ ਇਹ ਗੁਰੂਆਂ ਨੇ ਕਿਹਾ ਜੀ ਸਾਨੂੰ ਗੁਰੂ ਨਾ ਕਹੋ ਜਿਹੜਾ ਕਹੂਗਾ ਨਰਕਾ ਚਲਾ ਜਾਊਗਾ ਗੁਰੂ ਤਾਂ ਪਰਮੇਸ਼ਰ ਦਾ ਪਰਮੇਸ਼ਰ ਆਪ ਹੈ ਗੁਰੂ ਹਰਿਨਾਮ ਪ੍ਰਮਾਤਮਾ ਦਾ ਸ਼੍ਰੀ ਗੁਰੂ ਇਹ ਲੋਕਾਂ ਨੂੰ ਕੀ ਪਤਾ ਆਮ ਆ ਪਬਲਿਕ ਨੂੰ ਸਿੱਖਾਂ ਨੂੰ ਵੀ ਕੀ ਪਤਾ ਅਸਲ ਦਾ ਸਮਝ ਆ ਰਹੀ ਹੈ ਮੂਰਖ ਨੇ ਇਹਨਾਂ ਨੂੰ ਕੀ ਪਤਾ ਕਿਉਂ ਕਿਹਾ ਸੀ ਉਹਨਾਂ ਨੇ ਇਹ ਕੀ ਜਾਲ ਵਾਲੇ ਭੇਦ ਰੂਏ ਭੇਦ ਕੀ ਅਸਲ ਧਰਮ ਕੀ ਚੀਜ਼ ਹੈ ਇਹ ਜਾਣਦੇ ਨਹੀਂ ਉਹ ਪਬਲਿਕ ਦਾ ਮਸਲਾ ਹੀ ਨਹੀਂ ਹੁੰਦਾ ਪਬਲਿਕ ਦਾ ਧਰਮ ਕੀ ਭਗਤਾਂ ਦੇ ਸਾਰੀਆਂ ਜੋੜ ਕੇ ਦੇਣਾ ਆ ਇਹ ਸੰਸਾਰੀ ਆਦਮੀ ਉਹ ਭਗਤਾਂ ਦੀ ਗੱਲ ਇਨਾ ਦਰੋਂ ਦਾ ਮੇਲੇ ਹੀ ਨਹੀਂ ਕਿਤੇ ਗਰਭ ਕੀ ਹਿਲੀ ਜੋਤ ਜਤੀਲੀ ਜਿੱਡਾ ਵੱਡਾ ਗਿਆਨ ਓਟਾ ਗਰਭ ਜਿੰਨਾ ਵੱਡਾ ਪੈਸਾ ਓਟਾ ਵੱਡਾ ਗਰਭ ਜਿੱਡਾ ਵੱਡਾ ਆਦਮੀ ਓਟਾ ਵੱਡਾ ਗਰਭ ਔਰ ਗਰਭ ਦੀ ਦੌੜ ਤੇ ਲੱਗ ਰਹੀ ਐ ਦੁਨੀਆਂ ਵੱਡਾ ਵੱੜਨਾ ਦਾ ਸਕਾਰ ਵੱਡਾ ਕਰਨਾ ਇਸੇ ਕਰਕੇ ਦੁਨੀਆਂ kia ਬੜਿਆਈ ਅੱਗੀ ਸੇਤੀ ਜਾਲ ਗੁਰਬਾਣੀ ਇਹ ਕਹਿ ਰਹੀ ਐ ਇਹ ਦੁਨੀਆ ਦੀ ਵਿੜਾਈ ਖਾਤਰ ਲੜਾਈਆਂ ਕਰਦੇ ਨੇ ਸਿੱਖਣ ਲਈ ਕਿ ਇਹ ਵੱਡਾ ਹੁੰਦੀ ਸੰਸਾਰ 'ਚ ਇਹ ਨਹੀਂ ਹੈ ਗੁਰਮਤਿ ਦੀ ਲੜਾਈ ਗੁਰਮਤਿ ਦੇ ਖਿਲਾਫ ਹੈ ਗੱਲ ਸੰਸਾਰ 'ਚ ਵੱਡਾ ਹੋਣਾ ਬਨ ਦਾ ਸਭ ਗੁਰਮਖਾ ਦਾ ਕਬੂਲ ਹੈ ਕਿ ਤੜਾਈ ਨਹੀਂ ਨੀ ਵਹੜੂ ਦਿਖਾਵੇ ਵਾਸਤੇ ਨਹੀਂ ਨੀ ਵਹੜੂ ਓਏ ਜੋਤ ਜਤੀਲੀ ਜੋਤ ਜਤੀਲੀ ਜੋਤ ਕਿਸੇ ਚਿੱਟੇ ਵੱਡੀ ਹੋਵੇ ਕੱਡੀ ਵੀ ਵੱਡੀ ਆ ਕਰ ਉਹਨੂੰ ਜਿੱਤ ਲੈਂਦੀ ਹੈ ਜੋਤ ਦੇ ਨਹੀਂ ਪੈਰ ਖੜਦੇ ਸੰਸਾਰੀ ਅਕਲ ਦੇ ਦੇ ਮੂਰੇ ਨਹੀਂ ਪੈਰ ਖੜਦੇ ਚਾਹੇ ਕਹੇ ਜੀ ਵੀ ਹੋਵੇ ਇਹ ਬੰਬੇ ਬੁੱਧੀ ਉਸ ਸੰਸਾਰੀ ਅਕਲ ਇਹ ਦੇ ਮੂਰੇ ਖੜੂ ਉਹ ਫੁੱਲ ਲਾਈਟ ਉਹ ਤਾਂ ਕਈ ਕਰੋੜਾਂ ਸੋਰਜਾ ਜਿੰਨੀ ਲਾਈਟ ਹੈ ਅਤਨਾ ਸੂਰਜਵਰੀ ਲਾਈਟ ਦਾ ਖੈ ਨਹੀਂ ਹੈ। ਕੋ ਦੇ ਨਾਲ ਕਿਸੇ ਦਾ ਕੋਈ ਮੁਕਾਬਲਾ ਨਹੀਂ ਜੋਤ ਨਾਲ। ਸੱਚ ਨਾਲ ਕਿਹਦਾ ਮੁਕਾਬਲਾ? ਸੱਚ ਨਾਲ ਕੋਈ ਮੁਕਾਬਲਾ ਨਹੀਂ। ਕੋਕਾ ਕੋੜਿਆ ਦੀ ਜੋਤ ਹੈ ਸਾਡੀ ਬੁੰਦੀ ਕੋੜੇ ਤੇ ਕੂੜ ਫਸਿਆ ਬੁੰਦੀ ਚ। ਜੋਤ ਨੂੰੜ ਕੋਸਤ ਹੈ ਬੁੰਦੀ ਦੇ ਵਿੱਚ ਜਨਰੇਟਰ ਬਿਕਸ ਉਹ ਬੁੰਦੀ ਸਾੱਤੀ ਬੁੰਦੀ ਨਾਲ ਸਚੈਰੀ ਨਾਲ ਨਹੀਂ ਲੜ ਸਕਦੀ। ਸਚੈਰੀ ਦਾ ਸਬਣਾ ਨਹੀਂ ਕਰ ਸਕਦੀ। ਉਸ ਜਿਆਰੀ ਬੁੱਧਾ ਐ ਕੁੜਿਆਰੀ ਇਹਨਾਂ ਦਾ ਦੋਨਾਂ ਦਾ ਕੋੜ ਦਾ ਕੀ ਮੁਕਾਬਲਾ ਸਤਿਨਾਮ ਤੁੰਦ ਮਤੇ ਤੁੰਦ ਮਤੇ ਬੋਤੇ ਮਤੇ ਜਿਹੜੀ ਤੇਜ ਹੈ ਕਿਦੋਂ ਮੁਕਾਬਲਾ ਨਹੀਂ ਸ਼ਸਤਰ ਚਮਕਣੀ ਅਸਟਾਇਦ ਨੂੰ 8 ਹਥਿਆਰ ਲਿਖਿਆ ਨੇ ਠੀਕ ਆ ਹਥਿਆਰ ਨੇ ਪਰ ਇਹ ਜਿਹੇ ਹਥਿਆਰ ਨਹੀਂ ਪਹਿਲੀ ਗੱਲ ਤਾਂ ਇਹ ਜਾਂ ਲੜਾਈ ਤਾਂ ਹੋ ਰਹੀ ਹੈ ਇਹ ਗਿਆਨੀ ਚਰਚਾ ਦੀ ਉਹ ਤੇ ਤਾਂ ਅੰਦਾਜ਼ਾ ਕੀ ਕਬ ਇਹ ਲੜਾਈ ਨੂੰ ਸੰਸਾਰੀ ਲੜਾਈ ਕਿਰਦਾ ਬਖੂਲ ਸੱਚੀ ਵਿੱਚ ਖੂਨ ਨਿਕਲਦਾ ਸੱਚੀ ਵਿੱਚ ਦੇ ਤੀਰ ਚੱਲਦੇ ਨੇ ਸੱਚੀ ਵਿੱਚ ਦੇ ਤਲਵਾਰਾਂ ਚੱਲਦੀਆਂ ਨੇ ਸੱਚੀ ਵਿੱਚ ਤੁਹਾਨੂੰ ਉਹ ਨਹੀਂ ਅੰਦਾਜ਼ਾ ਤਲਕ ਚੜਾਇਆ ਸਤ ਕਾ ਜਸ ਅੰਦਾਜ਼ਾ ਵਾਲ ਲਿਖਿਆ ਤਾਂ ਹੋਇਆ ਕਾਦੇ ਵਾਸਤੇ ਕਲਮੇ ਤੂੰ ਹਜ਼ਾਰ ਚੜੇ ਹੋ ਰਹਾ ਪਾਲ ਨੂੰ ਦੇ ਨਾਸ ਕਰਨ ਵਾਸਤੇ ਐਨੇ ਆਦ ਦੇ ਵਿੱਚ ਵੀ ਲਿਖਿਆ ਹੋਇਆ ਹੈ ਕੋਈ ਗੱਲ ਇੱਥੇ ਇਹ ਗਿਆਨ ਚਰਚਾ ਦੀ ਲੜਾਈ 'ਚ ਦੁਹੇ ਦੇ ਭਰਮ ਦਾ ਨਾਸ ਕਰੀਦਾ ਹੁੰਦਾ ਸੰਸਾਰ ਦੇ ਭਰਮ ਦਾ ਨਾਸ ਕਰੀਦਾ ਇਹ ਪਹਿਲਾਂ ਤਾਂ ਆਇਦ ਹੈ ਆਇ ਉਦ ਨਹੀਂ ਉਹ ਆਇ ਉਦ ਹੁੰਦਾ ਇੱਥੇ ਆਇਦ ਨੂੰ ਸਾਰੀ ਉਹ ਆਇ ਹੁੰਦਾ ਸ਼ਾਸਤਰ ਜੁਦ ਵਾਸਤੇ ਇਹ ਅਠ ਗੋੜਨਾ ਹੈ ਅਠ ਆਇਦ ਉਹ ਤਾਂ ਇਹ ਤਾਂ ਨੇ ਗੁਰ ਜਪਕਦੇ ਹੁੰਦੇ ਨਾ ਫਸਟਾਇ ਤੇ ਚਮਕਣੀ ਗੁਰ ਚਮਕਦੇ ਹੁੰਦੇ ਨਾ ਉਹ ਜਿਹੜੇ ਗੁਰ ਚਮਕਦੇ ਨੇ ਅੱਠ ਪਾਸਿਆਂ ਦੇ ਸੋਕਰ ਨਿਕਲਦਾ ਕੀ ਹੈ ਕੱਠਾ ਰਾਸ ਜਿਆ ਗੰਨੇ ਲਾਏ ਤੇ ਪੀੜੇ ਤੇ ਉਹ ਨਿਕਲਦਾ ਗੁਰਪ੍ਰਸਾਦ ਪ੍ਰਾਪਤੀ ਕੀ ਹੈ ਗੁਰਪ੍ਰਸਾਦ ਦੀ ਗੁਰਪ੍ਰਸਾਦ ਕੀ ਹੈ ਗਿਆਨ ਨ ਕੋ ਪ੍ਰਸਾਦ ਜਾਦਾ ਠੇਕੋ ਨੂੰ ਵਿਚਾਰੇ ਗੁਣ ਵਿਚਾਰੇ ਗਿਆਨੀ ਸੋਏ ਜਿਹੜਾ ਇਹਨਾਂ ਅਠਾ ਉਹਨਾਂ ਨੂੰ ਵਿਚਾਰੂ ਹੋ ਗਿਆ ਨਹੀਂ ਗੁਣਾਂ માં ਗਿਆਨ ਪ੍ਰਾਪਤ ਹੋਇ ਪ੍ਰਾਪਤੀ ਹੋ ਗੁਰਪ੍ਰਸਾਦ ਗਿਆਨ ਉਹ ਗੁਰਪ੍ਰਸਾਦ ਦਾ ਪ੍ਰਾਪਤੀ ਹੈ ਨਾ ਅਠਾ ਚੋਂ ਇਹਦੇ ਵਿਚੇੜਲੀ ਜਾਂਦੇ ਨੇ ਲੜੀ ਜਾਂਦੇ ਨੇ ਜੁੜੀ ਬੋਲਵਾੰਤਰ ਕਥਾ ਤਾਂ ਕਾਲ ਸੱਚ ਵਿੱਚ ਆ ਜਾਊਗਾ ਜੇ ਪਤਾ ਹੋਵੇ ਤਾਂ ਪਤਾ ਹੋਵੇ ਪਤਾ ਇਹ ਵੀ ਗੱਲ ਕੀ ਹੈ ਇਹ ਕੋਈ ਕਹੇ ਜਨਾ ਸਾਚੂ ਆ ਸਾਡੇ ਵਿੱਚ ਕੋਈ ਕਹੇ ਉਹ ਸ੍ਰੋਕ ਵਿੱਚ ਨਹੀਂ ਹੈ ਕੋਈ ਕਹੇ ਜਨਾ ਬੂਲ ਮੰਤਰ ਗੁਰਪ੍ਰਸਾਦ ਸਿੰਘ ਦਾ ਵੰਦੇ ਰਹੇ ਪਰ ਅੱਠ ਵਖਰੇ ਨੇ ਵਖਰੇ ਕੀ ਕਾਇਆ ਤੇ ਅੱਠ ਨੇ ਉਹ ਦੱਸ ਕਾਇਆ ਦੱਸੋ ਕਿ ਤੇ ਬਰੋ ਕੀ ਕਿਹਾ ਸੀ ਗੁਰਮੀਰ ਨੇ ਇਸ ਵੀ ਅਸਥਾਤ ਕੀ ਕਾਇਆ ਉਹ ਕਾਇਆ ਕਿੱਥੇ ਆ ਉਸ 레ਵੀ ਦੀ ਉਹ ਕਾਇਆ ਉਸੇ ਦੀ ਗੱਲ ਚੱਲਦੀ ਹੈ ਜਿਹਦੀ ਕਾਇਆ ਹੈ ਜਿਹੜੀ ਅਸ਼ਮੀ ਅਸ਼ਧਾਤ ਕੇ ਕਬੀਰ ਨੇ ਕਾਇਆ ਕਹੀ ਸੀ ਉਸੇ ਦੀ ਗੱਲ ਚੱਲਦੀ ਐ ਕੋਈ ਨਵੀਂ ਗੱਲ ਨਹੀਂ ਐ ਇਹ ਉਹੀ ਕਾਇਆ ਲੜ ਗਈ ਐ ਔਰ ਕਲ ਖੋਰ ਕੀ ਕਰਦੇਗੇ ਤਾਂ ਵੇ ਅਕਲ ਉਹ ਮਹਨਤ ਆਇਆ ਅਕਲ ਕਲ ਰਹਤ ਕਲ ਉਹਦੀਏ ਸ਼ਰੀਰ ਦੀ ਉਹਦੇ ਵਿੱਚ ਕੀ ਆ ਉਹਦੇ ਵਿੱਚ ਐ ਜੋਤ ਕਰਤਾ ਪਰਖ ਆਪ ਆਇਆ ਮਹਨਤ ਕੀ ਆ ਦੀ ਖਿਆਨ ਨਾਮ ਦਾ ਉਹਦੇ ਤੌਰ ਕੀ ਅਤਮ ਗਿਆਨ ਦਾ ਖਜ਼ਾਨਾ ਇਹ ਅਸ਼ਟਮੇਸ ਦਾਸ ਕੀ ਕਹਾਇਆ ਕਬੀਰ ਨੇ ਕਹਿ ਤਾਂ ਦਿੱਤਾ ਪਰ ਦੱਸਿਆ ਨਹੀਂ ਹੁੰਦੀ ਕੀ ਗੇ ਗੁਰੂ ਨਾਨਕ ਨੇ ਬਣਾ ਕੇ ਰੱਖ ਦਿੱਤੀ ਕਹਾਇਆ ਮੂਰੇ ਇੱਕ ਦੇ ਨਾਲ ਕਾਇਆ ਹੀ ਉਹਦੀ ਜੋੜੀ ਹੋਈ ਇੱਕ ਕੀਆ ਇੱਕ ਆਇ ਕਾਇਆ ਇੱਕ ਦੀ ਅਸ਼ਟਾਦਦੀ ਹੈ ਅਸ਼ਟਾਤੂ ਤਾ ਤੂ ਲਾਭਾਠ ਤਾ ਤੂ ਤੇ ਸ਼ਬਦ ਬਣਦਾ ਇੱਕ ਤੇ ਅਸੀ ਤਾ ਟੂਗਾ ਅੱਠ ਪੱਖ ਨੇ ਅੱਠ ਪੱਖ ਤੇ ਤੇ ਬਿਨਾ ਕੰਪਲੀਟ ਹੁੰਦਾ ਨਹੀਂ ਇਹ ਅੱਠੇ ਗਣ ਪੂਰੇ ਚਾਹੀਦੇ ਨੇ ਨਰਵਾਰ ਵੀ ਚਾਹੀਦਾ ਨਰਪਾਉ ਵੀ ਤਾਲੀ ਹੋ ਜਾ ਨਰਵਾਰੋ ਇੱਕ ਦੂਜੇ ਜੁੜ ਜੇ ਵੀ ਹੋਏ ਨੇ ਸਾਰੇ ਇੱਕ ਦੂਜੇ ਦੇ ਵੱਖਰੇ ਨਹੀਂ ਕਰ ਸਕਦੇ ਇਹਨੂੰ ਅੰਗ ਸਾਰੇ ਨੇ ਸਾਡੇ ਸਰੀਰ ਤੇ ਪਰ ਇੱਕੋ ਜਗ੍ਹਾ ਤੋਂ ਕੰਟਰੋਲ ਹੁੰਦੇ ਨੇ ਸਾਰੇ ਇੱਕੋ ਜੀਜ 컨트롤 ਕਰਦੀ ਹੈ ਸਾਰੇ ਅੰਗਾਂ ਨੂੰ ਇੱਕੋ ਜਗ੍ਹਾ ਜੁੜੇ ਨੇ ਦਾ ਮਤਲਬ ਸਾਰੇ ਐਦਾਂ ਜੁੜੇ ਨੇ ਇਹ ਵੀ ਸਰੀਰ ਹੈ ਅਸਟਾਇਦ ਚਮਕਣੀ ਚਮਕਣੀ ਅੱਖੇ ਪੱਖੋਂ ਤੋਂ ਚਮਕਾ ਕੋਈ ਕਮੀ ਨਹੀਂ ਹੈ ਦਰਵਾਤਾ ਉਹ ਵੀ ਪੂਰੀ ਹੈ ਨਰਪਹਿਤਾ ਉਹ ਵੀ ਪੂਰੀ ਹੈ ਕਵੀ ਨਹੀਂ ਆ ਕੇ ਸਬਸੇ। ਪੂਰਤੀ ਆਕਾਲ ਦੀ ਉਹ ਵੀ ਪੂਰੀ ਹੈ, ਸਹੀ ਹੈ, ਕੋਈ ਕਮੀ ਨਹੀਂ। ਅਜੋਨੀ ਹੋਣ ਜੀ ਵੀ ਕੋਈ ਕਮੀ ਨਹੀਂ। ਸਾਬਾਂ ਗਿਜ ਵੀ ਕੋਈ ਕਮੀ ਨਹੀਂ। ਉਹ ਦਾ ਮਤਲਬ ਕਾਰ ਨਹੀਂ ਗਰੀਲੀ ਦਾ ਮਤਲਬ ਕੀ ਹੈ? ਉਹ ਦਾ ਮਤਲਬ ਹੈ ਕਾਰ ਨਹੀਂ ਹੈ। ਆਕਾਰ ਪੈਦਾ ਕੀਤਾ ਜੀ ਨਾ। ਉਹ ਤੋ ਆਕਾਰ ਦੇ ਜੋਤ ਹੈ ਉਹ ਜੋਤ ਹੈ ਆਕਾਰ ਸ੍ਰੀ ਦੇ ਉਹ ਤੋਂ ਆਕਾਰ ਕੇ ਇਹ ਬਣ ਗਰੀ ਲਿਲੀ ਹੋਰ ਕੀ ਹੈ ਤਾਂ ਸ੍ਰਿਸ਼ਟੀ ਪੈਦਾ ਹੋਈ ਪਹਿਲਾ ਨਾਮ ਬਾਚ ਕਰਤਾਰ ਪਰਹ ਹਾ ਝਮਕਣੀ ਬਿਗਯੋਤ ਦਾ ਅਸਲ ਦੇ ਵਿੱਚ 8 ਗੁਣਾਂ ਚੋਂ 8 ਪ੍ਰਕਾਰ ਦੇ ਸ਼ਸਤਰ ਚਮਕਦੇ ਨੇ ਆ ਗੱਲ ਹੈ ਸ਼ਸਤਰ ਚਮਕਣੇ ਉਹ 8 ਗੁਣਾਂ ਚੋਂ 8 ਸ਼ਸਤਰਾਂ ਦੇ ਦਰਸ਼ਨ ਹੁੰਦੇ ਨੇ ਹਥਿਆਰ ਨਹੀਂ ਜਿਹੜਾ ਕੰਮ ਦਿਰਪਹਿਤਾ ਨਹੀਂ ਕਰਦੇ ਉਹ ਕੰਮ ਨਿਰਵੈਰਤਾ ਨਹੀਂ ਕਰ ਸਕਦੇ ਦਿਰਪਹਿਤਾ ਜਦੋਂ ਦੇ ਪੈਰੇ ਜੀਆ ਬੋਲਦਾ ਤਾਂ ਐ ਲੱਗਦਾ ਵੀ ਸਾਡਾ ਦੁਸ਼ਮਣ ਦੁਸ਼ਿਆੜੂ ਉਹਦਾ ਨਰ ਪੈਦਾ ਦੇ ਪੈਰੇ ਜੀ ਬੋਲਦਾ ਉਹਨਾਂ ਨੂੰ ਲੱਗਦਾ ਸਾਨੂੰ ਡਾਂਡ ਰਿਹਾ ਗੁਰ ਛੜ ਉਹਦਾ ਨਰ ਪੈਦਾ ਦੇ ਪੈਰੇ ਜੋ ਕੇ ਬੋਲ ਰਿਹਾ ਪਾਹਨ ਮੈਂ ਪਰਮੇਸ਼ਰ ਨਹੀਂ ਕਹਿਆ ਕੋ ਪੁੱਜਤਾ ਮੈਂ ਕੋ ਪਸੂ ਉਹ ਕਹਿੰਦਾ ਸਾਡੀ ਨਿੰਦਿਆ ਕਰ ਰਿਹਾ ਉਹਨਰ ਭਾਇ ਕਰਨ ਵਾਸਤੇ ਬੋਲੇ ਪਸੂਏ ਦਾ ਪਰਮੇਸ਼ਰ ਨਹੀਂ ਕੋਲ ਦਰਦਾ ਇਹਨਾਂ ਤੇ ਆਪਣਰ ਭਾਇ ਉਹਨਰ ਭਾਇ ਕਰ ਰਹਾ ਪਰ ਉਹਨਾਂ ਨੂੰ ਕੁਝ ਹਰਦਾ ਨਹੀਂ ਅਸੀਂ ਅੱਠੇ ਅੱਡੜ ਕੰਮ ਕਰਦੇ ਨੇ ਜੇ ਉਹ ਕੰਮ ਕਰਦਾ ਨੂੰ ਲੱਗਦਾ ਵੀ ਉਲਟਾ ਉਹਦੇ ਫਾਇਦੇ ਜਾਂਦਾ ਨੂੰ ਲੱਗਦਾ ਉਲਟਾ ਐਦਾਂ ਲੱਗਦਾ ਹੁੰਦਾ ਹਈ ਸ਼ਾਸਤਰ ਚਮਕਣੀ ਸ਼ਾਸਰਾਂ ਦੀ ਝਲਕ ਪੈਂਦੀ ਆ ਵਿੱਚੋਂ ਠਾਂਗੋਣਾ ਚੋਂ ਦਾਮਣ ਧਮਕਣੀ ਆਦ ਬ੍ਰਿਤ ਦਾਬਣੀ ਧਮਕਣੀ ਐ ਸਮਝ ਲਓ ਸ਼ਾਸਰਾਂ ਦੀ ਝਮਕ ਜਿਵੇਂ ਬਿਜਲੀ ਚਮਕਦੀ ਹੈ ਬੱਦਲਾਂ ਚੋਂ ਨਾ ਸੁਧੀ ਕਿਤੇ ਮਤੇ ਜਾਂ ਹੁੰਦੀ ਤਾਂ ਕੁਝ ਨਹੀਂ ਇੱਟ ਉੱਡਣ ਲਈ ਹੁੰਦੀ ਹੈ ਬਿਜਲੀ ਕੁਝ ਕਿਤੇ ਰਹੀ ਹੁੰਦੀ ਐਂ ਚਮਕ ਪੈਦੀ ਹੈ ਸ਼ਸਤਰ ਹੈ ਨਹੀਂ ਉਹ ਚਮਕ ਪੈਂਦੀ ਹੈ ਵਿੱਚ ਜਦੋਂ ਬਿਜਲੀ ਬਦਲ ਚਮਕਦੀ ਹੈ ਆਦ ਵਰਤੇ ਆਦ ਵਰਤੇ ਆ ਤਾਂ ਲੱਗਦਾ ਇਹ ਹੀ ਸੁਭਾਅ ਹੈ ਤੇਰਾ ਐ ਜੇ ਬਾਗ ਬਗ ਮੰਕ ਹੈ ਜਿਹੜੀ ਢੁਕ ਢੁਕੀ ਸੀ ਨਾ ਢਮਕਾ ਲਓ ਹੈ ਉਹਨਾਂ ਪਹਿਲਾਂ ਡੌਰੂ ਵਜਦਾ ਤਾਂ ਨਾ ਮਨ ਡਗਡੂਗੀ ਦਮਕਾ ਇਹ ਹੁਣ ਚਮਕਦਾ ਹੈ ਦਮਕਦਾ ਹੈ ਹੁਣ ਵਜਦਾ ਨਹੀਂ ਹੈ ਚਮਕਾ ਗਈ ਨਾ ਹੁਣ ਵਜਦਾ ਨਹੀਂ ਦਮਕਦਾ ਮਨ ਜਿਹੜਾ ਹੈਗਾ ਸ਼ੁੱਧ ਹੋ ਗਿਆ ਸਾਫ ਹੋ ਗਿਆ ਮਨ ਵੀ ਆ ਚਿੱਟਾ ਹੋ ਗਿਆ ਕਾਲਾ ਨਹੀਂ ਰਿਹਾ ਦਮਕਣ ਲੱਗਿਆ ਧਮਕਣ ਬੋਲਦਾ ਨਹੀਂ ਡੌਰੂ ਵਜਦਾ ਨਹੀਂ ਹੈ ਚਮਕ ਆ ਗਈ ਵਿੱਚ ਚਮਕ ਦਮਕ ਆਪਾਂ ਕਹਿੰਦੇ ਬੜਾ ਦਮਕ ਮੰਦਾ ਜਿਹੜਾ ਦੱਕਦਾ ਕਰਦਾ ਹੁਣ ਕਾਲਾ ਨਹੀਂ ਰਹਾ ਬੋਲਦਾ ਨਹੀਂ ਨਾ ਹੈ ਗਿਆਨ ਜੋ ਮਿਲ ਗਿਆ ਹਾਂ ਬਾਗ ਪਹਿਲਾਂ ਭੁੱਖਾ ਦੀ ਹੁਣ ਆਨੰਦ ਹੈ ਹਾਂ ਬਾਗ ਬਵੰਕਾ ਬਾਗ ਬਵੰਕਾ ਬਾਗ ਬੋਲਦਾ ਹੁਣ ਜਿਹੜਾ ਤਿਤ ਬੋਲਦਾ ਦਰਬਾਹ ਹੋ ਕੇ ਬਲ ਚੁੱਪ ਹੈ ਚੁੱਪ ਹੈ ਖੁਸ਼ ਹੈ ਖੁਸ਼ ਹੈ ਹੂੰ ਉਹ ਛੜਲੇ 'ਚ ਬੈਠਾ ਨਾ ਸਿੰਧ ਦੀ ਛੜਲੇ 'ਚ ਬੈਠਾ ਮਨ ਖੁਸ਼ ਤਾਂ ਤਾਂ ਖਤਰਾ ਕੋਈ ਨਹੀਂ ਉੱਥੇ ਖੁਸ਼ ਤਾਂ ਤਾਂ ਪੈਸੇ ਕੋਈ ਨਹੀਂ ਉੱਥੇ ਹੁੰਦਾ ਅਫਸੋਸ ਹੁੰਦਾ ਹੈ ਹੁੰਦਾ ਜਾਂ ਕੜਾ ਹੁੰਦਾ ਹੈ ਸਚਿੰਤਾ ਹੀ ਕੋਈ ਨਹੀਂ ਤੇ ਉੱਥੇ ਧੰਗ ਲਈ ਜਿਹੜਾ ਤਾਂ ਵਾਗਮ ਬੁੰਕਾ ਫਰੰਕਾ ਸੁਧਗਤ ਫਰੰਕਾ ਜਿਹੜੀ ਬੁੱਧੀ ਹੈ ਬੁੱਧੀ ਜਿਵੇਂ ਡੌਲੇ ਫਰਕ ਦੇ ਨੇ ਜਵਾਲ ਦੇ ਬੁੱਧੀ ਐ ਫਰਕ ਦੀ ਕੋਈ ਆਵੇ ਪੂਰੇ ਜਿਵੇਂ ਜਬ ਇੱਕ ਬਤਰਾ ਨੂੰ ਜਾਂ ਜੰਗ ਕਰਨ ਵਾਲੇ ਨੂੰ ਵੇਚ ਚੌਰ ਜੰਗ ਦਾ ਐ ਬੁੱਧ ਨੂੰ ਹਮੇਸ਼ਾ ਚੌਰ ਆਂਦਾ ਚੌਰ ਆਂਦਾ ਚੌੜਾ ਜੰਗ ਕਰਦੀ ਹੈ ਹਮੇਸ਼ਾ ਪੂਜਾ ਫਰਕ ਹੈ ਪੂਜਾ ਫਰਕ ਹੈ ਪੂਜਾ ਸੁਧ ਸੁਧ ਕਰੀ ਇਹੀ ਹੈ ਪੂਜਾ ਉਹ ਜਿਹੜੀ ਚਤਰ ਪੂਜਾ ਹੈ ਆਏ ਤੇ ਗਿਆ ਹੈ ਇੱਕ ਵਾਰ ਖੁੱਪ ਗਿਆ ਹੈ ਪੂਜਾ ਫਰਕ ਹੈ ਪੂਜਾ ਇੱਕ ਕੋਬਦੀ ਹੈ ਹੋਰ ਇੱਕੋ ਜੋ ਸੁਰਤਾ ਹੋਰ ਕਿ ਰਵੀ ਦੇ ਸਤ ਸੁਰ ਤੇ ਕੋਲਦੀ ਹੈ ਉਹ ਜਾਈ ਕੋਲਦੀ ਹੈ ਜਿਹੜਾ ਗਰੀ ਦੁਨੀਆ ਦੇ ਵਿੱਚ ਉਹ ਜਾਈ ਕੋਈ ਹੁੰਦੀ ਹੈ ਫਰਕਾ ਸ਼ੁੱਧ ਗਤੀ ਸ਼ੁੱਧ ਗਤੀ ਕੀ ਹੈ ਸ਼ੁੱਧ ਗਤੀ ਹੈ ਸ਼ੁੱਧ ਗਤੀ ਵਾਸਤੇ ਫਰਕਦੀ ਹੈ ਕਿ ਸਾਰਿਆਂ ਨੂੰ ਸ਼ੁੱਧ ਰਸਤੇ ਪਾਉਣ ਸਿੱਧੇ ਰਸਤੇ ਪਾਉਣ ਵਾਸਤੇ ਫਰਕਦੀ ਹੈ ਜਿਹੜੇ ਉਲਟੇ ਰਾਹ ਪਏ ਹੋਏ ਨੇ ਸੁਭਾ ਕੇ ਘੇਰ ਕੇ 부ਝਾ ਕੇ ਡਰਾ ਕੇ ਦਰਦੇ ਕੇ ਢਰ ਵੀ ਦੇਣੇ ਨਰਕ ਦਾ ਡਰੇ ਦਿੱਤਾ ਹੋਇਆ ਹੈ ਦੀਆਂ ਜੂਨਾ ਨਰਕੇ ਆ ਦੁੱਖ ਨਰਕੇ ਆ ਦੁੱਖ ਚ ਪੈ ਜਾਏਗਾ ਵੀ ਕੋਈ ਆਵੇ ਸਿੱਧੇ ਰਸਤੇ ਨੂੰ ਲੈਉਣ ਦੀ ਗੱਲ ਹੈ ਕੋਈ ਲੜਾਈ ਹੈ ਲੜਾਈ ਕੋਈ ਛੀਂਡੜ ਨਹੀਂ ਰਹੀ ਖੋਰ ਦੀ ਲੜਾਈ ਨਹੀਂ ਲਾਇਓ ਨੂੰ ਕੋਈ ਦੇਣ ਦੀ ਹੈ ਖੋਟੇ ਸਿੱਕੇ ਕੌਡੀਆਂ ਉਹਨੂੰ ਕਹੇ ਸੱਡਦੇ ਲਾਲ ਇਕੱਠੇ ਕਰਕੇ ਭਲ ਲਾਲ ਨੂੰ ਫੜਾਇਆ ਜਾਂਦੇ ਨੇ ਕੌਡੀਆਂ ਸਤਾਈਆਂ ਜਾਂਦੀਆਂ ਨੇ ਇਸ ਗੱਲ ਦੀ ਲੜਾਈ ਉਹਦੇ ਨੂੰ ਵੀ ਤੂੰ ਮੂਰਖ ਹੈਂ ਜੇ ਰਤਨ ਜੋ ਹੱਜ ਚੱਕਦਾ ਨਹੀਂ ਅਕੋਰਡੀਅਨ ਚ ਕੀ ਕਰਦੇ ਬੁਰਾ ਭਲਾ ਨੂੰ ਤਾਂ ਕਿਆ ਹੋਇਆ ਕੋਡੀਆਂ ਸਿਰਦਾ ਨਹੀਂ ਲਾਲ ਚੱਕਦਾ ਜੀ ਦੇਣੇ ਕੋ ਲਿਆ ਤਾਂ ਕੁਝ ਵੀ ਨਹੀਂ ਆਪਣੀ ਨਹੀਂ ਕੋਈ ਲਾਲ ਚਾਏਗਾ ਵੀ ਮੈਨੂੰ ਮੈਂ ਕੋ ਕੋਡੀਆਂ ਵੈ ਲੈਣਾ ਤੇਰੀਓ ਆਪ ਦਾ ਸਿੱਡਿਆ ਆ ਜਾਂਣਾ ਤੂੰ ਵੀ ਸਿਰਦੇ ਕੁਝ ਦੇਣ ਵਾਸਤੇ ਲੜਾਈ ਹੈ ਕੋ ਪਰ ਵਾਸਤੇ ਲੜਾਈ ਹੈ ਸੰਸਾਰ ਦੀ ਲੜਾਈ ਹੁੰਦੀ ਹੈ ਦੁਆਏ ਤੇ ਕੁਝ ਖੋਹਣ ਦੀ ਕਬਜ਼ਾ ਕਰਨ ਦੀ ਤਾਂ ਕਬਜ਼ਾ ਕਰਨ ਦੀ ਲੜਾਈ ਹੈ ਨਾ ਕੁਝ ਖੋਹਣ ਦੀ ਲੜਾਈ ਹੈ ਬੁਰਾਈ ਨੂੰ ਛਡਾ ਕੇ ਔਗਲਾ ਨੂੰ ਛਡਾ ਕੇ ਗੁਣਵੰਤਾ ਫੜੋਣ ਦੀ ਲੜਾਈ ਹੈ ਇਹ ਜਿਹੜੀ ਲੜਾਈ ਤਾਂ ਸੀ ਆਪਣੇ ਘਰ ਚ ਵੀ ਲੜਦੇ ਆ ਭਾਈਆਂ ਨਾਲ ਵੀ ਲੜਦੇ ਆ ਇਹ ਤਾਂ ਹੁਦਰਦੀ ਦੀ ਲੜਾਈ ਹੈ ਫਿਰ ਕੁਝ ਸੋਸਾਇਟੀ ਦੇ ਆਦਮੀ ਅਲਤਰਾਹ ਸੇ ਜਾਂਦਾ ਉਹਨੂੰ ਵੀ ਅਸੀਂ ਗੁੱਸੇ ਹੋ ਕੇ ਕਹਿੰਦੇ ਆ ਤੂੰ ਆ ਕਿਉਂ ਕੱਪ ਕਰਦਾ ਓਏ ਉਲਟੇ ਇਹ ਤਾਂ ਸਿੱਕ ਇਹ ਤਾਂ ਮੁਦਰਦੀ ਲੜਾਈ ਹੈ ਫਿਰ ਇਹ ਬਰਾਏ ਦੀ ਲੜਾਈ ਕਿਥੇ ਇਹਨੂੰ ਜਿਹੜੇ ਬੁਰਾ ਬੁਣਨ ਵਾਲੇ ਨੇ ਉਹ ਫਿਰ ਕੌਣ ਲੈ ਉਹਨਾਂ ਦੀ ਵਾਰਤ ਮਾਰੀ ਹੋਈ ਹੈ ਉਹ ਕਰਮ ਹੀ ਦੇ ਕਰਮ ਹੀ ਨਰ ਭਾਵਤ ਨਾ ਦੇ ਸਗਲ ਪਦਾਰਥ ਆਜਾ ਜਮਾ ਹੈ ਜਗ ਦੇ ਵਿੱਚ ਤਾਂ ਸਭ ਕੁਝ ਹੈ ਕਲਮਹੀਨ ਨਰਪਾਪਤਰਾ ਪ੍ਰਸਾਦ ਵੀ ਹੋਵੇ ਕਰ ਸੁੱਕਾ ਵੀ ਬੈਠਾ ਹੋਵੇ ਅੰਦਰ ਤੂੰ ਨਾ ਤਾਂ ਜੈ ਜੈ ਹੋਸੀ ਮਾਇਖਾਸੁਰ ਮਰਦਨ ਆਦ ਜੁਗਾਦ ਅਨਾਦ ਮਤੇ ਆਦ ਜੁਗਾਦ ਅਨਾਦ ਮਤੇ ਅਨਾਦੀ ਮਤਾ ਤੂੰ ਦੇਖੋ ਮਤਨੀ ਵੀ ਆਲ ਹੁੰਦਾ ਕਦੋਂ ਤੋਂ ਸ਼ੁਰੂ ਹੋਈ ਮਤ ਮਤਨੀ ਹੀ ਸ਼ੁਰੂ ਹੋਈ ਹੈ ਸੰਸਾਰ ਬਣੇ ਤੋਂ ਸੰਸਾਰ ਇਹਦੇ ਨਾਲ ਸ਼ੁਰੂ ਹੋਇਆ ਜਿਹੜੀ ਮਤ ਨੇ ਸੰਸਾਰ ਬਣਾਇਆ ਉਹ ਅਨਾਦੀ ਹੈ ਆਪ ਕਈ ਮਤਾਂ ਤੇ ਬਾਤ ਬਣੀ ਆਦੀ ਮਤਾ ਕੌਣ ਨੇ ਉਹ ਜਿਹਨੂੰ ਆਲ ਮਤਾ ਕਹਿੰਦੇ ਉਹ ਕੌਣ ਹੈ ਸਭ ਤੋਂ ਪਹਿਲਾ ਜਿਹੜੀ ਆਦਮੀ ਨੇ ਬੱਤ ਬਣਾਈ ਉਹ ਕਹ ਸਕਦੇ ਉਹ ਤਾਂ ਵਿਗੜ ਕੇ ਫਿਰ ਦੂਈ ਬਣੀ ਫਿਰ ਵਿਗੜ ਕੇ ਦੂਈ ਬਣੀ ਫਿਰ ਵਿਗੜ ਕਹਿੰਨੇ ਵਾਲ ਕੇ ਸ਼ੁੱਧ ਹੋ ਕੇ ਬਣੀ ਡਿਵੈਲਪ ਹੋ ਕੇ ਆਦਮੀ ਜਿਹੜੀ ਇਹ ਬੱਤਾਂ ਬਣਾਈਆਂ ਨੇ ਉਹ ਡਿਵੈਲਪ ਹੁੰਦੀਆਂ ਰਹੀਆਂ ਪਹਿਲਾਂ ਘਟੀਆਂ ਬੱਤਾਂ ਸੀ ਫਿਰ ਵਧੀਆ ਬੜੀਆਂ ਪਰ ਹੁਣ ਵੀ ਇਹਨਾਂ ਬੱਤਾਂ ਚਾਰ ਗੁਰਮਤਿਸ ਫਰਕ ਹੈ ਸੱਟ ਕਸਮ ਲਾ ਜਿਹੜੀ ਬੱਤ ਬਣਾਈ ਹੈ ਇਸਲਾਮ ਨੇ ਜਿਹੜੀ মত ਬਣਾਈ ਹੈ ਮੁਹੰਮਦ ਸਾਹਿਬ ਨੇ ਇਹ ਈਸਾਈ ਮਤੀ 30 ਸਾਲ ਜੋ ਬਣਾਈ ਹੈ ਮਹਾਤਮਾ ਬੁੱਧ ਨੇ ਬਣਾਈ ਹੈ ਉਪਰ ਵੱਤ ਤੋਂ ਥੱਲੇ ਨੇ ਫਿਰ ਵੀ ਗੀਤਾ ਲਿਖੀ ਕ੍ਰਿਸ਼ਨ ਉਹ ਵੀ ਥੱਲੇ ਅਗਰਮਤ ਤੋਂ ਵੀ ਥੱਲੇ ਆਹ ਸਭ ਥੱਲੇ ਨੇ ਕਿਉਂ ਆਦਮੀ ਨੇ ਬਣਾਈਏ ਉਹ ਚਾਹ ਆਦਮੀ ਦਾ ਦਖਲ ਹੈ ਇਹ ਚਾਹ ਆਦਮੀ ਦਾ ਦਖਲ ਕੋਈ ਨਹੀਂ ਜਿਹੜੀਆਂ ਇਹਦੇ ਨਾਲ ਦੀਆ ਬੁੱਤਾਂ ਪਿੱਛੇ ਵੀ ਸੀ ਭਾਸ਼ਾ ਕੋਈ ਛੋੜਦੀ ਮਤ ਤਾਂ ਇਹੀ ਸੀ ਉਹ ਇਹ ਵੱਤ ਜੋ ਪਹਿਲਾਂ ਸੀ ਪਹਿਲਾਂ ਤੇ ਹੀ ਇਹ ਵੱਤ ਇਹ ਜਿਹੀ ਰਹੀ ਬੋਲੀ ਬਦਲਦੀ ਗਈ ਹੈ ਭਾਸ਼ਾ ਬਦਲਦੀ ਗਈ ਹੈ ਵੱਤ ਇਹੀ ਰਹੀ ਇਹ ਅਨਾਦੀ ਵੱਤ ਹੈ ਜੇ ਕੋ ਨਾਨਕ ਦੇ ਮਾਲੀਆਂ ਅਨਾਦੀ ਦੀ ਕਹਿ ਸਕਦੇ ਇਹਨੂੰ ਇਹ ਵੀ ਗੱਲ ਜੇ ਨੂੰ ਕੋ ਰਾਨਕਾ ਕਬੀਰ ਤੇ ਮੰਨ ਲਿਆ ਫੇ ਅਨਾਦੀ ਵੱਤ ਨਹੀਂ ਰਹਿਣੀ ਇਹ ਆਦੀ ਹੋ ਜੂਗੀ ਫਿਰ ਆਦੀ ਨਹੀਂ ਰਹਿਣੀ ਫਿਰ ਇਹ ਤਾਂ ਪਹਿਲਾਂ ਵੱਤਾਂ ਹੋਰ ਹੈਗੀਆਂ ਨਾ ਇਹ ਆਦਮਤ ਨਹੀਂ ਨਾ ਅਨਾਦਮਤ ਰਹੀ ਦੋਈ ਨਹੀਂ ਆਦੀ ਹੋਏ ਹੋਰ ਇਹ 21 ਸਦੀ ਦੀ ਮਤ ਕਰਦਾ ਨਾ 21ਵੀਂ ਸਦੀ ਦਾ ਧਰਮ ਉਹ ਪਾਗਲ ਨੂੰ ਕੀ ਪਤਾ ਧਰਮ ਕੀ ਹੁੰਦਾ 21ਵੀਂ ਸਦੀ ਦਾ ਧਰਮ ਨਾ ਕੋ ਨਵਾਂ ਹੋਊਗਾ ਉਹ ਬਣਾ ਲਵੇ 21ਵੀਂ ਸਦੀ ਵਾਸਤੇ 21ਵੀਂ ਸਦੀ ਵਾਸਤੇ ਉਹ ਬਣਾ ਲਵੇ ਧਰਮ ਲੋਕਾ ਕੋਈ ਕੀ ਗੁਰੂ ਨਾਨਕ ਮੇਲੇ ਥਾ ਨਹੀਂ ਪਾਰਟੀ ਬਣਾਉਂਦਾ ਉਹ 19ਵੀਂ ਸਦੀ ਦੇ ਵਿੱਚ ਥਾ ਲਈ ਨੇ ਧਰਮਾਂ ਕਿ ਉਹ ਤੋਂ ਪਹਿਲਾਂ ਜੇ ਕਬੀਰ ਸਿੰਘ ਥਾ ਲਈ ਕਿ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਚਾਹੁੰਦਾ ਉਹਨਾਂ ਥੇ ਨਹੀਂ ਕਿ ਬੇਦ ਬੇਦ ਵਿੱਚ ਪਹਿਲਾਂ ਇਹ ਧਰਮ ਥਾ ਲਈ ਜਿਹੜਾ ਲੋਕਾਂ ਨੂੰ ਧਰਮ ਦਾ ਊੜੇ ਆੜੇ ਦਾ ਬਕਵਾਸ ਕਰੀਆ ਤੁਸੀਂ ਇਹ ਇਹਨੂੰ ਕਿਵੇਂ ਧਰਮ ਕੀ ਹੁੰਦਾ 21ਵੀਂ ਸਦੀ ਦਾ ਧਰਮ ਤੂੰ ਬਣਾ ਲਈ ਤੇਰੇ ਦੇਖਾਂਗੇ ਕਿਹੋ ਜਿਹਾ ਤੂੰ ਬਣਾ ਲਈ ਉਹ ਤੈਨੂੰ ਬੜੇ ਵੇਰੀ ਸਮਝ ਨਹੀਂ ਤੂੰ ਨਵਾ ਬਣਾ ਲੇਗਾ ਉਹ ਬੜੇ ਬਣਾਇਦਾ ਤੈਨੂੰ ਸਮਝ ਨਹੀਂ ਆਈ ਕੀ ਐ 21ਵੀਂ ਸਦੀ ਦਾ ਦਰਮਾ ਇਹ ਤਾਂ ਆਜ਼ ਧਰਵਾ ਅਨੱਦੀ ਮਤ ਹੈ ਕੋਈ ਨਹੀਂ ਹੈ ਇਹ ਸ੍ਰਿਸ਼ਟੀ ਪਹਿਲਾ ਹੈ ਜਦੋਂ ਉਹ ਹੁਕਮ ਨਾ ਹੋ ਗਿਆ ਹੁਕਮ ਦਾ ਵਿਸਾਰ ਹੈ ਮੈਂ ਕਹਿਆ ਸਭ ਹੁਕਮ ਆਉਜੀਓ ਹੁਕਮ ਦੇ ਨਾਲ ਜਬਣਾ ਪੜਨਾ ਤੂੰ 21ਵੀਂ ਸਦੀ ਦਾ ਧਰਮ ਕਹੀ ਜਾਂਦਾ ਮਤਨੀ ਮਾਰੀ ਹੋਈ ਹੋਰ ਕਿ ਕਿ ਮਾਰਿਆ ਹੈ ਇਹ ਲੀਡਰ ਬਣਨ ਨੂੰ ਫਿਰਦੇ ਨੇ ਸਿੱਖ ਹੁੰਦੇ ਕਰ ਕੇ ਹੈ ਕੋਈ ਪੁਜਦਾਰ ਆਵੇਂ ਜਿਹੜਾ ਨੂੰ ਘਰ ਵਾਲਿਆਂ ਨੇ ਪੁੱਛਦੇ ਉਹ ਲੀਡਰ ਬਣਦੇ ਨੇ ਸਿੱਖਾਂ ਉਹ ਸਿੱਖੀ ਗੱਲ ਕੋਈ ਮਜ਼ਾਕ ਦੀ ਗੱਲ ਹੈ ਇਹ ਤਾਂ ਸਾਰੀ ਉਮਰ ਕਾ ਖੋਤੇ ਰੇ ਕਿਉਂ ਨਹੀਂ ਸਮਝਾਈ ਸਾਹਿਬ ਨੇ ਲੱਗੀ ساری ਉਮਰ ਨਰੇ ਮਾਨਦਾਰ ਸੀ ਕਾ ਖੋਤੇ ਉਹਨਾਂ ਜਿਹਾ ਮਹਾਰਾਜ ਸასი ਦਾ ਸੇਵਕੇ ਠੀਕ ਆ ਇਹ ਜੇ ਠੀਕ ਆ ਸੀ ਸ਼ਾਂਤੀ ਆ ਆਨੰਦ ਆ ਬਸ ਜਿਹਨੂੰ ਕਾ ਖੋਤੜ ਜੇ ਆਨੰਦ ਉਹ ਲੈਣਾ ਕੀ ਸਾਨੂੰ ਇਹਨੂੰ ਖੁਸ਼ੀ ਆ ਜਾਂਦਾ ਸੁੱਖ ਆ ਚਿੰਤਾ ਫੇਰ ਲਈ ਇਹ ਕਿਰਨ ਇਹਦੋਂ ਕੁੱਲ ਚਚੌੜ ਸਰ ਨਰਕ ਨਿਵਾਰਨੀ ਪਤਤ ਉਧਾਰਨੀ ਏਕ ਪਤ ਆ ਅਨਾਦ ਮਤੇ ਸ੍ਰਿਸ਼ਟੀ ਦਾ ਆਦ ਅਜੁਗਲ ਦਾ ਜੁਗ ਤੇ ਤੋਂ ਸ਼ੁਰੂ ਹੋਇਆ ਸਮਾ ਤੇ ਤੋਂ ਸ਼ੁਰੂ ਹੋਇਆ ਆਦ ਕੀ ਹੈ ਅੱਬਲ ਅੱਲੋ ਨੂਰ ਪਾਇਆ ਜਾਂ ਨੂਰ ਪਾਇਆ ਆਦ जुगाड़ किया या माया पाई है त जुगाड़ है माया तो बिना जुग नहीं है माया तो बिना समा नहीं होता नूर जा पाया नूर दे ऊपर समय का कोई असर नहीं है काल का असर नहीं कोई जदों तो माया पैदा कुदरत के सब बंदे सच्चे तो ज पबना पे ना। जुगाद है ना ओनु जुगाड़ है जुगाड़ करता है जब सच्चे ते पबना पे पबने चल होई ये है ਇਤੋਂ ਜੋਗ ਸ਼ੁਰੂ ਹੋਏ ਨੇ 21ਵੇਂ ਸਦੀ ਦਾ ਧਰਮ ਆ ਤੇਰਾ ਪਿਓ ਦੱਸੂ ਆ ਕੱਕੀ ਐ ਇਹ ਭੇਦਗੀਰ ਆਦ ਕੀ ਐ ਜੁਗਾਦ ਕੀ ਐ ਇਹ ਕੌਣ ਦੱਸੂਗਾ ਇਹ ਕੌਣ ਦੱਸੂਗਾ ਆ ਸੱਚ ਜੁਗਾ ਸੱਚ ਕੀ ਹੁੰਦਾ ਇਹਨਾਂ ਦਾ ਤੁਹਾਨੂੰ ਪਤਾ ਨਹੀਂ ਗੱਲਾਂ ਮਾਰਦੇ ਹੋ ਸਾਨੂੰ ਦਿਖਾਉਣ ਲੱਗੇ ਧਰੋ ਜੁਗਾਦ ਹੈ ਜਾਂ ਸੱਚ ਤੇ ਪਵਨਾ ਪਿਆ ਬਿਲਕੁਲ ਵੀ ਕੋਈ ਸਾਡੇ ਕੋਲ ਸਬੂਤ ਰਿਜ਼ਲਟ ਵਿਖਲੀ ਭਾਇਆ ਤੋਂ ਬਿਨਾ ਸਾਨੂੰ ਸਮੇਂ ਦਾ ਨਹੀਂ ਪਤਾ ਲੱਗਦਾ। ਭਾਇਆ ਤੋਂ ਪਤਾ ਲੱਗਦਾ ਸਮੇਂ ਦਾ। ਪੱਥਰਾਂ ਤੋਂ ਪਤਾ ਲੱਗਦਾ ਸਮੇਂ ਦਾ। ਮੈਟਰ ਤੋਂ ਪਤਾ ਲੱਗਦਾ ਕਿੰਨੀ ਪ੍ਰਾਣੀ ਹੈ। ਜੋਤ ਤੋਂ ਮੈਨੂੰ ਪਤਾ ਲੱਗ ਜੂਗਾ। ਜੋਤ ਤੋਂ ਨਹੀਂ ਪਤਾ ਲੱਗਦਾ ਹੁੰਦਾ। ਆਦਰ ਜੁਗਾਦ ਦੋਏ ਦੇ। ਜੁਗਾਦ ਦਾ ਜੁਗਦਾ ਸੰਬੰਧ ਹੈ ਭਾਇਆ ਨਾਲ। ਆਦ ਦਾ ਸੰਬੰਧ ਹੈ ਜੋਤ ਨਾਲ। ਜੋਤ ਆਦ ਜੇ ਜੋਤ ਨਹੀਂ ਸੀ ਤਾਂ ਸਿਸਤੀ ਦੀ ਲੋੜ ਨਹੀਂ ਸੀ ਆਦ ਜੁਗਾਦ ਜੁਗਾਦ ਅਨਾਦ ਬਤੇ ਆਦਮੀ ਹੈ ਜਿਹੜੀ ਜੋਤ ਹੈ ਦੂਰ ਦੀ ਆਦ ਆ ਦਾ ਜੁਗਾਦ ਆ ਵਰਤੇ ਰਾ ਆਦਮੀ ਹੈ ਨਹੀਂ ਤਨਜੀ ਜਨ ਹੈ ਤੇ ਇਹ ਤਾਂ ਹੋ ਕਮ ਇਹ ਮਾਇਆ ਇਹ ਜੋਤ ਹੈ ਜਿਹੜੀ ਸਰੀਰ ਤੇ ਹੈ ਜੋਤ ਤੇਨਜੀ ਜਨ ਜਿਹੜੀ ਸਰੀਰ ਤੇ ਵੀ ਜੋਤ ਹੈ ਜਿਹਨਾਂ ਇੱਕ ਹੋਣਾ ਜਿਹਦੀ ਡਿਵੈਲਪਮੈਂਟ ਹੋ ਰਹੀ ਹੈ ਜਿਹਨੂੰ ਉਪਦੇਸ਼ ਕਰ ਰਹੀ ਹੈ ਜਿਹਦਾ ਜਪਣਾ ਮੰਨਣਾ ਜਿਹਦਾ ਜਪਣਾ ਕਰਨਾ ਕੱਟ ਰਹੀ ਹੈ ਉਹ ਆਦ ਉਹ ਆਦ ਮਾਇਆ ਜੁਗਾਦ ਹੈ ਆਪ ਅਨਾਦਾ ਹੈ ਆਪ ਜਿਹੜੀ ਕਰ ਰਹੀ ਹੈ ਨਾ ਜਬਰਦਸਤ ਆ ਹੋਕ ਬਾਨਾ ਦਾ ਇਹ ਆਦਰੀ ਹੁੰਦਾ ਇਹ ਪ੍ਰਗਟ ਹੁੰਦਾ ਬਸ ਇਹ ਗੁਪਤ ਪ੍ਰਗਟ ਹੋਏ ਤੇ ਬੰਦਾ ਹੋਰ ਕੁਝ ਨਹੀਂ ਹੁੰਦਾ ਪ੍ਰਗਟ ਹੋ ਗਿਆ ਗੁਪਤ ਹੋ ਗਿਆ ਗੁਪਤ ਪ੍ਰਗਟ ਹੋਏ ਵੈਸਾ ਲੋਕ ਰੱਖ ਆਹੋ ਮਾਰਨੀ ਨਰਕ ਨਿਵਾਰਨ ਪਤ ਤ ਉਧਾਰਨੀ ਏਕ ਭਟੇ ਕਿੱਥੇ ਨਾਲ ਸੋਨ ਮਾਰਨੀ ਚੱਚਰਾ ਸੋਨ ਨੂੰ ਮਾਰਨ ਵਾਲੀ ਏ ਤੂੰ ਕਿਵੇਂ ਮਾਰਨ ਵਾਲੀ ਮੈਨੂੰ ਮਾਰਨਾ ਕਿਉਂਦਾ ਜੇ ਮੈਨੂੰ ਹਾਰਾਵੇ ਜੇ ਕੁਚਲੇ ਮਾਰੀਦੇ ਨੇ ਦਵਾਈ ਬਣ ਜਾਂਦੀ ਐ ਸੁੱਧ ਹੋ ਜਾਂਦਾ ਜੇ ਜਿਹੜਾ ਸੰਖਿਆ ਮਾਰੀਦਾ ਤਾਂ ਦਵਾਈ ਬਣ ਜਾਂਦੀ ਹੈ ਉਹਦੀ ਕੀਮਤ ਵੱਧ ਜਾਂਦੀ ਹੈ ਕੀਮਤ ਤਾਂ ਪਹਿਲਾਂ ਵੀ ਹੁੰਦੀ ਹੈ ਸੰਖੇ ਦੀ ਪਰ ਜਿਹੜਾ ਨਾ ਰਹੀ ਤੇ ਕੀਮਤ ਹੋਰ ਹੋ ਜਾਂਦੀ ਇਹਦੇ ਵਿਕਾਰ ਮਾਰੇ ਨੇ ਇਹਦੇ ਉਗਲ ਮਾਰੇ ਨੇ ਇਹਨੂੰ ਨਹੀਂ ਮਾਰਿਆ ਨਿਸ਼ਧ ਕੀਤਾ ਘੜੀਏ ਘੜੀਏ ਮਾਰੀਏ ਮਾਰਿਆ ਤਾਂ ਤਾਂ ਹੈ ਕਰਨ ਵਾਸਤੇ ਕਿੰਨੇ ਨੂੰ ਡਾਉਣ ਵਾਸਤੇ ਸੋਨੇ ਤੇ ਵੀ ਮਾਰੀ ਦੀ ਝੋਟ ਕਰਨ ਵਾਸਤੇ ਭਾਂਡੇ ਵੀ ਆ ਘੜੀ ਦੇ ਨੇ ਮਾਰੀ ਦੇ ਹਰ ਚੀਜ਼ ਘੜੇ ਤੇ ਮਾਰੇ ਤੇ ਬਣਦੀ ਹੈ ਇਹ ਮਾਰਿਆ ਕਹਿੰਦੇ ਉਗੜ ਲਾਹੇ ਰਛੜਾਏ ਝੋਟ ਮਾਰੀਏ ਸ਼ਬਦੀ ਸ਼ਬਦੀ ਉਹ ਝੋਟ ਮਾਰੀਏ ਜੱਛਰਾ ਸੁਰ ਮਾਲ ਨਹੀਂ ਜਿਹੜਾ ਕਾਰਸੀ ਉਹ ਮਾਰਿਆ ਹੋਰ ਕੀ ਮਾਰਿਆ ਚੱਚਰਾ ਸੁਰਦਾ ਕੀ ਮਾਰਿਆ ਹੰਕਾਰ ਓਬੇ ਬੈਠ ਓਬੇ ਬੈਠੀ ਹੈ ਨਰਕ ਨਿਵਾਰਨੀ ਐ ਨਰਕ ਦੇ ਵਿੱਚੋਂ ਕੱਢਿਆ ਮਾਰ ਕੇ ਕਾਰ ਦੇ ਦਾ ਮਾਰ ਕੇ ਨਰਕੋਂ ਬਾਹਰ ਕੱਢਿਆ ਆਹ ਹੀ ਤੜਾ ਮਾਰ ਕੇ ਹੋਰ ਮਾਰ ਕੇ ਇਹਨੂੰ ਕੋ ਨੁਕਸਾਨ ਕੀਤਾ ਜੇ ਮਾਰਿਆ ਨਰਕ ਜੋ ਵਾਰ ਮਾਰ ਕੇ ਉਹ ਨਰਕਾਲੀਆਂ ਚੀਜ਼ਾਂ ਜੋ ਲਾਸ ਕੇ ਡਰ ਕੇ ਸੜਦੀਆਂ ਇਹਨੂੰ ਸ਼ੁੱਧ ਕਰਕੇ ਆਪਣੇ ਨਾਲ ਲੜਾ ਲਿਆ ਨਰਕਨ ਕੋਈ ਵੀ ਹੋਵੇ ਕੋਈ ਵੀ ਹੋਵੇ ਪਤਾ ਸਾਰਿਆਂ ਨੂੰ ਉਧਾਰ ਦ ਨੂੰ ਢੀਕ ਕਰ ਲੰਦੀ ਏਕ ਭਟੇ ਪਰ ਇੱਕੋ ਹੀ ਐਸਾ ਸੂਰਮਾ ਜਿਹੜਾ ਮਾਰ ਕੇ ਕਰਦਾ ਕੁੱਟ ਕੇ ਉਹ ਦੂਆ ਕੋਈ ਨਹੀਂ ਕਰਦਾ ਇਹ ਕੁੱਟ ਕੇ ਕਰਦਾ ਸਾਰਿਆਂ ਨੂੰ ਠੀਕ ਲੜਕੇ ਇਹ ਜੀ ਲੜਾਈ ਲੜ ਕੇ ਕਾਦੀ ਅਕਲ ਦੀ ਲੜਾਈ ਲੜ ਕੇ ਭੌਲਾ ਨਹੀਂ ਫੜਉਂਦਾ ਵੀ ਤੂੰ ਆਪੇ ਕਰ ਲਈ ਉਹਦਾ ਕਹਿੰਦੇ ਆ ਤੂੰ ਬਸ ਜਹਰ ਤੂੰ ਆਪੇ ਸਮਾਧੀ ਲਾਈ ਚਲ ਏਦਾਂ ਨਹੀਂ ਕਰਦਾ ਨਾਲ ਲੜ ਕੇ ਬਧੀ ਅਕਲ ਨੂੰ ਜਿੱਤ ਕੇ ਸਮਝਾ ਕੇ ਫਿਰ ਉਹ ਤੇ ਛਡਾਇਆ ਸਭ ਕੁਝ ਕਿ ਕੋਈ ਆ ਹੋਰ ਕੋਈ ਐਸਾ ਗੁਰੂ ਹੈ ਨਹੀਂ ਇੱਕ ਪੱਟੇ ਇੱਕ ਪੱਟੇ ਹੋ ਰਹਾ ਇਹੜੇ ਕੁਝ ਕਰੇ ਪੱਟ ਜੋ ਉਹਦੇ ਨੂੰ ਕਹਿੰਦੇ ਸੀ ਲੜਾਈ ਹੋਰ ਨਹੀਂ ਕੋਈ ਲੜਦਾ ਹੋਰ ਐਸੀ ਲੜਾਈ ਕੋਈ ਨਹੀਂ ਲੜਦਾ ਜੇ ਲੜੇ ਤਾਂ ਇਕੱਲੇ ਨਹੀਂ ਨਾ ਬਣਦੇ ਉਹ ਕਦੋਂ ਕਰਦੇ ਉਹਨੂੰ ਤਾਂ ਬਾਕੀ ਦਾ ਚਾਹੀਦਾ ਵੀ ਪੈਸੇ ਚੇਲਿਆਂ ਕੋ ਹੁਣ ਕਿਤਾ ਮੈਨੂੰ ਹੁਣ ਕੇ ਜਿਮਾਇਆ ਹੋ ਜੇਲਿਆਂ ਕੋ ਤਾਂ ਹੀ ਮੈਨੂੰ ਆਉ ਹੁਣ ਇੱਥੇ ਮਾਇਆ ਨਾਲ ਆਪ ਨੂੰ ਚਾਹੀਦੀ ਆ ਨਾ ਚੇਲਿਆਂ ਨੂੰ ਚਾਹੀਦੀ ਉਹ ਤਾਂ ਛਡੌਲੀ ਏ ਮਾਇਆ ਤਾਂ ਦੁਨੀਆਂ ਦੀ ਬੁੜਿਆਈ ਤਾਂ ਛਡੌਲੀ ਏ ਇਹ ਕਹਿੰਦੇ ਅਸੀਂ ਰਾਜ ਕਰਨਾ ਜਿਹਨਾਂ ਨੇ ਰਾਜ ਕਰਨਾ ਉਹ ਸਿੱਖੀ ਤੋਂ ਹਜ਼ਾਰਾਂ ਕੋਹਾਂ ਦੂਰ ਚਲੇ ਗਏ ਚਲੇ ਜਾਣਗੇ ਹੋਰ ਪੈਰ ਪੈਰ ਦੂਰ ਜਾਣਗੇ ਡੜੇ ਨਹੀਂ ਜਾ ਸਕਦੇ ਸਿੱਖੀ ਦੇ ਇਹਨਾਂ ਦੇ ਅੰਦਰ ਰਾਜ ਦੀ ਭੁੱਖਾ ਸਿੱਖੀ ਦੇ ਵੇੜੇ ਵੱਲ ਆਏ ਨਹੀਂ ਸਕਦੇ ਸਿੱਖੀ ਵੱਲ ਤਾਂ ਉਹਨਾਂ ਦੀ ਪਿੱਠ ਹੈ ਅਸਲੇ ਵਾਲਿਆਂ ਦਾ ਨਰਕ ਵੱਲ ਬੂਹਾਂ ਸਿੱਖੀ ਵੱਲ ਪੁੱਠਾ ਗੁਰੂ ਵੱਲ ਬਿਠਾ ਹੈ ਨਰਕ ਵੱਲ ਬੂਹ ਤਬ ਉਹ ਰਾਏ ਰਾਜੋ ਨਰਕਾ ਨਾ ਜੇ ਤਬ ਉਹ ਰਾਏ ਰਾਜੋ ਨਰਕਾ ਜੇ ਰਾਜ ਦੀ ਇੱਛਾ ਰੱਖਦੇ ਨਾ ਗੁਰੂ ਵੱਲ ਪਿੱਠਾ ਉਹਨਾਂ ਦੀ ਨਰਕ ਵੱਲ ਬੂਹ ਕਹਿੰਦੇ ਸੀ ਸਿੱਖ ਗੱਲ ਗੁਰੂ ਦੀ ਬੰਦੇ ਦੀ ਗੁਰੂ ਦਾ ਇਹ ਕਹਿੰਦੇ ਨੇ ਪਿੱਠ ਕਰਕੇ ਰਾਜ ਕਰੇਗਾ ਖਾਲਸਾ ਤੂੰ ਰੌਲਾ ਨਾ ਪਾ ਸਾਡੇ ਪਿੱਛੇ ਖਾਲਸਾ ਰਾਜ ਕਰੂਗਾ ਇਹਨਾਂ ਦਾ ਮੂੰਹ ਬੰਦ ਕਰਦੇ ਨੇ ਬਾਣੀ ਦਾ ਗੁਰੂ ਦਾ ਮੂੰਹ ਬੰਦ ਕਰ ਲੈਨੇ ਵੀ ਰੌਲਾ ਨਾ ਪਾ ਸਾਨੂੰ ਇਹ ਡਿਸਟਰਬ ਨਾ ਕਰ ਖਾਲਸਾ ਰਾਜ ਕਰੂਗਾ ਤੇ ਰੌਲਾ ਪਾਇਆ ਖਾਮ ਖਾ ਉਹਦਾ ਮਤਲਬ ਇਹ ਵੀ ਖਾਮ ਖਾਦਾ ਰੌਲਾ ਨਾ ਪਾਓ ਰਾਜ ਅਸੀਂ ਦਾ ਕਰਨ ਜਾ ਨਰਕ ਨੂੰ ਜਾਣੇ ਤੁਸੀਂ ਚਲੇ ਜਾਓ ਖੁੱਲ ਸਾਰੇ ਜਾ ਰਹੇ ਨੇ ਤੁਸੀਂ ਕਿ ਜਾ ਰਹੇ ਹੋ ਸਾਰੀ ਦੁਨੀਆ ਹੀ ਜਾ ਰਹੀ ਹੈ ਜਿਹਦੇ ਵੀ ਰਾਹ ਚਾਹੁੰਦੇ ਨੇ ਸਾਰੀ ਦੁਨੀਆ ਦਰਸਨ ਕੋ ਜਾ ਰਹੇ ਨੇ ਜਾ ਇਹ ਭਲੇਖਾ ਦਲੋ ਕੱਢ ਦੋ ਵੀ ਅਸੀਂ ਸਿੱਖਾਂ ਪਰ ਬਸ ਇੰਨੀੋ ਗੱਲ ਆ ਇਹ ਭਲੇਖਾ ਨਾ ਪਾਲਿਓ ਕਦੀ ਸਿੱਖਾਂ ਬੁਝ ਰੱਖ ਕੇ ਜੇ ਇਹ ਨਹੀਂ ਹੋਇਆ ਤੁਸੀਂ ਉਹ ਗੁਰੂ ਤੁਹਾਡੀ ਨਬਤ ਅੱਜ ਆਵੇ ਨਾ ਕੱਲ ਆਵੇ ਅਰਦਾਸ ਕਰਨ ਵੀ ਕੋਈ ਲੋੜ ਨਹੀਂ ਕੋਈ ਫਾਇਦਾ ਨਹੀਂ ਜੇ ਤੁਸੀਂ ਸਿੱਖੀ ਛੱਡਤੀ ਜੇ ਤੁਸੀਂ ਸੋਚਦੇ ਹੋ ਉਹ ਗੁਰੂ ਸਾਡੇ ਨਾਲ ਹੈ ਤੁਹਾਡਾ ਬਹੁਤ ਵੱਡਾ ਭਲੇਖਾ ਹੈ ਆਪਣੇ ਆਪ ਨੂੰ ਬੜਾ ਧੋਖੇ ਜਿਹਾ ਕਰੇ ਹੋ ਤੁਸੀਂ ਗੁਰਬਾਨੀ ਬਣ ਕੇ ਦੇਖੋ ਜੋ ਗੁਰਬਾਨੀ ਦਾ ਹੁਕਮ ਹੈ ਇਹਦੋਂ ਜੇ ਤੁਸੀਂ ਖਿਲਾਫ ਗੁਰੂ ਬਿਲਕੁਲ ਤੁਹਾਡੇ ਨਾਲ ਨਹੀਂ ਰਾਜ ਨਾ ਚਾਹੂ ਮੁਕਤੀ ਨਾ ਚਾਹੂੰ ਰਾਜ ਨਾ ਚਾਹੂ ਮੁਕਤੀ ਤੇ ਤੁਸੀਂ ਉਲਟੋ ਕਰਕੇ ਗੁਰੂ ਦਾ ਤੁਹਾਡੇ ਨਾਲ ਕੋਈ ਗੁਰੂ ਵੱਲ ਤੁਹਾਡੀ ਪਿੱਠ ਹੈ ਗੁਰੂ ਨੂੰ ਕੀ ਲੱਗੇ ਗੁਰੂ ਦਾ ਸਾਰਾ ਸੰਸਾਰਾ ਕੋ ਸਿੱਖ ਕੱਲੇ ਦੀ ਜਣ ਉਹ ਨੂੰ ਸਾਵੇ ਕੋ ਜਾਈ ਦੇ ਪਰਮੇਸ਼ਰ ਨੂੰ ਸਾਵੇ ਕੋ ਜੈ ਨੇ ਚਤਰਾਸੁਰ ਮਾਰਨੀ ਪਾਪਾਣ ਬਹਿੰਡਣੀ ਦੁਸ਼ਟ ਪ੍ਰਚੰਡਣੀ ਪਾਪਾਣ ਬਹਿਲਡਣੀ ਜਦੋਂ ਪ੍ਰਗਟ ਹੁੰਦੀ ਹੈ ਨਾ ਇਹ ਬਵੇਖ ਬੁੱਧੀ ਜਿਹੜੇ ਸੰਸਾਰ ਦੇ ਪਾਪ ਨੇ ਉਹਨਾਂ ਦੇ ਅੱਗੇ ਹੋ ਜਾਂਦੀ ਹੈ ਜੋ ਫੌਜ ਜਿਹੜੀ ਆਉਂਦੀ ਹੁਣ ਦਿਨ ਪਰ ਦਿਨ ਪਾਪ ਵੱਧ ਇਹ ਕਹਿੰਦੇ ਨੇ ਲੋਕ ਤਾਨੀ ਕਹਿੰਦੇ ਸਜੂਗ ਦੀ ਲੜੀ ਲੱਗਦੀ ਆ ਐ ਲੜਦੀ ਲੱਗਦੀ ਆ ਲੜੀ ਪਾਪਾਂ ਦੇ ਅੱਗੇ ਹੋ ਜਾਂਦੀ ਹੈ ਗੁਰਬਤ ਖੜੀ ਹੋ ਜਾਂਦੀ ਠੋਕੋਂ ਦਾ ਵਿਰੋਧ ਕਰਦੀ ਕਰਦੇ ਨੇ ਜਿਹੜੇ ਉਹਨਾਂ ਨੂੰ ਚੈਲੰਜ ਕਰਦੀ ਆ ਮਾਰੇ ਜਾਉਂਗੇ ਹੁਕਮ ਦਾ ਦਰਸ਼ਨ ਕਰਾਉਂਦੀ ਆ ਜੋ ਬਰਤਰਿਆ ਪਾਣਾ ਬਰਤਰਿਆ ਉਹਦਾ ਉਹਦੇ ਅੱਗੇ ਨਾ ਹੋ ਉਹਦੇ ਅੱਗੇ ਹੋਏ ਤੇ ਕੋਈ ਬਚ ਨਹੀਂ ਸਕਦਾ ਪਿੱਛੇ ਹੋ ਜੋ ਜੋ ਹੋ ਰਿਹਾ ਸੱਤ ਸੱਤ ਕਰਕੇ ਮੰਨੋ। ਪਾਣੇ ਨੂੰ ਸੱਤ ਸੱਤ ਕਰਕੇ ਮੰਨੋ, ਵਾਲੀ ਨੂੰ ਸੱਤ ਸੱਤ ਕਰਕੇ ਮੰਨੋ ਜੇ ਬਚਣਾ ਆ ਜੇ ਨਹੀਂ ਪਾਸੇ ਹੋ ਗਏ ਤਾਂ ਉੱਤੇ ਦੀ ਲੱਗੇ ਜਾਣੀ ਉਹ ਤਾਂ। ਉਹਨੇ ਬਖਸ਼ਣ ਲਈ ਕਿਹਾ ਸਰ। ਹੂੰ। ਪਾ ਪਾਪਾ ਨੂੰ ਵਧਣ ਤੋਂ ਰੋਕਦੀ ਐ। ਹੰਡਾ ਹੰਦੇ ਨੇ ਵਧਦੇ ਨੇ। ਪਾਪਾ ਨੂੰ ਬ੍ਰੇਕ ਲਾ ਦਿੰਦੀ ਆ ਮੂਰੇ ਤੇ ਮੂਰੇ ਹੋ ਜਾਂ ਜੇ ਬਿਲਕੁਲ ਫੌਜੜੀ ਆਉਂਦੀ ਆ ਮੂਰੇ ਖੜੀਏ ਬੇਹੰਢਣੀ ਦੁਸ਼ਟ ਪ੍ਰਚੰਡਣੀ ਜਿਹੜੇ ਦੁਸ਼ਟ ਨੇ ਉਹਨਾਂ ਨੂੰ ਪ੍ਰਚੰਡ ਕਰਦੀ ਆ ਉਹਨਾਂ ਦਾ ਵੀ ਗਿਆਨ ਪ੍ਰਚੰਡ ਕਰਦੀ ਆ ਉਹਨਾਂ ਨੂੰ ਉਹਦੇ ਅੰਦਰ ਰੋਸ਼ਨੀ ਉਹਨਾਂ ਨੂੰ ਜਗਾਉਦੀ ਆ ਵੀ ਸੁੱਤੇ ਨਾ ਪਏ ਪਾਪ ਕਰੀ ਜਾਓ ਸੁੱਤੇ ਪਾਪ ਨਾ ਕਰੋ ਕਭ ਨਾ ਕੁਬਤਾ ਤੁਮ ਲਾਗੇ ਪੰਡਿਆ ਜਗਾਇਆ ਹੀ ਔਰ ਕੀ ਕੀਤਾ ਪੰਡਿਆ ਕਵਣੇ ਕੁਬਤਾ ਤੁਮ ਲਾਗੇ ਬੁੱਢੋ ਕੇ ਪਰਵਾਦ ਸਕਲ ਸੁ ਨਾਮਨਾ ਜਪੋ ਭਾਗੇ ਓਏ ਭਾਗੇ ਕਿਉਂ ਨਹੀਂ ਨਾਮ ਜਪਦਾ ਪਰਮੋਤਾ ਜਾਪ ਰਿਹਾ ਵਾੜਾ ਉਹ ਨਹੀਂ ਸੀ ਨਾਮ ਤਾਂ ਹੀ ਕਿਹਾ ਸੀ ਉਹ ਨਾਮ ਨਹੀਂ ਹੈ ਵਾੜਾ ਵਾੜਾ ਤਦ ਕਿਹਾ ਸੀ ਉਹ ਨਾਮਨਾ ਜਪੋ ਭਾਗੇ ਨਾਮਨਾ ਜਪੋ ਭਾਗੇ ਉਹਦਾ ਨਾਮ ਨਾਮ ਜਪਦਾ ਸੀ ਪੜਨਾ ਤਾਂ ਵਾੜਾ ਉਹ ਕਬੀਰ ਕੰ다 ਨਾਲ ਆ ਬਲੇ ਉਹ ਭਾਗੇ ਸਾਡੇ ਸਾਥ ਫੇਰ ਉਹ ਹੀ ਕੰਮ ਫੜੀ ਫਿਰਦੇ ਕਬੀਰ ਵਾਲੇ ਵੀ ਠੀਕ ਹੈ ਉਹ ਬੜਾ ਵਾਲੇ ਵੀ ਠੀਕ ਹੈ ਦੋ ਠੀਕ ਨੇ ਬਾਹਲਾ ਨਾ ਰਾਮ ਰਾਮ ਕਰਨਾ ਹੈ ਕੁਝ ਵੀ ਕਰਨਾ ਨਾਮ ਜਪਣਾ ਨਹੀਂ ਹੈ ਇਹਦੇ ਕਰਕੇ ਆਇਆ ਹੋਇਆ ਇਹਦੇ ਵਿੱਚ ਉਹ ਜਗਾਇਆ ਸੀ ਉਹਨਾਂ ਨੂੰ ਦੁਸ਼ਤ ਪ੍ਰਚੰਡੜੀ ਦੁਸ਼ਤਾਂ ਨੂੰ ਜਗਾਈਦਾ ਹੁੰਦਾ ਪਰਵਾਰ ਨੂੰ ਡੋਬੋ ਰਿਹਾ ਦੋਸ਼ਲੀ ਐ ਉਹ ਪੰਡਿਆ ਕਵਨ ਕਵਤ ਤੁੰਗ ਲਾਗੇ ਬੁੱਢੋ ਕੇ ਪਰਵਾਰ ਸਾਰੇ ਚੇਲੇਆਂ ਨੂੰ ਡੁੱਬ ਜੇਗਾ ਨੀ ਦਰੁਨੀਕਾ ਆਬ ਡੁੱਬੇ ਜਾਓ ਬੇਲਦ ਮੈਂ ਚੇਲੇ ਦੇ ਵਾਹ ਇਹ ਜਿਹੜੇ ਇਹ ਕੰਮ ਕਰਾਣੇ ਨੇ ਇਹਨਾਂ ਨੂੰ ਦੋਸ਼ ਕਿਉਂ ਉਹਨਾਂ ਨੂੰ ਵੀ ਪਰਜੰਡ ਕਰ ਲਈ ਹੈ ਗਿਆਨ ਹੁੰਦਾ ਰੋਸ਼ਨੀ ਕਰ ਲਈ ਇਹ ਕੰਮ ਨਾ ਕਰੋ ਛੱਡ ਦਿਓ ਪਚੰਡ ਉਹਨਾਂ ਨੂੰ ਰੋਸ਼ਨੀ ਕਰਕੇ ਦਿਖਾਉਣਾ ਵੀ ਆ ਜਿਹੜਾ ਤੁਹਾਡਾ ਕੰਮ ਬੜਿਆ ਇਹ ਤੇ ਪਾਪ ਹੈ ਇਹ ਪਾਪ ਹੈ ਤੁਹਾਡਾ ਛੱਡ ਦੇ ਉਹਨੂੰ ਪਾਪ ਨੂੰ ਪਰ ਚੰਡ ਗਿਆਨ ਕਰਕੇ ਦਿਖਾਇਆ ਰੋਸ਼ਨੀ ਪਾਈ ਹੈ ਉਹਨਾਂ ਦੇ ਕੰਮ ਤੇ ਉਹਨਾਂ ਦੇ ਕਰਮ ਤੇ ਰੋਸ਼ਨੀ ਪਾਈ ਹੈ ਖੰਡ ਅਖੰਡਣੀ ਕਾਲ ਕੱਟੇ ਖੰਡ ਅਖੰਡਣੀ ਜਿਹੜੇ ਖੰਡ ਨੇ ਖੰਡ ਕੀ ਨੇ ਕਿ ਤਰ੍ਹਾਂ ਖੰਡ ਰੇ ਦੋ ਇਹ ਉਹ ਕਰਨਾ ਐ ਐ ਜੋੜ ਦੇਣਾ ਨਾ ਤੁਹਾਨੂੰ ਕਬ ਦੁਬਾਰਾ ਤੋੜ ਕੇ ਦਿਖਾਵੇ ਕੋਈ ਜਿਹੜੇ ਖੰਡਰੇ ਦੋਏ ਸੇ ਨੂੰ ਆਏ ਜੋੜ ਦੇਣ ਅਖੰਡ ਨਹੀਂ ਕਾਲ ਕਰ ਦੇਣ ਤੋੜ ਕੇ ਦਿਖਾਵੇ ਕਾਲ ਕੱਟੇ ਕਾਲ ਕੱਟਿਆ ਜਾਊ ਉਹਨਾਂ ਦਾ ਫਿਰ ਫਿਰ ਕਾਲ ਕਿੱਥੇ ਰਹਿ ਜੂ ਕਲਪਨਾ ਕੱਟੀ ਜਾਊ ਤਾਂ ਹੀ ਜੁੜਨਗੇ ਕਲਪਨਾ ਕੱਟੀ ਗਈ ਦੋ ਇੱਕ ਹੋ ਗਏ ਹੋ ਕਾਲ ਕਿੱਥੇ ਰਹਿ ਗਿਆ ਇੱਕ ਜਦ ਹੋ ਗਏ ਕਾਲ ਰਹਿ ਗਿਆ ਫਿਰ ਕਾਲ ਕੱਟੇ ਆਲ ਦਾ ਪੈਕਟਿਆ ਜਾਊਗਾ ਜੰਮਲ ਬਰਨਾ ਕਟਿਆ ਜਾਊਗਾ ਉਹਨਾਂ ਦਾ ਅਖੰਡਣ ਜਾਂਦ ਹੋ ਜਾਂਦਾ ਹੈ ਜੰਮਲ ਬਰਨ ਜਾਂਦਾ ਹੈ ਚਾਰੇ ਨਰਕ ਨਿਵਾਰੇ ਪਤਿਤ ਉਧਾਰੇ ਮੁੰਡ ਮਥੇ ਚੰਦਰਾਨਨ ਚਾਰੇ ਜਿਹੜਾ ਮਾਨਨ ਹੈ ਦਾ ਇਹਨੂੰ ਚਾਰੇ ਗਾਨ ਦੇ ਦਿੰਦੀ ਹੈ ਚੰਦਰਾਨਨ ਚਾਰੇ ਚਾਰੇ ਗਾਨ ਆਹ ਚਾਰੇ ਇਹਦੇ ਵਿੱਚ ਜਿਆਦੇ ਚਾਰੇ ਗਾਨ ਪੜ ਲੈਂਦਾ ਜਿਵੇਂ ਉਹ ਕਬੀਰ ਨੇ ਦੱਸਿਆ ਚੌਥੀ ਸਟੇਜ ਹਰ ਜਨ ਜੈਸਾ ਚਾਹੀਏ ਜੈਸਾ ਹਰੀ ਹੋਏ ਉੱਥੇ ਤੱਕ ਜਾਂ ਗਿਆ ਉਹ ਪਹੁੰਚਦਾ ਇਹ ਤਾਂ ਲੋਕ ਦਾ ਗਿਆਨ ਹੁੰਦਾ ਅਸਲ ਤੇਨ ਲੋਕ ਦਾ ਗਿਆਨ ਇੱਥੇ ਤੱਕ ਇਹ ਚੌਥਾ ਤਾਂ ਦੱਸਿਆ ਹਰ ਜੈਸਾ ਹੋਏ ਚੌਥਾ ਗਿਆਨ ਥੋੜੀ ਦਿੱਤਾ ਹੈ ਹਰ ਚਾਹੀਏ ਜੈਸਾ ਹਰੀ ਹੋਏ ਚੰਦਰਾਨਨ ਚਾਰੇ ਨਰਕ ਨਿਵਾਰੇ ਨਰਕ ਨਿਵਾਰੇ ਫੇਡਰ ਫੇ ਤਾਂ ਜਦੋਂ ਨੂੰ ਇਹ ਨਾ ਸਮਝਾਗੀ ਬੰਲੂ ਪਾਇਆ ਦੀ ਫੇਰ ਫੇਰ ਉਹ ਬੁਰਾ ਕੰਬਲੂ ਕਾ ਜਾਊਗਾ ਫੇਡਰ ਕਨਾਰੇ ਪਦਤ ਉਧਾਰੇ ਮੁੰਡ ਮਥੇ ਪਦਤ ਉਧਾਰੇ ਜਿਹਨੇ ਪਦਤ ਨੇ ਸਤਨੂੰ ਕਰੇ ਨੇ ਜਿਹੜੇ ਉਹਨਾਂ ਦਾ ਵੀ ਉਧਾਰ ਕਰ ਦਿੰਦੀ ਹੈ ਮੁੰਡ ਮਥੇ ਮੁੰਡ ਜਿਹੜੇ ਰੇ ਮੁੰਡ ਮੁੰਡ ਉਹਦਾ ਪੰਧਾ ਮੁੰਧਰ ਕਰਦੀ ਐ ਮਨ ਨੂੰ ਖੋਜਦੀ ਐ ਪੁੱਤਰ ਦਾ ਕੋ ਨਾਨਕ ਬਨ ਆਪਾ ਚੀਦੇ ਬੇਟੇ ਨੇ ਭਰਮ ਕੀ ਕਾਇ ਆਪਾ ਚੀਦੇ ਪੈਂਦਾ ਆਪਾ ਖੋਜਣਾ ਪੈਂਦਾ ਆਪਾ ਕੋਈ ਲੰਦਾ ਜਿਹੜਾ ਆਪਾ ਆਪਾਂ ਖੋਜਣ ਚ ਸਹਾਇਆ ਕਰ ਮਤ ਮੁੰਡ ਮਥੇ ਦਾ ਮੇਰਾ ਮੁੰਡ ਕੀ ਐ ਮੁੰਡ ਕਿਨੂ ਕਹਾਇਆ ਇਹਦਾ ਮੁੰਧਰ ਕਰਨਾ ਇਹਨੂੰ ਖੋਜਣ ਮੈਂ ਕੀ ਹਾਂ ਇਹ ਤਾਂ ਸਵਾਲ ਹੈ ਬੜਾ ਮੈਂ ਸ਼ਰੀਰ ਨਹੀਂ ਹਾਂ ਫਿਰ ਮੈਂ ਕੀ ਹਾਂ ਇਹ ਹੀ ਤਾਂ ਸਵਾਲ ਹੈ ਇਹ ਹੀ ਬੁਲਟਵਾਂ ਤੇ ਜੈ ਜੈ ਹੋਸੀ ਮੈਕਾਸੁਰ ਮਰਦਨ ਤੂੰ ਮਰ ਬਦੂਸਨ ਕਥੇ ਜੈ ਜੈ ਹੋਸੀ ਮੈਕਾਸੁਰ ਮਰਦਨ ਤੂੰ ਮਰ ਜਿਹੜਾ ਹੈਗਾ ਟੋਬਰ ਕਹਿੰਦੇ ਨੇ ਪਰਮ ਨੂੰ ਪਰਮ ਦਾ ਨਾਸ ਕਰ ਦਿੰਦੀ ਦੇ ਕੋਲਾ ਫਜ਼ਾ ਨਾਸ ਕਰਦੀ ਲਕਿ ਨਾਸ ਜੋਦਨ ਨਾਸ ਕਰਦੇ ਹੋਇਆ ਤੋ ਇਹੀ ਗੱਲ ਸੁਣਦੇ ਤੋ ਇਹੀ ਕਥਾ ਤੇਰੀ ਚੱਲਦੀ ਕਿ ਤੂੰ ਪਰਮਦਾ ਨਾਸ ਕਰ ਦਿੰਦੀ ਗੁਰ ਪ੍ਰਸਾਦ ਪਰਮ ਦਾ ਨਾਸ ਆਜ ਇਹ ਕਥਾ ਤੇਰੀ ਚੱਲਦੀ ਐ ਇਹੀ ਕਥਨ ਕਰਦੇ ਨੇ ਲੋਕ ਇਹੀ ਕਹਿੰਦੇ ਚਲੇ ਆਏ ਨੇ ਕਿ ਪਰਮ ਦਾ ਨਾਸ ਪ੍ਰਚੰਡ ਗਿਆਨ ਤੋਂ ਬਿਨਾ ਨਹੀਂ ਹੁੰਦਾ। ਪ੍ਰਚੰਡ ਗਿਆਨ ਨੂੰ ਹੀ ਚੱਡੀ ਕਹਿੰਦੇ ਨੇ। ਪ੍ਰਚੰਡ ਗਿਆਨ ਤੋਂ ਬਿਨਾ ਪਰਮ ਦਾ ਨਾਸ ਨਹੀਂ ਹੁੰਦਾ। ਜਦ ਕੋਈ ਗਿਆਨ ਘਟ ਬੜਿਆ ਹੈ ਨਾ ਉਹਨੂੰ ਪ੍ਰਚੰਡ ਗਿਆਨ ਕਹਿੰਦੇ। ਪ੍ਰਚੰਡ ਗਿਆਨ। ਰਕਤਾਸੁਰ ਮਰਦਨ ਚੰਦ ਚਕਰਦਨ, ਦਾਣਵ ਬੜਾਲ ਵਧੇ। ਰਕਤਾਸੁਰ ਮਰਦਨ ਰਤਾਸੁਰ ਕੌਣ ਹੈ ਲੋਭੀ ਹੈ ਇਹ ਵੀ ਵਰਤਨ ਇਹਦਾ ਵੀ ਵਰਤਨ ਇਹਦਾ ਵੀ ਜਿਹੜਾ ਹੈ ਨਾ ਸੁਭਾਅ ਬਦਲਣ ਵਾਲਾ ਹੈ ਇਹ ਵੀ ਬਦਲ ਵਾਲਾ ਹੈ ਇਹਦਾ ਸੁਭਾਅ ਲੋਭ ਲੋਭ ਚੰਡ ਜਿਹੜਾ ਹੈਗਾ ਚਿੱਤ ਹੈ ਉਹ ਤਾਂ ਫਿਰ ਕੀ ਹੋਊਗਾ ਚਿੱਤ ਚਿੱਤ ਹੋਊਗਾ ਜੇ ਬਸੇ ਕਹਣਾ ਬਿਸਮਤ ਵਿੱਚ ਲੱਜੂ ਚੱਕਰ ਤਾਂ ਚੱਕਰ ਦਨ ਚੱਕਰ ਤਲ ਫਿਆਜ ਕਰਨ ਚੱਕਰ ਤਾਂ ਹਰਾਂ ਨੂੰ ਕੋ ਜਾਣ ਜਦੋਂ ਵਰਜਾਣਾ ਲੋਭ ਛੁੱਟ ਜਾਣ ਉਹਨੇ ਬਿਸਮਤ ਚਲਾ ਜਾਣਾ ਚਿਤਰ ਚਿਤਰ ਨੂੰ ਤਾਂ ਪਤਾ ਨਹੀਂ ਵੀ ਹੋ ਸਕਦਾ ਚੱਕਰ ਦਾ ਨਾ ਬਸਵਾ ਚਲਾ ਜਾ ਚੱਕਰਤ ਹੋ ਜਾਣ ਹਰਾਂ ਨੂੰ ਕੋ ਜਾਣ ਇਹ ਕੀ ਹੋ ਗਿਆ بسਵਾਦ ਦੇ ਚਲਾ ਜਾਊਗਾ ਦਾਨਵਰਦਨ ਦਾਨ ਉਹ ਜਿਹੜਾ ਪਰ ਜਿਹੜਾ ਉਹਨੇ ਸ਼ਾਲੂ ਵਿੱਚ ਆ ਜਾਣਾ ਅਰਦਨ ਆਪਣਾ ਆਪ ਅਰਪਣ ਕਰ ਦੇਣਾ ਸਭ ਕੁਝ ਅਰਦਨ ਅਰਪਣ ਕਰਤਾ ਉਹ ਉਹ ਹੋ ਜਾਣਾ ਉਹਨੇ ਮੰਨ ਉਹ ਸੈਂਟਰ ਹੋ ਜਾਣਾ ਤਾਂ ਇਹਦਾ ਵੀ ਸਵਾਦ ਵਿੱਚ ਜਾਣਾ ਸੈਂਟਰ ਹੋਏ ਤੇ ਬਡਾਲ ਵਧੇ ਬਡਾਲ ਜਿਹੜਾ ਹੈਗਾ ਉਹਦਾ ਵੱਲ ਹੋ ਜਾਣ ਕਪਟ ਬਡਾਲ ਕਪਟ ਹੈ ਇਹ ਕਪਟੇ ਹੁੰਦੇ ਹੈ ਜਿਹੜਾ ਧੋਖਾ ਕਰਨਾ ਕਿਸਨ ਆ ਕਮੇਜ ਕੇ ਬਹਿ ਜਾਣਾ ਚੇਲੇ ਬਣ ਜਾਣਾ ਉਹਨਾਂ ਨੂੰ ਫਿਰ ਕਪਟ ਕਰਨਾ ਕਪਟੇ ਹੈ ਉਸ ਤਵੰਦਨ ਉਹ ਤਾਂ ਸੰਤਬੰਦੀ ਬੈਠੇ ਨੇ ਤੂੰ ਸੱਪ ਬਣਿਆ ਬੈਠਾ ਉਹ ਬਲ ਤੇਰੇ ਸੰਤਾਏ ਸੱਪਾਂ ਦਾ ਆਇਆ ਤੇ ਨੈਰੀ ਉਹਨਾਂ ਦੀ ਤੇ ਇਹ ਬਿੜਾਲ ਨਾਮ ਹੈ ਸ਼ਿਕਾਰ ਖੇਡਣਾ ਆ ਅੱਖਾਂ ਵਿੱਚ ਕੇ ਸਰ ਜਿਹੜਾ ਹੈ ਹਾਂਜੀ ਜਿਹੜਾ ਹੈ ਇਹ ਕਪਟ ਹੈ ਕਪੜਾ ਬੰਦ ਕਰਦੀ ਹੈ ਕੱਟਣ ਵਾਲੀ ਚੀਜ਼ ਹੈ ਪਰ ਕੱਟਣ ਵਾਲੀ ਚੀਜ਼ ਹੈ ਖਤਮ ਕਰਨ ਵਾਲੀ ਚੀਜ਼ਾਂ ਨੇ ਸਰਧਾਰ ਬਿਬਰਖਣ ਦੁਰਜਣ ਧਰਖਣ ਅਤੁੱਲ ਅਮਰਖਣ ਧਰਮ ਤੁਝੇ ਸਰਧਾਰ ਬਿਬਰਖਣ ਤੀਰਾਂ ਦੀ ਧਾਰ ਜਿਹੜੀ ਸਰਧਾਰ ਉਹਦੀ ਬਾਰਿਸ਼ ਕਰਦੀ ਜੀ ਸਰਧਾਰ ਸ਼ਬਦਾਂ ਦੀ ਬਾਰਿਸ਼ ਕਰਦੀ ਵਰਖਾ ਤਤ ਕੇ ਵਰਖਾ ਕਰਦੀ ਸਰਧਾਰ ਹੋਰ ਕੀ ਦੁਰਜਣ ਧਰਖਣ ਜਿਹੜੇ ਦੁਰਜਣ ਹੁੰਦਾ ਜੀ ਲੋ ਉਹਨਾਂ ਦਾ ਸੁਣ ਸੁਣ ਕੇ ਦਿਲ ਧੜਕਦਾ ਇਹ ਕੀ ਹੋਣ ਉਹ ਜੋ ਕਹਿ ਰਹੇ ਨਾ ਉਹ ਤਾਂ ਖਲਾਫ ਹੈ ਗੱਲ। ਜੋ ਪ੍ਰਚਾਰ ਹੋ ਰਿਹਾ ਉਹ ਤਾਂ ਸਾਰੇ ਉਲਟ ਹੈ। ਉਹਨਾਂ ਦਾ ਦਿਲ ਤੜਫਦਾ ਪੀਏ ਕੀ ਗੱਲ? ਗੱਲ ਤਾਂ ਸੱਚੀ ਹੈ ਉਹ ਕੱਟ ਸਕਦੇ ਨਹੀਂ। ਆਪਣੀ ਨਾਲ ਝੂਠੀ ਪੈ ਗਈ। ਕੀ ਕਰ? ਭਾਜਾ ਮੁਰਾ ਲਾਤੀ। ਵੱਡੇ ਵੱਡੇ ਟੈਂਕ ਸੀਗੇ, ਭਰੋਸਾ ਸੀ ਵੀ ਅਸੀਂ ਤਾਂ ਜਾਵਾਂਗੇ ਸਾਨੂੰ ਕੋਣ। ਉਧਰੋਂ ਜੇ ਗੋਲੇ ਚੱਲੇ ਛੋਟੇ ਛੋਟੇ। ਉਹਨੇ ਉੜਾਤੇ ਟੈਂਕੋ ਫਿਰ ਪਤਾ ਲੱਗਿਆ ਵੀ ਤਾਂ ਕੁਝ ਵੀ ਨਹੀਂ ਫੇਰ ਧੜਕਣ ਲੱਗ ਗਿਆ ਉਹ ਬੜਾ ਭੋਸਾ ਬੋਲੀ ਬੈਠੇ ਤੇ ਜਿੱਤਦਾ ਜੋ ਦੂਏ ਪਾਸੇ ਤੇ ਚੱਲੀਆਂ ਫੇਰ ਪਤਾ ਦਿਲ ਧੜਕਣ ਲੱਗ ਗਿਆ ਇਹਨਾਂ ਗੱਲਾਂ ਦਾ ਤਾਂ ਜਵਾਬ ਨਹੀਂ ਹੈ ਸਾਡੇ ਕੋਲ ਦੂਏ ਪਾਸੇ ਦਾ ਇੱਕ ਵੀ ਜਵਾਬ ਨਹੀਂ ਕਿਸੇ ਗੱਲ ਦਾ ਤੁਹਾਡੇ ਕੋਲ ਦਿਲ ਤਾਂ ਧੜਕਣ ਹੀ ਹੈ ਜਿਹੜਾ ਉਧਰੋਂ ਹਥਿਆਰ ਆਉਂਦਾ ਉਹਦੀ ਰਿਕਵਰਟ ਹੈ ਨਹੀਂ ਸਾਡੇ ਦੀ ਰਿਕਵਰਟ ਹੈ ਉਹਨਾਂ ਕੋਲ ਉਹ ਨਾਲ ਵੀ ਘੁਰ ਕਬੜੀ ਜਦ ਦੂਏ ਪਾਸੇ ਦੀ ਹਥਿਆਰ ਦੇ ਰਕਾਵਟ ਨਾ ਹੋਵੇ ਦਿਲ ਤਾਂ ਨਾ ਉਹ ਗੱਲ ਦਾ ਜਵਾਬ ਨਹੀਂ ਕਿਸੇ ਦਾ ਦਿਲ ਧਰਮ ਤੋਂ ਜੇ ਅਤੁੱਲ ਅਮਰਖਣ ਅਮਰਖਣ ਕੀ ਹੈ ਆ ਜਿਹੜਾ ਅਬਰਕਖੜਾ ਹੈ ਆ ਜਾਂ ਵੀ ਪੈਣ ਲੱਗਦਾ ਕੋਈ ਤੋਲ ਕੇ ਪੈਂਦਾ baarish hundi hai baarish hundi hai atul amarkhan dharm tujhe abarkhan da matlab hai abrada jehda hai na o di barkha hai hor ambar di barkat baarish jad hundi hai tol ke to hundi ni atul hai bas hi jande ਕੋਈ ਪੀਓ ਕੋਈ ਨਾ ਪੀਓ ਹੁਣ ਵੀ ਤਾਂ ਪਈ ਜਾਂਦੇ ਗਾਂ ਧਰਤੀ ਐ ਕਹੇ ਜੀ ਆ ਉਹਦੇ ਚ ਜਾਂਦਾ ਪਾਣੀ ਨਹੀਂ ਜਾਂਦਾ ਕੋਈ ਸੋਖ ਲੈਂਦੀ ਐ ਕੋਈ ਨਹੀਂ ਸੋਖਦੀ ਪਰ ਵਾਜਦਾ ਸਾਰੇ ਪਈ ਜਾਂਦੀ ਐ ਪਥਰਾਂ ਤੇ ਵੀ ਪੈ ਜਾਂਦੀ ਐ ਤੇ ਬਿਸਦੇ ਪੈ ਜਾਂ ਡੱਬੇ ਹੁਣ ਪਾਣੀ ਸੋਖ ਲੈ ਤੇ ਜਾਨ ਨਹੀਂ ਤੇ ਘੋਰਾ ਕਿਤੇ ਦਿਮਗ ਹੋ ਜਾਵਾ ਹੋ ਜਾਂਦਾ ਤੂੰ ਫੜਦਾ ਨਹੀਂ ਜਾਈ ਜੀ ਧਰਤੀ ਉਹ ਜਾਉ ਇਸ ਕਰਕੇ ਅਮਰਖਣ ਤੋਲੇ ਹੁੰਦਾ ਵੀ ਤਾਂ ਪੈਂਦਾ ਬਿਨਾ ਤੋਲੇ ਬਿਲੇ ਤੇ ਹੀ ਪਰ ਲਾਭ ਕੋ ਕਿਨੂੰ ਕਿਨਾ ਹੁੰਦਾ ਉਹ ਅਲੱਗ ਗੱਲ ਹੈ ਉਹ ਗੱਲ ਅਲੱਗ ਧਰਮ ਤੋ ਜੇ ਉਹਦਾ ਫਾਇਦਾ ਕਿਨੂੰ ਕਿਨਾ ਹੁੰਦਾ ਕਿਨੂੰ ਨਹੀਂ ਤੇਰਾ ਇਸੇ ਗੱਲ ਦੀ ਝੰਡਾ ਬਰਦਾਸ਼ਤ ਤੂੰ ਜ਼ਬਰਦਸਤ ਸ਼ੌਣ ਦੀ ਔਰ ਦੀ ਬਰਕਾ ਕਰ ਦਿਆ ਸਭ ਨੂੰ ਵੇਖੇ ਨਾ ਤਾਂ ਵੀ ਪੌੜੇ ਜੇ ਕਹੇ ਕੋਈ ਜਿਆਦਾ ਪੈ ਗਿਆ ਵੀ ਮੇਰਾ ਤਾਂ ਸੱਜਿਆ ਹੋਇਆ ਸੀ ਪਹਿਲਾਂ ਉੱਤੇ ਨਾ ਪਾ ਉਹਨੇ 10000 ਆਦਮੀ ਦਾ ਨਹੀਂ ਸੱਜਿਆ ਆਇਆ ਉਹ ਹੈਰਾ ਕਰਨਾ ਉਹਨਾਂ ਨੂੰ ਹਸਾਂ ਦੌੜੇ ਰੋੜੇ ਰੋੜੇ ਦੱਸ ਕੀ ਹੁਣ ਛਤਰੀ ਦੇ ਦੇ ਕੱਲੇ ਤੇ ਅਦੋਲਾ ਉਹ ਤਰਫ ਤੋਂ ਇਹੀ ਤਰਫ ਤੂੰ ਮਰਾਜ ਵੀ ਨੂੰਸਨ ਤੂੰ ਬਰਾਜ ਤੂੰ ਜਿਹੜਾ ਧੂਆ ਜਿਹੜਾ ਪਰਮ ਗਿਆਨੀ ਹੈ ਤੂੰ ਮੁਰਾਦ ਸਾਹਿਬ ਜਿਹੜਾ ਪਰਮ ਗਿਆਨੀ ਪਰਮ ਪੈਦਾ ਕਰਨ ਵਾਲਾ ਇਹਨਾਂ ਵੀ ਲੋਭੀ ਹੈ ਉਹਦਾ ਜੋ ਖੂਨ ਚੂਸ ਲੈਣ ਉਹ ਪਰਮ ਗਿਆਨੀ ਵੀ ਲੋਭੀ ਹੁੰਦਾ ਅਸਲ 'ਚ ਜਿਹੜਾ ਪਰਮ ਪੈਦਾ ਕਰਦਾ ਲੋਭ ਕਰਕੇ ਕਰਦਾ ਉਹਨੇ ਹੋਰ ਪਰਮ ਪੈਦਾ ਕਰਕੇ ਕੀ ਕਰ ਪੁੱਛ ਤਬ ਗਿਆਨੀ ਮਹਿਜ਼ ਲੋਭੀ ਨੇ ਜਿਹੜੇ ਕਹਿੰਦੇ ਤੇਰੇ ਤੇ ਸਾਢੇ ਸੱਤੀ ਆ ਗਈ ਫਲਾਣਾ ਟਿਪਕਾ ਬਾਅਦ ਜੋ ਪੈਸੇ ਲੈ ਕੇ ਹੋ ਕਹਿੰਦੇ ਨੇ ਇਹਦਾ ਉਪਾਏ ਕਰ ਦਿੰਦੇ ਪਰ ਮਗਲਾਂ ਦੇ ਪਿਛੇ ਲੋਭ ਹੁੰਦਾ ਔਰ ਨਹੀਂ ਹੁੰਦਾ ਉਹਦੇ ਪਿਛੇ ਵੀ ਲੋਭ ਹੈ ਉਹਨਾਂ ਦਾ ਹੋਰ ਕੀ ਹੈ ਪਹਿਲਾਂ ਡਰਾਉਣੀ ਦੇ ਪਾ ਕੇ ਫਿਰ ਆਪਣਾ ਓਟੀਕਾ ਲਾਉਣਗੇ ਉਹ ਚਾਹੇ ਪਾਣੀ ਦਾ ਹੋਵੇ ਜਾਂ ਕਸ ਦਾ ਹੋਵੇ ਪੈਸੇ ਫਿਰ ਉਹਦੇ ਵਸੂਲ ਤਾਂ ਕਰ ਆ ਵਸੂਲ ਤਾਂ ਕਰ ਨਹੀਂ ਦੇਉਣਾ ਨੇ ਜਾਂ ਇਲਾਜ ਕਰਨਗੇ ਫਿਰ ਵਸੂਲ ਤਾਂ ਕਰਨਾ ਹੀ ਹੈ ਨਾ ਸਰਾਉਣ ਤੋਂ ਚੂਸਨ ਕਿਨੇ ਆਲਾ ਤੁਸੀਂ ਜਾਫ ਕਰਾਉਣਾ ਫਿਰ ਹੋਏ ਕਿਨੇ ਆ ਨਿਕਲ ਹੋਣ ਸਰਾਉਣ ਉਹਨਾਂ ਦੇ ਚੋਂ ਖੂਨ ਚੂਸ ਲੈਣਾ ਇਹ ਲੋਕਾਂ ਦਾ ਖੂਨ ਚੂਸਦੇ ਨੇ tain loblu ratt ke hoya ਉਹ ਲੋਕਾਂ ਖੂਨ ਚੂਸਦੇ ਨੇ ਜਿਹੜਾ ਦਿੱਤੇਗਾ ਫਿਰ ਉਹ ਲੋਵ ਰਤ ਅਸਲ ਲੋਵ ਰਤ ਆਪਣੀ ਰਤ ਨਹੀਂ ਹੁੰਦੀ ਲੋਕਾਂ ਦੀ ਰਤ ਪੀਤੀ ਹੁੰਦੀ ਹੈ ਜਿਨ ਜੋਗ ਚ ਆਪਣੀ ਰਤ ਹੁੰਦੀ ਹੈ ਜੋਗ ਚੋਂ ਰਤ ਨਿਕਲਦੀ ਹੈ ਜੋਗ ਦੇ ਵਿੱਚੋਂ ਆਪਾਂ ਦੇਖ ਨਹੀਂ ਰਤ ਨਿਕਲਦੀ ਹੈ ਉਹਦੀ ਆਪਣੀ ਹੁੰਦੀ ਹੈ ਜੋਗਤਾ ਰਤ ਪੀ ਕੇ ਮਿੱਟੀ ਬਣਾ ਦਿੰਦੀ ਹੈ ਜੋਗ ਪਿੰਦੀ ਰਤਾਂ ਬਣਦੀ ਮਿੱਟੀ ਹੈ ਖਾਦੀ ਮਿੱਟੀ ਹੈ ਬਣਦੀ ਰਤ ਹੈ ਜੇ ਜੋਕ ਜੋ ਮਾੜੀ ਮੋਟੀ ਰਾਤ ਨਿਕਲਦੀ ਹੈ ਨਾ ਤਾਂ ਮਿੱਟੀ ਗਾ ਕੇ ਖਾਦੀ ਹੋ ਜਾਂਦੀ ਹੈ ਜੇ ਰਾਤ ਪੀਲ ਵਿੱਚ ਰੁੱਧਰਾ ਦੀ ਫੇਕੜਾ ਉਹ ਜੇ ਰਾਤ ਬੱਝ ਜਾਂਦੀ ਹੈ ਰਾਤ ਉਹ ਜਿਹੜਣੀ ਆਜ ਕੋਈ ਮਿੱਟੀ ਬਣ ਜਾਂਦੀ ਹੈ ਇਹ ਬਣ ਜਾਊਗਾ ਇਹ ਤਾਂ ਇਹ ਜਾਈਆ ਲੋਬੀ ਦਾਦਾ ਦਿੱਤਾ ਆ ਪੈਸਾ ਮਿੱਟੀ ਬਣਾ ਦੇਣਾ ਉਹਨੇ ਹਾਂਜੀ ਸੁੰਭ ਨੇ ਸੁंभ ਮਥੇ ਸੁਭ ਨਾ ਪਾਤ ਨੇ ਸੁਭ ਮਥੇ ਹਾਂ ਸੁਭਨ ਸੁਭਨ ਰਬ ਦਾ ਸੁਭਨ ਪਾਤ ਹਾਂ ਸੁਭਨ ਪਾਤ ਨੇ ਸੁਭ ਮਥੇ ਹਾਂ ਸੁਭਨ ਜਿਹੜਾ ਹੈਗਾ ਇਹਨੂੰ ਤਾਂ ਪ੍ਰਾਪਤੀ ਮਥਿਆ ਗਿਆ ਨੇ ਸੁਭ ਗਿਆ ਉਹ ਦਾ ਆਇਆ ਜਿਹੜਾ ਕੋਲਾ ਆਇਆ ਵਈ ਰੜਕਾ ਹੈ ਲੜਕਾ ਦਹੀ ਹੈ ਦਹੀਂ ਚ ਲੱਸੀ ਹਟ ਕਰਤੀ ਵਖੜ ਹਟ ਗਾਲਿਆ ਜਿਹੜਾ ਰਲਿਆ ਦੀ ਮਾਇਆ ਜੋ ਹੀ ਮਥਿਆ ਬਰ ਜਿਹੜਾ ਮਾਇਜ ਫਸਿਆ ਸੀ ਉਹ ਵਖੜ ਉਹੀ ਕੱਢਿਆ ਬਾਹਰ ਮਤ ਕੇ ਗਿਆ ਗਦਰ ਉਹਦੇ ਵਿੱਚ ਸੁਭ ਰੂਪ ਦੂਏ ਸੁਭ ਪਾਦ ਨੇ ਪਹਿਲੇ ਪਹਿਲੇ ਵਖੜ ਜੋ ਵਖੜ ਝੜ ਦਿੱਤਾ ਜਾ ਕੇ ਪਹਿਲਾ ਕੋਈ ਤਾਂ ਬਕਰ ਥਾ ਹੀ ਕਾਲਜ ਕੁਝ ਹੋਰ ਕੱਢ ਕੇ ਹੋ ਜੇ ਰਹਾ ਇੱਕ ਹੋ ਗਿਆ ਜਿਹੜਾ ਮਾਇਆ ਵਾਲਾ ਉਹ ਵੀ ਕੱਢ ਕੇ ਹੋ ਨਾ ਮਨ ਮਾਇਆ ਜੋ ਕੱਢ ਕੇ ਜਾਓ ਜ ਦੂਏ ਚ ਪਾਇਆ ਚਿਤ ਵਰਗੇ ਆ ਉਹ ਉਹ ਨੂੰ ਪ੍ਰਾਪਤੀ ਹੋਈ ਐ ਸੁਮਨ ਪਾ ਤ ਸੁਮਨ ਨੂੰ ਤਾਂ ਪ੍ਰਾਪਤੀ ਹੋਈ ਐ ਉਹਦੇ ਕੋਲੋਂ ਕੀ ਗਿਆ ਸੁਪ ਕੋਲ ਨਹੀਂ ਕੋਈ ਗਿਆ ਕੈਂਟ ਕੋਲੋਂ ਵੀ ਕੋਈ ਜਾਂਦਾ ਹੁੰਦਾ ਇਹ ਦੋਏ ਸੁਮਨ ਬਈ ਮਨ ਚਿਤ ਦੀ ਗੱਲ ਐ ਉੱਤੇ ਅਗੇ ਮੁੰਡਾ ਕੋ ਮੁੰਡਾ ਜੋੜਾ ਕਰਕੇ ਇਹ ਮੁੰਡਾ ਬਣਾਇਆ ਤਾਂ ਮੁੰਡਾ ਜੋੜਾ ਕੀਤਾ ਇਹਦਾ ਨਾ ਘਾਰੇ ਜੋੜਾ ਕੀਤਾ ਕਿ ਜੋੜਾ ਕਰਤਾ ਜੇ ਤਰ ਮਨੇ ਕਹੋਗੇ ਅਬ ਕੋ ਹੱਥ ਲਗਾ ਬਤੀ ਚੰਡੀ ਉਹਨ ਹੱਥੇ ਲਾਇਆ ਸਪਰਸ਼ੇ ਦਿੱਤਾ ਉਹ ਤਾਂ ਸਦੇ ਹੱਥੇ ਰੱਖਿਆ ਉਹ ਤਾਂ ਸ਼ਬਦ ਦਾ ਸਪਰਸ਼ੇ ਦਿੱਤਾ ਉਹਨੂੰ ਤਾਂ ਉੱਡ ਕੋ ਮੁੱਢ ਜੁਦਾ ਕਰਕੇ ਮੁੱਢ ਦਾ ਮੁੱਢ ਜੁਦਾ ਕਰਤਾ ਉਹ ਲੜਕ ਲਿਆ ਨਾ ਅਟ ਕਰਤਾ ਮੰਥਨ ਕਰਕੇ ਉਹ ਅਟ ਮੱਖਣ ਪਾਉਣ ਵੇਲੇ ਉਹ ਜਾਂ ਕੋਲ ਕੀਤਾ ਉਹਨੂੰ ਜੈ ਜੈ ਹੋਸੀ ਮੈਕਾਸੁਰ ਮਰਦਨ ਆਦ ਅਨੀਲ ਅਗਾਧ ਜਾਇਜ ਹੋਸੀ ਮੈਂ ਖਸਰ ਮਰਦਨ ਇਹ ਮੈਂ ਖਸਰ ਮਰਦਨ ਤੇਰੀ ਜਾਇਜ ਕਾਰ ਇਸ ਕਰਕੇ ਹੋ ਰਹੀ ਆਦ ਅਨਿਲ ਅਗਾਦ ਆਦ ਅਨਿਲ ਅਗਾਦ ਕਥਾਂ ਸ਼ੁਰੂ ਤੋਂ ਤੇਰੀ ਕਥਾ ਚਲਦੀ ਹੋਈ ਹੈ ਇਹ ਕਥਾ ਕਈ ਵਾਰ ਸ੍ਰਿਸ਼ਟੀ ਪੈਦਾ ਹੋਈ ਕਈ ਵਾਰ ਫਸਰੋ ਪਾਸ ਸਦਾ ਸਦਾ ਇੱਕ ਵਤੂ ਕੋਈ ਨਹੀਂ ਰਿਦੂ ਮੇਸ਼ਾ ਇੱਕ ਕੰਕਰ ਆ ਇੱਕ ਦਿਨ ਉਹ ਕਹ ਲਾ ਗਿਆ ਨਾ ਤੂੰ ਸਦਾ ਹੀ ਕੰਕਰ ਸਦਾ ਹੀ ਤਉ ਪ੍ਰਸਾਦ ਪਾਦਲੀ ਛੰਦ ਹਮ ਕਹੋ ਦੇਵ ਸਰਬੰਗ ਵਿਚਾਰ ਜਿਮ ਕੀ ਉਹ ਆਪ ਕਰਤੇ ਪਾਸਾਰ ਹਮ ਦੇਵ ਸਰਬੰਗ ਵਿਚਾਰ ਦੇਵ ਤੁਸੀਂ ਸਾਰੇ ਵਿਚਾਰ ਆਪ ਦੱਸੋ ਹੁਣ देव कोड़ा देव अंतरात्मा चित्त बोलू चित मन नहीं बोल सकदा <coughs> इने मिल रहा है कौन के घंटे बाद होजूगा तुम कहो देव सर्वंग विचार हां ਜਿetri ਤਰੀਕੇ ਲਾੜ ਕਰਤੇ ਪੁਰਖ ਨੇ ਇਹ ਸਾਰਾ ਪਸਾਰਾ ਜਿਮ ਕਿਉ ਆਪ ਕਰਤੇ ਬਸ ਆਪ ਕਰਤੇ ਨੇ ਸਾਰਾ ਆਪ ਸੰਸਾਰ ਪਸਾਰਾ ਰਚਿਆ ਇਹਦੀ ਸਾਰੀ ਵਿਚਾਰ ਆਪ ਦੱਸੋ ਸਾਨੂੰ ਜਦਪ ਅਭੂਤ ਅਨਪੈ ਕਹੋ ਜਥਾ ਮਤ ਤ੍ਰੈਣ ਤੰਤ ਜਦ ਵੀ ਅਭੂਤ ਅਨਪੈ ਸੀ ਜਥਾਤ ਤਲਤ ਸਾਰੀ ਗੱਲ ਪੂਰੀ ਸਮਝਾਓ ਸਾਰੀ ਗੱਲ ਸਮਝਾਓ ਕਿ ਧੁਰ ਤੋਂ ਲੈ ਕੇ ਕਿਵੇਂ ਫਸ ਕੇ ਆਜੀਬ ਕਵਤ ਜਿਵੇਂ ਉਹ ਕਹਿੰਦੇ ਨੇ ਨਾ ਸਿੱਧ ਕਵਤ ਬਾਦਾ ਸਰਪੰਡੀ ਖਾਦਾ ਕਵਤ ਖੋਇਆ ਕਵਤ ਲਾਦਾ ਉਹ ਇਹੀ ਗੱਲ ਪੁੱਛ ਰਹੇ ਵੀ ਜੀ ਅੱਜ ਕਿਵੇਂ ਫਸ ਗਿਆ ਇਹ ਤਾਂ ਇਹਦਾ ਤਾਂ ਰੂਪ ਹੋਰ ਸੀ ਸੱਚ ਗੱਲ ਸੀ ਇਹ ਤਾਂ ਸਾਰਾ ਇਹ ਤਤ ਨੂੰ ਜਣੀ ਜੋੜ ਦੀ ਗੱਲ ਜਦ ਬਾਪੂ ਅਨੰਤ ਹਾਂ ਜਥਾ ਮਤ ਤ੍ਰਣਤੰਤ ਜਦ ਸੱਚਖਣ ਚ ਹੁੰਦਾ ਜਾ ਰਹੇ ਅਪੂਤ ਅਨਪੈ ਅਪੂਤ ਹੁੰਦਾ ਹੈ ਅਪੂਤ ਪੂਰਬ ਹੁੰਦਾ ਕੋਈ ਵਸਤੂ ਨਹੀਂ ਹੈ ਬੇਪੂਤ ਹੁੰਦਾ ਬਾਇਆ ਅਪੂਤ ਹੁੰਦਾ ਬਾਇਆ ਤਾਂ ਪਰੇ ਵਸਤੂ ਤਾਂ ਹੈ ਪਰ ਬਾਇਆ ਨਹੀਂ ਹੈ ਅਨਪੈ ਅਨੰਤ ਅਨਪੈ ਅਨੰਤ ਹੈ ਇਹਨਾਂ ਅਨਪੈਸੀ ਇਹਨਾਂ ਤਸੀ ਤੋ ਕੋਹੋ ਜਥਾ ਮਤ ਤ੍ਰੈਣ ਤੰਤ ਹੋ ਗਿਆ ਪੈਜ ਕਿਵੇਂ ਆ ਗਿਆ ਪੈਸਾ ਗਰਜ ਕਿਵੇਂ ਡੇ ਪਿਆ ਕੀ ਹੋਇਆ ਕੋਈ ਪੈਸਾ ਗਰਜਦਾ ਹੈ ਉਹ ਤਾਂ ਪਹਿਲਾਂ ਤਾਂ ਮੇਰੇ ਪੈਸੀ ਨਾ ਬਲ ਛੁਟਕਿਓ ਬੰਦਰ ਪਰੇ ਨਾ ਜਬ ਬਲ ਸੀਗਾ ਜਾਂਦਾ ਛੁਟ ਗਿਆ ਜਦ ਬਲ ਛੁੱਟ ਕੇ ਤਾਂ ਹੀ ਬਦਲ ਮੈਂ ਤੇ ਪਹਿਲਾਂ ਤਾਂ ਇਹੋ ਕਰਤਾ ਤਾਂ کریم ਕਰਤਾ ਆਪ کریم ਕਾਦਰ ਕਿਰਪਾਲ ਦਾ ਕਾਦਰ ਕੁਦਰਤ ਦਾ ਕੁਦਰਤ ਹੈਗੀ ਜਿਹਦੀ ਉਹ ਆਪ ਕਾਦਰ ਹੈ ਕੁਦਰਤ ਦਾ ਮਾਲਕ ਹੈ ਕਿਰਪਾਲ ਕਿਰਪਾਲੂ ਹੈ ਸਾਣਿਆਂ ਤੇ ਅਦਵੈ ਅਦਵਾ ਦੁਆਇਤਾ ਦੀ ਸਾਰਿਆਂ ਨੂੰ ਇੱਕ ਇੱਕ ਸਮਝਦਾ ਉਹ ਭੂਤ ਉਹ ਭੂਤ ਤਾਂ ਕੋਈ ਬਸਤੂਰੀ ਹੈ ਉਹ ਮਾਇਆ ਰੂਪ ਮਾਇਆ ਰੂਪ ਹੈ ਦੀ ਭੂਤ ਆਨ ਭਾਇ ਤੇ ਆਲ ਅਨ ਭਾਇ ਪੈ ਨਹੀਂ ਸਾਰਿਆਂ ਤੇ ਦਾਤਾ ਦੁਰੰਤ ਦੁਖਦੋਖ ਰਹਤ ਉਹ ਤਾਂ ਦਾਤਾ ਹੈ ਦੁਖਦੋਖ ਰਹਤਾ ਹੈ ਕੀ ਕਿਸੇ ਨੂੰ ਸਜ਼ਾ ਦਿੱਤੀ ਹੈ ਉਹਨੇ ਕੀ ਕਿਸੇ ਨਾਲ ਕੋਈ ਧਰੈਸ਼ ਕੀਤੀ ਹੈ ਜਿਹੜੇ ਇੱਥੇ ਪਾਸ ਤੇ ਪ੍ਰਦਾਤਾ ਦਾ ਇਹ ਜੀ ਦਾ ਹੁਕਮ ਚੱਲਦਾ ਉਹ ਚੇ ਗੁਰਦੇ ਉਹਨਾਂ ਦਾ ਕੋਈ ਕਸੂਰ ਹੋ ਨਹੀਂ ਸਕਦਾ ਇਹ ਕਾਰਨ ਕੀ ਹੈ ਦਾਤਾ ਤਰੰਤ ਦੁੱਖ ਤਾਂ ਕਹਿਣਾ ਰੇ ਅਤਰੀ ਕਰਦਾ ਜੇ ਕਹਿੰਦੇ ਨੇ ਬੇਅੰਤ ਬੇਅੰਤ ਉਰ ਉਹਦੇ ਤਾਂ ਕੋਈ ਅਹਜੀ ਗੱਲ ਨਹੀਂ ਦੱਸੀ ਹੋਈ ਕੋਈ ਕੁਛ ਬੰਦਿਆ ਰੁਸੜਦਾ ਤਖੂਚ ਉਹ ਉਹ ਰੁਕਣ ਰਿਹਾ ਹੈ ਉਹਨਾਂ ਆਪ ਐਸੀ ਤਾਂ ਕੋਈ ਗੱਲ ਹੈ ਨਹੀਂ ਹਾਂ ਕਈ ਉੱਚ ਨੀਚ ਕੀਨੋ ਬਣਾਓ ਫਿਰ ਵੀ ਉੱਚ ਨੀਚ ਕੀ ਬਣਾਉਣੇ ਕਿਉਂ ਉੱਚ ਨੀਚ ਦੇ ਸਭ ਵਾਰ ਪਾਲ ਜਾ ਕੋ ਪ੍ਰਭਾਵੋ ਭਾਰ ਉਹਦਾ ਪ੍ਰਭਾਵ ਪ੍ਰਭਾਵ ਉਹਦਾ ਹੀ ਹੈ ਮਾਇਆ ਪਰੇ ਵੀ ਉਹ ਹੈਗਾ ਇੱਥੇ ਵੀ ਹੈ ਸਭ ਜੀਵ ਜੰਤ ਜਾਣਾ ਅੰਤ ਜਾਹੇ ਜੇ ਦੇ ਜੀਵ ਜੰਤਰੇ ਤ ਉਹਦੇ ਵਾਜ਼ੇ ਵਿੱਚ ਨੇ ਜਾਣਨ ਤੋਂ ਜਾਣੇ ਸਾਰਿਆਂ ਨੂੰ ਜਾਣਦਾ ਉਹ ਐਸਾ ਨਹੀਂ ਕੋਈ ਆ ਵੀ ਉਹ ਕਿਸੇ ਨੂੰ ਜਾਣਦਾਰੀ ਹੈ ਵੀ ਉਹ ਆਪਣੀ ਮਰਜ਼ੀ ਨਾਲ ਕੋਈ ਕਿੱਥੇ ਤੁਰਿਆ ਫਿਰਦਾ ਆਪਣੀ ਮਰਜ਼ੀ ਨਾਲ ਕੋਈ ਕਿਤੇ ਨਹੀਂ ਤੁਰਿਆ ਫਿਰਦਾ ਸਭ ਜਾਣਦਾ ਉਹ ਕੋਈ ਵੀ ਉਹਦੇ ਕਿਸੇ ਤੋਂ ਵੀ ਬੇਖਬਰ ਨਹੀਂ ਹੈ ਉਹ ਕੋਈ ਕੀ ਕਰਦਾ ਕਿੱਥੇ ਹੈ ਮਨ ਮੂਡ ਕਿਉਂ ਨਾ ਸੇਵੰਤਤਾ ਹੈ ਬਰ ਮੋੜ ਨਗਾ ਬੀ ਉਹਦੀ ਸੇਵਾ ਕਰਨੀ ਕਰਦਾ ਤੂੰ ਉਹਦਾ ਕਸੂਰ ਨਹੀਂ ਕਸੂਰ ਕੋਈ ਹੋਰ ਹੋਊਗਾ ਕਸੂਰ ਤਾਂ ਨਹੀਂ ਦੱਸਿਆ ਕੀ ਹੈ ਕਾਰਨ ਨਹੀਂ ਦੱਸਿਆ ਕਾਰਨ ਨਹੀਂ ਦੱਸਿਆ ਕੀ ਹੈ ਵੀ ਹੁਣ ਚਲੋ ਇਹ ਤਾਂ ਪਤਾ ਨਹੀਂ ਕੀ ਕਾਰਨ ਹੈ ਹੁਣ ਇਹ ਜ਼ਰੂਰ ਹੈਗਾ ਵੀ ਹੁਣ ਉਹਦੀ ਸੇਵਾ ਕਰੋ ਜਿਉਂ ਜਿਏ ਗੁਰਲੇ ਸਾਰੇ ਕੋਈ ਆਪਣਾ ਹੀ ਕਸੂਰ ਹੋਊਗਾ ਫਿਰ ਸਾਡਾ ਸਾਡਾ ਹੀ ਕੋਈ ਕਸੂਰ ਹੋਊਗਾ ਹੈ ਇਹਦੇ ਅਸੀਂ ਫਸੇ ਹੋਇਆ ਉਚੀ ਨੀਚ ਬਣਾ ਹੋਇਆ ਹੋਇਆ। ਸਾਥੇ ਕੋਈ ਗਲਤੀ ਹੋਈ ਹੈ। ਇਹਦਾ ਸਾਨੂੰ ਪਤਾ ਨਹੀਂ। ਗਲਤੀ ਪਹਿਲਾਂ ਹੋਈ ਜਾਂ ਪਤਾ ਹੈ ਨਹੀਂ। ਸੇਵਾ ਕਰਨੀ ਚਾਹੀਦੀ ਕਈ ਮੂੜ ਪਾਤਰ ਪੂਜਾ ਕਰਨਤ ਕਈ ਬੂਖ ਨੇ ਪੱਤੇ ਪੂਜਦੇ। ਅਬਿਲ ਦਾ ਪਤਾ ਪੂਜਾ ਕਰਨਾ ਚੜਾਉਣਾ ਹੁੰਦਾ। ਉੱਚੜਾਉਣਾ। ਤੁਸੀਂ ਦੇ ਪੱਤੇ ਬਿਲ ਦੇ ਪੱਤੇ। ਇਹਾਂ ਦੇ ਪੂਜਾ ਕਰਦੇ ਤੁਸੀਂ ਕਈ ਸਿੱਧ ਸਾਧ ਸੂਰਜ ਜਿਹੜੇ ਹੈਗੇ ਕਰਦੇ ਉਹ ਬੂਰਖ ਨੇ ਨਾਲ ਕਈ ਮੂੜ ਔ ਡਿਗਰੀ ਸਾਰੇ ਉਹਨੇ ਦਿੱਤੀ ਹੋਈ ਹੈ ਜਿਹਦਾ ਮਾਲਕ ਹੈ ਕੋਈ ਕਈ ਮੂੜ ਪਾਤਰ ਸਿੱਧ ਸਾਧ ਸੂਰਜ ਬਚਿਆ ਕੋਈ ਨਹੀਂ ਹੈਗਾ ਬਚਿਆ ਕੋਈ ਨਹੀਂ ਕਈ ਸੱਤ ਸਾਧਕ ਕਈ ਸਿੱਧ ਸਾਧ ਸੂਰਜ ਸਵੰਤ ਕਈ ਸੱਤ ਸਾਧ ਸੂਰਜ ਉਹ ਉਹ ਵੀ ਜੜਾ ਸੂਰ ajo ਪੱਤਾ ਤਾਂ ਕੋਰਾ ਪੈਂਦਾ ਜੇ ਸੂਰ ਚੜਦਾ ਥੋੜਾ ਜਿਆ ਰੋਸ਼ਨੀ ਵੀ ਹੁੰਦੀ ਹੈ ਨਿਕ ਵੀ ਆ ਵੀ ਹੁੰਦਾ ਤਾਂ ਸੇਵਾ ਕਰ ਉਹ ਉਹਨੂੰ ਕੋਈ ਨਹੀਂ ਮੇਰਾ ਆ ਗਿਆ ਤੈਨੂੰ ਬਾਬਾ ਫੇ ਤੂੰ ਚੜੇ ਰਹਿ ਕਈ ਪਲਟ ਸੂਰਜ ਸਿਜਦਾ ਕਰਾਏ ਕਈ ਪੁੱਠੇ ਹੋ ਕੇ ਸੂਰਜ ਨੂੰ ਸਿੱਧਾ ਕਰਦੇ ਨੇ ਸੂਰਜ ਨੂੰ ਪਿੱਟ ਲੈਣੀ ਉਲਟੇ ਹੋ ਕੇ ਫਿਰ ਉਹਨੂੰ ਸਿੱਧਾ ਕਰਨ ਆ ਪੁੱਠੇ ਹੋ ਕੇ ਸਿੱਧਾ ਕਰਦੇ ਪਰਬ ਇੱਕ ਰੂਪ ਦਵਾਈ ਖੇ ਲਖਾਏ ਪਰਬ ਦਾ ਇੱਕ ਰੂਪ ਹੈ ਦੋ ਰੂਪ ਕਰਕੇ ਕਹਦੇ ਤੁਸੀਂ ਦੇਖਦੇ ਉਹਨੂੰ ਨਾਲੇ ਸੂਰਜ પૂਛਦੇ ਹੋ ਪਤਾ ਪੁੱਛਦੇ ਹੋ ਨਾਲੇ ਕਹਿੰਦੇ ਇੱਕ ਰੂਪ ਹੈ ਫਿਰ ਫਿਰ ਹਣ ਪਤਾਰ ਡੋ ਗਿਆ ਸੂਰਜ ਡੋ ਗਿਆ ਪਹਿਲਾਂ ਤੁਸੀਂ ਦੋਹਾਂ ਚ ਫੈਸਲਾ ਨਾ ਕਰ ਲੋ ਵੀ ਦੋਹਾਂ ਚ ਠੀਕ ਕਿਹੜਾ ਨਾਲ ਕਹੀ ਜਾਂ ਨੂੰ ਇੱਕ ਹੈ ਦੋਤਾ ਤੁਸੀਂ ਬਣਾ ਲੈ ਤੁਸੀਂ ਤਾਂ ਦੋ ਬਣਾਏ ਲੈ ਇੱਕ ਸੂਰਜ ਵੱਲ ਇੱਕ ਪੱਤੇ ਵੱਲ ਉਹ ਰੂੜੀ ਕਹਿੰਦਾ ਵੀ ਤੂੰ ਗਲਤ ਹੁਰ ਨਹੀਂ ਐ ਨਾ ਦੋਏ ਕਹਿੰਦਾ ਦੋਏ ਠੀਕ ਆ ਜਿੱਤੇ ਕਹਿੰਦਾ ਬੋਲ ਲਗਾ ਠੀਕ ਆ ਜੀ ਚਲ ਫਰੇਕਰੂ ਇਹਦਾ ਮਤਲਬ ਹੈ ਜਿਹੜਾ ਅਸਲ ਹੈ ਉਹਦੀ ਸੇਵਾ सेवा कोई नहीं ਹੋਇਆ ਇਕਲਤਾ ਹੈ ਅਸਲ ਦੀ ਜਿਹੜਾ ਅਸਲ ਦੀ ਸੇਵਾ ਲੱਗਿਆ ਉਹ ਵੀ ਅਸਲ ਆ ਪਰ ਬਣਤਾ ਹੀ ਦੋ ਇਹਨੂੰ ਦਖਲ ਨਹੀਂ ਦਿੰਦੀਆਂ ਨਾ ਦੋ ਇੱਕ ਦੂਏ ਦਖਲ ਤਾਂ ਨਹੀਂ ਦਿੰਦੇ ਉਹ ਦੋਏ ਦਲਤ ਰਹੇ ਜੋਰ-ਜੋਰ ਦਾ ਬਸੇਰੇ ਭਾਈ ਨੇ ਜੋ ਤੂੰ ਉਹ ਕਹੂ ਚੋਰ ਹੈ ਉਹ ਵੀ ਚੋਰ ਹਾਲ ਫੇਰ ਦੋਏ ਪਰ ਉੜ ਕੇ ਕੀ ਫਾਇਦਾ ਵੀ ਦੇਖ ਦੋ ਦਸ ਦੂਗਾ ਦੋ ਹਲ ਦੀ ਬੇਤੀ ਹੂ ਇਸ ਕਰਕੇ ਚੰਗੀ ਗੱਲ ਹੈ ਵੀ ਚੁੱਪ ਰਹੁ ਜੇ ਟੌੜਾ ਲੱਗਾ ਬੋਲ ਬਾਦਰ ਕਹਾਂ ਗਲਾ ਮੇਰੇ ਕੋ ਵੀ ਬਹੁਤ ਰਿ ਪਰ ਮਾ ਤਸੜੀ ਦੇ ਜਿਹਨੂੰ ਬੋਲਣਾ ਨਹੀਂ ਜਾਂਦਾ। ਸੌੜਾ ਚੁੱਪ ਕਰ ਗਏ। ਠੀਕ ਹੈਗੀ ਆ। ਇਹ ਸਿਆਣਾ ਨਹੀਂ ਬੋਲਿਆ। ਉਹਨੇ ਇੱਕ ਆ ਕੇ ਜੁੱਪ ਕਰਾਤਾ ਵੀ ਗੱਲਾਂ ਮੇਰੇ ਕੋ ਵੀ ਨਾ ਬਹੁਤ ਕਹਿ ਲੂ। ਪਰ ਗੱਲਾਂ ਸਿਆਣਪ ਵੱਲ ਨੂੰ ਲੈ ਕੇ ਜਾਣੀਆਂ। ਸਿਆਣੇ ਬੰਦੇ ਇਦਾਂ ਨਹੀਂ ਕਰਦੇ ਹੁੰਦੇ। ਸਮਝ ਗਿਆ ਉਹ ਚੁੱਪ ਕਰ ਗਿਆ। ਬਚੋਰੇ ਸਾਨੂੰ ਸੀ ਇਹਨੇ ਸਾਨੂੰ ਪਰਾਲੇ ਗੱਲ ਸਮਝਾਤੀ ਜੇ ਇਹ ਵੀ ਕਰਦਾ ਉਹ ਹੋਰ ਕਰੀ ਜਾਂਦਾ ਜੀ ਦੋਵੇਂ ਬਣਾਉਂਦੇ ਇਸ਼ਾਰੇ ਨਾਲ ਗੱਲ ਸਮਝਾਤੀ ਤੇ ਜਿਹੜੀਆਂ ਕਵਰਜ ਬੰਦ ਕਰਕੇ ਗੱਲਾਂ ਕਰਦੇ ਨੇ ਸਿੱਖੀ ਤੇ ਤਾਂ ਬਹੁਤ ਦੂਰ ਹੁੰਦੀਆਂ ਨੇ ਉਹ ਇੱਕ ਦੂਰੇ ਦਾ ਪਤਾ ਹੀ ਹੁੰਦਾ ਜੇ ਮੈਂ ਦੱਸਣ ਲੱਗਿਆ ਫਿਰ ਤੇਰਾ ਵੀ ਪਾਸ ਖੁੱਲੂ ਮੇਰਾ ਵੀ ਖੁੱਲੂ ਵੀ ਰਹਿਣ ਦੇ ਉਹ ਆਪਣਾ ਖੜ ਗਿਆ ਚੁੱਪ ਕਰ ਗਿਆ ਜਦੋਂ ਦਨ ਹੋਏ ਅਰ ਸੰਤ ਹੋਏ ਇੱਕ ਪ੍ਰੋਮਾਈਸ ਰੱਖਦੇ ਹੁੰਦੇ ਫਿਰ ਰਖੜੇ ਪੈਂਦਾ ਰਖੜੇ ਪੈਂਦਾ ਫਿਰ ਨਹੀਂ ਤਾਂ ਬੇਤੀ ਹੁੰਦੀ ਰਹਦੀ ਅਣਛਿਜ ਤੇਜ ਅਣਪੈ ਪ੍ਰਕਾਸ਼ ਅਣਛਿਜ ਤੇਜ ਅਣਪੈ ਪ੍ਰਕਾਸ਼ ਤੇਜ ਅਧਰਾਜਜ ਜਿਵੇਂ ਕਪੜਾ ਛੇ ਜਾਂਦੂ ਦੇਖੋ ਰਾਤ ਨੂੰ ਆਪਾ ਚੰਦਰਮਾ ਦੇਖਦੇ ਜਦੋਂ ਤੇਜ ਅਣਛਿਜ ਰਿਹਾ ਕਿਤੇ ਘੜਾ ਹੁੰਦਾ ਕਿਤੇ ਉਹ ਦੇਖਿਆ ਉਹ ਕਹਿੰਦੇ ਨੇ ਰਾਹ ਹੈ ਫਲਾਨਾ ਹੈ ਉਹ ਹੈ ਗੱਗਾ ਜਲਦੀ ਹੈ ਕਿਤੇ ਤਾਰੇ ਦਾ ਗਾੜੀ ਹੁੰਦੀ ਹੈ ਗਾੜੀ ਪੈਂਦੀ ਹੈ ਰੋਸ਼ਨੀ ਕਿਤੇ ਕੁਝ ਪੈਂਦਾ ਅੰਛੇ ਜਿਹੜਾ ਸੂਰਜ ਦਾ ਵੀਧੀ ਹੈ ਸ਼ਾਮ ਨੂੰ ਘਟ ਜਾਂਦਾ ਦੁਪਹਿਰ ਨੂੰ ਵੱਜ ਜਾਂਦਾ ਇਹਨਾਂ ਤੇ ਜਾਦੇ ਕਿ ਕੁਝ ਹੋਰ ਚੀਜ਼ ਆ ਜਾਂਦੀ ਹੈ ਗ੍ਰਹਿਣ ਲੱਗ ਜਾਂਦੇ ਨੇ ਬੱਦਲ ਆ ਜਾਂਦੇ ਨੇ ਸਮਝੇ ਹੋ ਉਦੇ ਸਾਪਣੇ ਨਹੀਂ ਕੋਝਾਉਂਦਾ ਪਰ ਜਿੱਤ ਤੇ ਅਨਪਾਇ ਪ੍ਰਕਾਸ਼ ਅਨਪਾਇ ਪ੍ਰਕਾਸ਼ ਅਨਪਾਇ ਪ੍ਰਕਾਸ਼ ਕੀ ਹੁੰਦੇ ਜੀਦੇ ਹਿਰਦੇ ਚ ਪ੍ਰਕਾਸ਼ ਹੋਵੇ ਪੈ ਨਹੀਂ ਹੁੰਦੀ ਕਸ ਵੀ ਰਹਿੰਦੀ ਫਿਰ ਜੀਦੇ ਹਿਰਦੇ ਚੱਲ ਲਓਗੇ ਉਹਨੂੰ ਪੈ ਨਹੀਂ ਲੈਣੀ ਕਸ ਫਿਰ ਫਿਰ ਮੌਤ ਆਣੀ ਪੈ ਵੀ ਗਈ ਮੌਤ ਹੁੰਦੀ ਹੋਣੀ ਨਾ ਉਹਨੂੰ ਪਤਾ ਵੀ ਮੌਤ ਤਾਂ ਹੁੰਦੀ ਹੋਈ ਮੌਤ ਰਹਿੰਦੀ ਕੋਈ ਚੀਜ਼ ਨਹੀਂ ਹੈ ਤਾਂ ਵੀ ਭਲੇਖਾ ਮਾਇਆ ਨਾਲ ਝੋਣਾਰ ਮਾਇਆ ਨਾਲ ਟੁੱਟਣਾ ਨੂੰ ਬਹੁਤ ਕਹਿੰਦੇ ਨੇ ਵਾਇਨਾ ਜੁੜਨਾ ਦਾ ਸੱਜਾ ਹੈ ਪਸੂ ਆ ਉਹ ਕਿਲੇ ਦਾ ਭਵਨ ਕੇ ਰੱਖ ਦਿਆ ਕੀ ਪਸੂ ਚਾਹੁੰਦਾ ਮੈਨੂੰ ਕਿਲੇ ਲਬਨ ਕੇ ਰੱਖੋ ਜੇ ਉਹ ਗੋਲਾ ਛੱਡ ਫਿਰ ਖੁਸ਼ ਆ ਕੇ ਨਹੀਂ ਹੋ ਪਸੂ ਪਸੂ ਬੰਦ ਕੇ ਰਹਿ ਕੇ ਰਾਜੀ ਨਹੀਂ ਗੋਲਾ ਰਹਿ ਕੇ ਰਾਜੀ ਆ ਛੱਡ ਕੇ ਦੇਖ ਲੋ ਚਾਰ ਮਹੀਨੇ ਘੋਲਾ ਰਹਿ ਜਾ ਸਭ ਨਾਲ ਆ ਬਾਇਓ ਫੇਜ ਬੜੇ ਜੜ ਗਏ ਉਹ ਤਾਂ ਖੁਸ਼ ਹੈ ਇਹਨੂੰ ਹਾਲੇ ਆਜ਼ਾਦੀ ਯਾਰ ਗੁਲਾਮੀ ਦੀ ਸਮਝ ਨਹੀਂ ਹੈ ਆਦਮੀ ਨੂੰ ਉਹ ਕਰਕੇ ਇਹ ਉਹ ਕਰਕੇ ਪ੍ਰੇਤ ਪਿੰਜਰੇ ਵਿੱਚ ਜਾ ਹਿਆ ਉਹ ਕਰਕੇ ਕਿਸੇ ਦਾ ਜੇੜ ਦੇ ਵਿੱਚ ਜੀ ਲੱਗ ਜਵੇ ਜੇੜ ਨੂੰ ਚੰਗਾ ਸਮਝ ਲਵੇ ਉਹਦੀ ਆਪਣੀ ਪਰਸਨਲ ਸੋਚ ਹੈ ਉਹ। ਉਹਦਾ ਕਹਿੰਦਾ ਜੀ ਨਹੀਂ ਲੱਗਦਾ ਜੇਲ੍ਹ ਚ ਕੋਈ ਚਾਹਦਾ ਨਹੀਂ ਜਾਣਾ ਜੇਲ੍ਹ ਇਹ ਤਾਂ ਜੇਲ੍ਹ ਹੈ। ਬਸ ਐਨਾ ਫਰਕ ਹੈ ਇੱਥੇ ਜ਼ਿਆਦਾ ਲੋਕਾਂ ਦਾ ਜੀ ਲੱਗਦਾ ਕਿਸੇ ਕਿਸੇ ਦਾ ਨਹੀਂ ਜੀ ਲੱਗਦਾ। ਜਿਹੜੀ ਸੰਸਾਰੀ ਜੇੜਾ ਉਹ ਤੇ ਸਾਰਿਆਂ ਦਾ ਨਹੀਂ ਜੀ ਲੱਗਦਾ ਕਿਸੇ ਕਿਸੇ ਦਾ ਲੱਗਦਾ। ਇਹ ਜਿਹੜੀ ਤੇ ਸਾਰਿਆਂ ਦਾ ਜੀ ਲੱਗਦਾ ਕਿਸੇ ਕਿਸੇ ਦਾ ਨਹੀਂ ਲੱਗਦਾ ਇਹ ਸਮਝ ਆ ਜਾਂਦੀ ਹੈ ਜੇਲ੍ਹ। ਉਹ ਜਿਹੜੀ ਸਾਲਾਂ ਨੂੰ ਸਮਝਾ ਉੱਤੇ ਕਿਸੇ ਕਿਸੇ ਦਾ ਜੀ ਲੱਗਦਾ ਬਾਕੀ ਕਿਸੇ ਦਾ ਨਹੀਂ ਲੱਗਦਾ ਇਹ ਉਲਟੀ ਹੈ ਗੱਲ ਇਹ ਤਾਂ ਕਿਲਾ ਬਣਿਆ ਹੋਇਆ ਹੈ ਖੜਕਾ ਪੈਖੜ ਛੁੱਟਣ ਆਜ਼ਾਦ ਹੋਲੇ ਨੇ ਫਿਰ ਸੈਰ ਕਰੇ ਜੇ ਤੇ ਉਹ ਤਾਂ ਸੈਰ ਕਰਾਜੋ ਭਾਵ ਹੈ ਸਾਰੇ ਮਹਿਰਮ ਨੇ ਕੋਈ ਅੜਕਾਉਂਦਾ ਨਹੀਂ ਕਿਤੇ ਸੱਚ ਦਾਤਾ ਦੁਰੰਤ ਅਦਵਾ ਅਨਾਸ ਦਾਤਾ ਦੁਰੰਤ ਦੁਰੰਤ ਉਹ ਕਿਸੇ ਤੋਂ ਦੂਰ ਨਹੀਂ ਉਹ ਕਿਸੇ ਨੂੰ ਚੰਗਾ ਸਮਝੇ ਕਿਸੇ ਨੂੰ ਬੜਾ ਸਮਝੇ ਗੱਲ ਨਹੀਂ ਹੈ ਹੋਜ ਅਨਾਸ ਅਦਵਾ ਦਾ ਨਾਸ਼ ਕਰਨ ਵਾਲਾ ਆਪ ਅਨਾਸ ਹੈ ਬੁਰਾਈ ਦਾ ਨਾਸ ਕਰਦਾ ਆਪ ਨਾਸ ਨਹੀਂ ਹੁੰਦਾ ਉਹਦਾ ਸਭ ਰੋਗ ਸੋਗ ਤੇ ਰਹਿਤ ਰੂਪ ਸਾਰੇ ਰੋਗਾਂ ਸੋਗਾਂ ਤੋਂ ਰਹਿਤ ਰੂਪ ਕੋਈ ਰੋਗ ਸੋਗ ਨਹੀਂ ਰੋਗ ਸੋਗ ਤਾਂ ਓਗਣ ਨਾਲ ਹੁੰਦਾ ਜਿਹਦੇ ਓਗਣ ਨੇ ਰੋਗ ਸੋਗ ਉਹਨੂੰ ਜਿੱਤੇ ਓਗਣ ਕੋਈ ਨਹੀਂ ਰੋਗ ਸੋਗ ਹੈਦੀ ਉੱਥੇ ਅਨਪੈ ਅਕਾਲ ਅਛੈ ਸਰੂਪ ਅਕਾਲ ਹੈ ਉਹ ਅਨਪੈ ਭੈ ਹੈ ਜਿਹਦਾ ਕਾਲ ਹੈ ਉਹਨੂੰ ਭੈ ਸਾਡਾ ਸਰੀਰ ਹੈ ਸਰੀਰ ਕਰਕੇ ਸਭ ਕੁਝ ਸਰੀਰ ਦੇ ਕਾਲਾ ਆਤਮਾ ਦਾ ਫਿਰ ਵੀ ਨਿਕਲ ਸਰੀਰ ਦੇ ਕਾਲ ਦੇ ਹੀ ਭੈ ਰਹੇ ਸਰੀਰ ਦੀ ਭੁੱਖ ਦੀ ਉਹ ਬਹੁਤ ਭੈ ਹੈ ਸਰੀਰ ਦੀ ਲੋੜਾਂ ਦੀ ਉਹ ਭੈ ਰਹਿੰਦੀ ਹੈ ਹਰ ਵਕਤ ਸਰੀਰ ਦੇ ਸੁਬੰਧਾਂ ਦੀ ਉਹ ਭੈ ਸਰੂਪ ਹੈ ਕਦੇ ਛੇੜ ਨਹੀਂ ਹੁੰਦਾ ਕਦੇ ਨਹੀਂ ਵਰਦਾ ਕਰੂਨਾ ਨਿਧਾਨ ਕਾਮਲ ਕਿਰਪਾ ਅਛਾਏ ਕਹਿੰਨ ਦੇਖੋ ਅਛਾਏ ਦਾ ਮਤਲਬ ਹੈ ਜਿਹਨੂੰ ਆਪਾਂ ਜੀ ਲੀਡ ਆ ਜਾਂਦੀ ਹੈ ਨਾ ਉਹ ਛੇ ਹੋ ਜਾਂਦਾ ਉਹ ਵਰਦੇ ਨਹੀਂ ਛੇ ਗਏ ਨੇ ਇਹਨੂੰ ਛੇ ਤਾਂ ਉਹ ਫਰਾਂਗੀ ਹੁੰਦਾ ਫਰਾਂਗੀ ਨਹੀਂ ਲਿਖਾਇ ਨਾ ਬਰਬਰ ਸੌ ਜਾਂਦਾ ਉਹਨੂੰ ਕਹਿੰਦੇ ਨੀਂਦ ਨਹੀਂ ਆਉਂਦੀ ਸਤਗੁਰ ਜਾਗਤਾ ਹੈ ਦਿਓ ਅਛਾਇਆ ਉਹ ਸੌਂਦਾ ਨਹੀਂ ਆਏ ਜਾਂ ਸੌਂ ਜਾਂਦਾ ਛੇ ਹੋ ਜਾਂਦਾ ਫਿਰ ਮਨ ਨਹੀਂ ਰਹਿੰਦਾ ਫਿਰ ਜਦੋਂ ਸੌਂ ਜਾਂਦਾ ਹੈ ਜਾਂਦਾ ਛੇ ਹੋ ਜਾਂਦਾ ਗੁਪਤ ਹੋ ਜਾਂਦਾ ਉਹ ਅਛਾਇ ਹਰ ਵਕਤ ਪ੍ਰਗਟ ਰਹੇ ਅਸ਼ੈਤਾ ਦਾ ਹੁੰਦਾ ਉਹ ਜਦ ਸੁਨ ਸਮਾਦਿਆ ਫਿਰ ਅਸ਼ੈਤਾ ਹੈ ਉਹ ਸਰੂਪ ਰੀਓ ਦਾ ਅਸ਼ੈ ਹੈ ਹੁਰਜੋਮ ਦਾ ਰੂਪ ਹੈ ਨਾ ਹੁਕਮ ਨਾ ਉਹ ਦਾ ਪ੍ਰਗਟ ਪ੍ਰਗਟ ਹੁਕਮ ਜੀ ਹੁੰਦਾ ਹੋ ਜਾਂ ਹੁਕਮ ਦਾ ਪ੍ਰਗਟ ਹੈ ਹੋਸਲ ਚ ਹੁਕਮ ਨਹੀਂ ਪ੍ਰਗਟ ਆਪ ਪ੍ਰਗਟ ਉਹ ਜਾਂ ਹੁਕਮ ਨਹੀਂ ਦਾ ਆਪ ਪ੍ਰਗਟ ਨਹੀਂ ਹੈ ਛਾ ਸੁਨ ਸਮਾਦਿਆ ਮਰਮੀ ਸੁਣਨ ਸੁਬਾਹ ਚਾ ਛਾਏ ਹੋ ਜਾਂਦਾ ਹੈ। ਨਾ ਛਾਏ ਹੋ ਜਾਂਦਾ। ਜਾਂ ਸੋਚਦੇ ਆ ਅਸੀਂ ਛਾਇਆ। ਨਾ ਜਾਂ ਸੋਚਦੇ ਆ ਜਾਂ ਅਛਾਇਆ। ਜੇ ਨਹੀਂ ਸੋਚਦੇ ਸੋਚਣਾ ਛਾਏ ਹੋ ਜਾਂਦੇ। ਸੁਣਨ ਸੁਗਰ ਹੋ ਜਾਂਦਾ। ਫੇ ਜਿਹੜੇ ਗੁਰਨੇ ਗੁਪਤ ਹੋ ਜਾਂਦੇ ਨੇ। ਦਿਰਗੜ ਹੋ ਜਾਂਦੇ ਆ। ਦਿਰਗੜ ਹੋ ਜਾਂਦਾ ਜਿਹੜਾ ਛਾਏ ਹੋ ਜਾਂਦਾ ਉਹ। ਜੇ ਦਿਰਗੜ ਰੂਪ ਹੈ ਉਹ ਛਾਏ ਰੂਪ ਹੈ। ਸੌ ਜਨ ਸੌ ਨੂੰ ਇਹਦੀ ਮੋਤ ਕਹਿੰਦੇ ਨੇ ਆਤਮਾ ਦੀ ਮੋਤ ਸਿਰਫ ਸੌੜ ਨੂੰ ਇਹ ਛੇ ਛੇ ਹੋ ਜਾਣ ਨੂੰ ਕਹਿੰਦੇ ਨੇ ਹੋਰ ਨਹੀਂ ਇਹਦੀ ਕੋਈ ਮੋਤ ਕਰुणा ਨਿਧਾਨ ਕਾਮਲ ਕਿਰਪਾਲ ਕਰुणा ਨਿਧਾਨ ਕਰुणा ਦਾ ਖਜਾਨਾ ਅਦੇ ਕਹਨ ਤੇ ਕਰਨਾ ਕਰਕੇ ਸਭ ਕੁਝ ਹੋ ਰਿਹਾ ਇਹਨਾਂ ਤੇ ਧਿਆਨ ਕਰਕੇ ਸਭ ਕੁਝ ਹੋ ਰਿਹਾ ਕਰुणा ਨਿਧਾਨ ਕਾਮਲ ਕਿਰਪਾਲ ਕਾਮਲ ਕਿਰਪਾਲ ਕਿਰਪਾ ਵੀ ਐਸੀ ਕਰਦਾ ਹੈ ਕਿ ਜਿਹਦੀ ਲੋੜ ਹੈ ਲੋਕਾਂ ਨੂੰ ਕਾਮਲ ਕਿਰਪਾਲ ਜਿਹਦੀ ਲੋੜ ਹੈ ਨਾ ਜਿਹਦੀ ਉਹੀ ਚੀਜ਼ ਉਹਨੂੰ ਦੇ ਦੀ ਉਹ ਕਾਮਲ ਕਿਰਪਾਲ ਹੈ ਲੋੜ ਦਾ ਉਹ ਤਾਂ ਕਹਿੰਦਾ ਬਿਠਾ ਨਾ ਕਹੀ ਉੱਥੇ ਗਾਹਾਂ ساری ਆ ਭਈ ਬਿਠੇ ਦੀ ਬਿਠਾਈਆਂ ਬਣੀ ਹੋਈਆਂ ਨੇ ਜਿੱਥੇ ਗਿਆ ਉਹ ਤਾਂ ਡਾਕਟਰ ਨੇ ਤਾਂ ਤਲੇ ਚੀਜ਼ ਦਿੱਤਾ ਖਾਂਡੀ ਉੱਥੇ ਸਭ ਕੁਝ ਤਲਿਆ ਹੋਇਆ ਲੋ ਤਾਂ ਦੇਖਦਾ ਫਿਰਦਾ ਉਹ ਤਾਂ ਖਾਂਡੂ ਨਹੀਂ ਬੜਦਾ ਉਹਨੂੰ ਤਾਂ ਕਿਰਪਾ ਹੋਈ ਨਹੀਂ ਉਹਨਾਂ ਨੇ ਤਾਂ ਖਰਚ ਬਹੁਤ ਕੀਤਾ ਅਗਲੇ ਨੇ ਆਪਣਾ ਜੋਰ ਲਾਤਾ ਖਰਚ ਕਰਕੇ ਉਹਦੇ ਕੰਮ ਦੀ ਕੋਈ ਚੀਜ਼ ਵੀ ਨਹੀਂ ਦੇਖੋ ਜਿਹੜੀ ਚੀਜ਼ ਦੀ ਜਿਹੜੀ ਜਿਹਦੀ ਖੁਰਾਕ ਹੈ ਉਹ ਉਹੀ ਦਿੱਤੀ ਹੈ ਖਾਣ ਜਿਹੜੀ ਪਸੰਦ ਕਰਦਾ ਉਹ ਉਹੀ ਚੀਜ਼ ਮਿਲਣੀ ਕਾਮਲ ਕਰਪਾਲ ਹਰਿਓਗ ਦੀ ਜੀ ਦੀ ਲੋੜ ਦੇ ਮਤਾਬਕ ਚੀਜ਼ ਦੇਣਾ ਉਹਦੀ ਸੁਭਾਅ ਦੇ ਉਹਦੀ ਪਸੰਦ ਦੇ ਮਤਾਬਕ ਉਹਨੂੰ ਚੀਜ਼ ਦੇਣੀ ਉਹ ਕਾਮਲ ਕਰਪਾਲ ਦੁਖ ਦੋਖ ਹਰਤ ਦਾਤਾ ਦਿਆਲ ਦੁਖ ਦੋਖ ਹਰਤ ਅਸਲ ਜੀ ਕਾਮਲ ਕਰਪਾਲ ਹੋ ਸਕਦਾ ਜਿਹੜਾ ਘਟ ਘਟ ਕੇ ਦੀ ਜਾਣਦਾ ਹੋਵੇ ਪਹਿਲੇ ਹੀ ਜਾਣਦਾ ਹੋ ਘਟ ਘਟ ਕੇ ਅੰਦਰ ਕੀ ਜਾਣਦਾ ਵੀ ਕਾਮਲ ਕਰਪਾਲ ਬੁੱਗੇ ਤੇ ਉਫਰੋ ਬੇਟਾ ਵਗਦੇ ਜਾਉ ਉਹ ਰੂਗੀ ਵਦ ਉਹ ਸਭ ਜਾਣਦਾ ਮੈਨੂੰ ਆ ਚਾਹੀਦੀ ਨਾ ਉਹ ਚਾਹੀਦੀ ਪਲੇ ਉਹ ਰੂਗੀ ਪੀੜ ਪਿਆ ਦੁੱਖ ਦੋਖ ਤਾਂ ਹੀ ਅਰਥ ਹੱਸਦਾ ਪਤਾ ਇਹਨੂੰ ਕੀ ਦੁੱਖਾ ਕਿਵੇਂ ਹਲਣਾ ਉਹ ਕਹਾਂ ਉਹ ਤੇ ਕਹਾਂ ਪੇਸ਼ ਹੁੰਦੇ ਨੇ ਜਿਵੇਂ ਜੀਵਨ ਦਿਸਤ ਦੇ ਪੇਸ਼ ਹੁੰਦੇ ਲੋਕ ਉੱਤੇ ਕਲਾ ਕੋ ਐਪਲੀਕੇਸ਼ਨ ਲਾ ਕੇ ਪੇਸ਼ ਹੁੰਦਾ ਨਾ ਕੋਈ ਉਹਨੂੰ ਜਾਣਦਾ ਨਾ ਕਿਸੇ ਨੇ ਦੇਖਿਆ ਲੋਕ ਢੋਲਦੇ ਬੰਦੇ ਨੂੰ ਕਹਿੰਦੇ ਦੁਖ ਦੁਖ ਰਹਤਾ ਉਹ ਹਰਤਾ ਹਰਤਾ ਉਹ ਕਹਿੰਦੇ ਦੁਖ ਦੋਖ ਹਰਤਾ ਇੱਥੇ ਦੇਖਿਆ ਕਿਸੇ ਨੇ ਨਹੀਂ ਲੋਕ ਢੋਲਦੇ ਫਿਰਦੇ ਨੇ ਹੈ ਕਿੱਥੇ ਉਹ ਦੁਖ ਦੋਖ ਹਰਤਾ ਦਾਤਾ ਦਿਆਲ ਦਾਤਾ ਦਿਆਲ ਉਹ ਸਭ ਕੁਝ ਕਰੀ ਜਾਂਦਾ ਇਹਨਾਂ ਕੋਲ ਪਤਾ ਕਿੱਥੋਂ ਹੈ ਹੋਰੀ ਵੀ ਕਰਦਾ ਕਰੀ ਕਰਦਾ ਉਹ ਨੂੰ ਇਹ ਵੀ ਲੋੜ ਨਹੀਂ ਵੀ ਮੈਨੂੰ ਲੋਕ ਕਹਿਣ ਦੇ ਕਰਦਾ ਇਹ ਵਡਿਆਈ ਕਰਾਉਣ ਦੀ ਉਹਨੂੰ ਭੁੱਖੇ ਨਹੀਂ ਹੋਈ ਅੰਜਨ ਬਹੀਨ ਅਣਭਜਨਾਥ ਉਹ ਫਿਰ ਆ ਨਾ ਦੁਖੀ ਬਹੁਤ ਕਰਕੇ ਸਵਾਰਸ ਸਵਾਰਸ ਨਾਲ ਦੁਖੀ ਕਰ ਜੇ ਪਤਾ ਲੱਗਿਆ ਉਹ ਇਹਨਾਂ ਦਾ ਦਾ ਪਤਾ ਹੈ ਕਪੜੇ ਪਾਉਣ ਵਾਲੇ ਲੋਕ ਬਹੁਤ ਨਿਸਬਾਰ ਤੇ ਨਾਰਾਜ਼ ਹੋ ਜਾਂਦੇ ਨੇ ਮੇਰੀ ਗੱਲ ਨਹੀਂ ਮੰਦੀ। ਇਸ ਕਰਕੇ ਗੋਪਟੇ ਰੰਦਾ। ਵੀ ਕੰਮ ਘਰੀ ਜਾਓ ਇਸ ਵਾਰ ਤਾਂ ਜਿਹਦੀ ਨਾਮ ਉਹ ਗੁੱਸਾ ਕਰੂ। ਬਸ ਕਿਸੇ ਦੀ ਬਣਣੀ ਹੈ ਨਹੀਂ ਕਰਨਾ ਆਪਣੀ ਵਰਦੀ ਨਾਲ ਕਰਨਾ ਇਹਨਾਂ ਨੇ ਠੀਕ ਨਹੀਂ ਤੇ ਕਰ ਦੇਣਾ ਫਿਰ। ਇਹਦਾ ਕਹਣਾ ਜਾਂਦਾ ਮੇਰੇ ਨਾਲ ਲੜਿਆ ਹੋਇਆ ਹੁੰਨਦੇ ਆ ਜੀ। ਇਹ ਅਸਰਾ ਦਾ ਸੀ ਆਪਣੇ ਪਿੰਡ ਲੈ ਕੇ ਜਾਣ ਇਹ ਤਾਂ ਨਹੀਂ ਦਿਨ ਇਹਨਾਂ ਦਾ ਅਬਸੂ ਵੀ ਟੜੇ ਬੰਦੀ ਹੈ ਇਹ ਤਾਂ ਮੈਨੂੰ ਖਸਾ ਦੇਣ ਕਿ ਟੜੇ ਬੰਦੀ ਚ ਉਹ ਚੁੱਪੇ ਰਹ ਗੁਪਤੇ ਰਹਿੰਦੇ ਇਹਨਾਂ ਦੇ ਦੂਰ ਕੱਬ ਥਾਰੇ ਕਰੀ ਜਾਂਦੇ ਕਿਸੇ ਨੂੰ ਨਹੀਂ ਪਤਾ ਲੱਗਣਾ ਦਿੰਦਾ ਇਹਦਾ ਉਹਨੂੰ ਕੰਮ ਇਹ ਨਾ ਕਰਨੇ ਅੰਜਨ ਬਹੀਨ ਅਲ ਅੰਜਨ ਬਹੀਨ ਕਿਸੇ ਨੂੰ ਅੰਜਨ ਦੀ ਲੋੜ ਨਹੀਂ ਹੈ ਸਰਮੇ ਸਰਮੇ ਨੂੰ ਕਿਸੇ ਗਿਆਨ ਦੀ ਲੋੜ ਨਹੀਂ ਕਿਉਂ ਕਿ ਸੇ ਤੋਂ ਨੂੰ ਕੋਈ ਗਿਆਨ ਲੈਣ ਦੀ ਲੋੜ ਨੀ ਐ ਸਲਾਹ ਲੈਣ ਦੀ ਲੋੜ ਨਹੀਂ ਐ ਕਿਤੋਂ ਅਨਭਜਨਾਤ ਅਨਭਜਨਾਤ ਹੈ ਉਹ ਨਾਦ ਹੈ ਉਹ ਉਹਦਾ ਮਨ ਪੰਗਬਲੀ ਹੁੰਦਾ ਹੈ ਉਹਦੇ ਚਿੱਤੀ ਵੀ ਨਹੀਂ ਪੈਦਾ ਹੁੰਦੀ ਕਰਾਂ ਕਰਾਂ ਕਰਾਂ ਜਲਥਲ ਪ੍ਰਭਾਉ ਤੇਤੀਜ ਨਹੀਂ ਮੈਦ ਹਲਦਾ ਭਜੜ ਦਾ ਪਤਾ ਮਨੋਂ ਦਾ ਪੰਗਰੀ ਹੁੰਦਾ ਜਲਥਲ ਪ੍ਰਭਾਉ ਸਰਵਤਰ ਸਾਥ ਸਾਰੇ ਦੇ ਨਾਲ ਜਲ ਥਲ ਪ੍ਰਭਾਵ ਚਾਹੇ ਜਲ ਦੇ ਵਿੱਚੀਬ ਨੇ ਚਾਹੇ ਥਲ ਦੇ ਉੱਤੇ ਸਾਰੇ ਪ੍ਰਭਾਵਾਂ ਦਾ ਹੁਕਮ ਹੁਕਮ ਦਾ ਪ੍ਰਭਾਵ ਸਾਰਾ ਹੀ ਹੈ ਨਾ ਸਰਵੱਤਰ ਸਾਥ ਸਾਰੇ ਦੇ ਨਾਲ ਹਰ ਵਕਤ ਜੇ ਜਾਤ ਪਾਤ ਨਹੀਂ ਭੇਦ ਭਰਮ ਨਾ ਉਹਦੀ ਜਾਤ ਹੈ ਨਾ ਪਾਤ ਹੈ ਨਾ ਉਹਦੇ ਵਿੱਚ ਭੇਦ ਨਾ ਭਰਮ ਪੇਦ ਵੀ ਨਹੀਂ ਕਰਦਾ ਕਿਸੇ ਨੂੰ ਵੀ ਆ ਚੁੰਗਾ ਮੋੜਾ ਉਹਦੇ ਵਾਸਤੇ ਕੋਈ ਉੱਚੀ ਨੀਚੀ ਨਹੀਂ ਹੈ ਕੋਈ ਜਾਤ ਪਾਤ ਨਹੀਂ ਹੈ ਉਹ ਦੇਸ਼ ਦਾ ਉਹਨੂੰ ਪਰ ਪਰਬਦੀ ਆ ਦੇਸ਼ ਸਾਰੇ ਲੋਕ ਘੋਰ ਬਥੇਰੇ ਨੇ ਇਹ ਤਾਂ ਇੱਥੇ ਵੱਡੀਆਂ ਪਾਈ ਬੈਠੇ ਅਸੀਂ ਤਾਂ ਰਹੀ ਵੱਡੀਆਂ ਪਾਈ ਬੈਠੇ ਆ ਦੇਸ਼ ਦੁਸਤਾਨਾ ਜੀ ਫਰਾਨਾ ਬਾਰਡਰ ਲੱਗ ਗਿਆ ਜੀ ਉਹਨਾਂ ਦੇ ਉੱਤੇ ਟੈਕਸ ਦੋ ਇਹ ਤਾਂ ਆਦਮੀ ਹੈ ਆਦਮੀ ਤਾਂ ਬਹੁਤ ਨੀਚ ਹੈ ਅਸਲ ਦੇ ਵਿੱਚ ਆਦਮੀ ਨੂੰ ਨਹੀਂ ਜੰ ਨੂੰ ਦਾ ਹੂਚ ਬਣਾਉਣ ਵਾਸਤੇ ਸਾਰਾ ਕੁਝ ਹੋ ਰਿਹਾ ਜਾਨਵਰ ਨਹੀਂ ਲੈ ਦੀ ਹੈ ਕਿ ਜਨ ਆਦਮੀ ਦੀ ਹੈ ਹਜ਼ਾਰਾਂ ਕੁ ਮਿਲਾਂ ਤੋਂ ਪੰਛੀ ਆ ਜਾਂਦੇ ਨੇ ਉੱਡ ਕੇ ਕਦੇ ਦੋਸਤਾਂ ਦੇ ਪੰਛੀਆਂ ਨੇ ਕਿਹਾ ਕਿ ਆਗੇ ਇੱਥੇ ਆਦਮੀ ਅਜੂਰ ਵੱਢੀ ਪਾਸੇ ਇਹਨੇ ਮੈਨ ਲਾਇਆ ਇਹਨੂੰ ਸਾਰੇ ਜਾਨਵਰਾਂ ਨੂੰ ਵੀ ਪੜਾ ਆਦਮੀ ਜਾਨਵਰ ਨੇ ਪਸ਼ੂਰੇ ਜੇ ਤਾਰ ਨਾ ਹੁੰਦੀ ਲੱਗੀ ਹੋਈ ਆਹੂ ਦੇਖਿਆ ਨੀ ਆ ਆਪਣੇ ਜਗਲੀ ਜਾਲ ਬੰਦੇ ਹਿਮਾਚਲ ਚੋ ਪੰਜਾਬ ਜਾਂਦੇ ਪੰਜਾਬ ਦੇ ਹਿਮਾਚਲ ਚੱਲ ਚੱਲੇ ਰੇ ਕੋਈ ਬਾਰਡਰ ਹੈ ਉਹਨਾਂ ਵਾਸਤੇ ਕੁਝ ਵੀ ਨਹੀਂ ਕੋਈ ਵੀ ਕੁਝ ਕਹਿੰਦਾ ਉਹਨਾਂ ਆਦਮੀ ਰੋਲ ਬੁੜੀ ਛੱਡਦਾ ਜੇ ਕੁਝ ਕਹਿੰਦਾ ਉਹਨਾਂ ਨੂੰ ਆਦਮੀ ਕਹਿੰਦਾ ਜੇ ਜਗਲੀ ਜਾਲ ਬਣਾ ਜਗਲੀ ਜਾਲ ਉੱਥੇ ਵੀ ਕਰਦੇ ਇੱਥੇ ਵੀ ਕਰਦੇ ਉਹ ਤਾਂ ਹੁਣ ਜਲਦੀ ਹੀ ਅੱਪਾ ਜੀ ਦੌੜਦੇ ਫਿਰਦੇ ਆਦਮੀ ਬਹੁਤ ਆਕੇ ਇਹਨਾ ਜਿਆਦਾ بگੜ ਗਿਆ ਆਦਮੀ ਇਹਨਾ ਜਿਆਦਾ بگੜ ਗਿਆ ਕਿ ਨਰਕਾ ਦਾ ਪਾਤਰ ਬਣ ਗਿਆ ਆਪਣੀ ਹਕਲ ਨਾਲ ਦਾ ਪਾਤਰ ਬਣ ਗਿਆ ਕਹਿੰਦਾ ਮੈਂ ਸਿਆਣਾ ਜਿੰਨਾ ਸਿਆਣਾ ਉਹਨਾਂ ਹੀ ਮੂਰਖ ਹੈ ਉਲਟਾ ਹੋ ਗਿਆ ਜਿੰਨਾ ਸਿਆਣਾ ਉੱਚਾ ਜੋ ਉਹ ਪੁੱਠਾ ਕਰਦੀ ਉਹ ਨਹੀਂ ਨੀ ਉਹ ਚਲੇ ਜਾਂਦਾ ਜਿੰਨਾ ਬਾਹ ਉੱਚਾ ਜੇ ਬਰਾਬਰ ਕਰ ਲਾ ਉਹ ਜ਼ਮੀਨ ਦੇ ਉਹਨੇ ਧਰਤੀ ਚ ਗੱਡਣਾ ਪਊਗਾ ਤਾਂ ਬਰਾਬਰ ਆਊਗਾ ਉਹਨੇ ਡੂੰਘਾ ਖੋ ਜਾਈਦਾ ਉਹਨਾਂ ਨੂੰ ਵਾਸਤੇ ਜਿੰਨਾ ਉੱਚਾ ਜਿੰਨਾ ਵੱਡਾ ਅਹੰਕਾਰ ਹੈ ਉਹਨੇ ਡੂੰਘਾ ਚਲੇ ਜਾਂਦਾ ਉਹਨੇ ਜਿਆਦਾ ਲੰਬੇ ਨਰਕ ਥੱਲੇ ਨਰਕ ਜਾਂਦਾ ਜ਼ਮੀਨ ਦੇ ਤਾਂ ਸਭ ਤੋਂ ਬਰਾਬਰ ਪੁੱਤਾ ਤਾਂ ਉਠਾ ਨਹੀਂ ਦੇਣਾ ਉਹਨਾਂ ਹੀ ਥੱਲੇ ਚਲਾ ਜਾਣਾ ਇਹਦਾ ਲੈ ਦੀ ਕੁਰਬਾਨੀ ਸੰਸਾਰ ਦੀ ਇਹ ਗੱਲ ਕਹਿੰਦਾ ਸੰਸਾਰ ਹੀ ਦੱਸਦਾ ਹੈਗਾ ਸੰਸਾਰ ਇਸ ਗੱਲ ਦਾ ਪ੍ਰਚਾਰ ਤੇ ਖਿਲਾਫ ਹੈ ਕਿ ਸੰਸਾਰ ਦੇ ਹਮਕਾਰੀਆਂ ਦੇ ਖਿਲਾਫ ਪ੍ਰਚਾਰ ਹੈ ਹਮਕਾਰੀਆਂ ਦਾ ਰਾਜ ਹੈ ਸੰਸਾਰ ਤੇ ਇਸ ਕਰਕੇ ਇਹ ਜਿਹੜੀ ਗੁਰਮਤ ਹੈ ਇਹਦੇ ਰਾਜ ਪ੍ਰਬੰਧ ਸਾਰੇ ਖਿਲਾਫ ਉੱਤਰੇ ਹੋਏ ਨੇ ਸੱਚੀ ਗੱਲ ਕਹ ਦੀਏ ਰਾਜਾ ਨੂੰ ਕਰੀ ਗੱਲ ਰਾਜਾ ਨੂੰ ਪ੍ਰਤੀ ਕਰੀਏ ਰਾਜਾ ਨੂੰ ਅਰਦਾਸ ਸਤੂਏ ਗੱਲ ਪਾਵਰਫੁਲ ਜਿਹੜੇ ਆਦਮੀ ਨੇ ਗਿਆਨ ਬਾਣ ਨੇ ਪਾਵਰਫੁਲ ਨੇ ਜਿਹਦੇ ਗਿਆਨ ਬਾਣ ਨੇ ਉਹ ਪਾਵਰਫੁਲ ਨੇ ਸੰਸਾਰ ਦੇ ਗਿਆਨ ਨੂੰ ਖੋਟਾ ਗਿਆਨ ਕਰੀਏ ਕਰਬਾ ਦੀ ਸਾਰੇ ਨੂੰ ਇਹ ਤਾਂ ਦਾ ਖਲਾਫ ਭਾਈ ਉਹ ਉਹਨਾਂ ਦੇ ਹਸਕਾਰ ਨੂੰ ਸਟਵਾਜ ਦੀ ਇਸ ਕਰਕੇ ਇਸ ਗਿਆਨ ਨੂੰ ਵੇਚਾਰ ਰਾਜਤ ਸਾਥ ਰਾਜਤ ਹੈ ਤਾਂ ਵਿਰੋਧੀ ਰਹਿੰਦੇ ਨੇ ਨੋ ਬਈ ਤਾਂ ਹੀ ਵਿਰੋਧੀ ਕੁਕੀ ਹੋਇਆ ਸੀ ਉਦੋਂ ਸਾਰੇ ਭਾਲੇਕ ਐਵੇਂ ਜੋ ਮਰਜੀ ਕਰੀ ਜਾਂਣ ਪਬਲਿਕ ਵੀ ਪੰਜਾਬ ਦੀ ਵਿਰੋਧੀ ਸੀ ਕੋਈ ਬਿਲ ਦੇ ਸੀ ਜਿੱਥੇ ਲਿਖਿਆ ਨਾ ਮੁਲਖੀਆ ਇਹਦਾ ਮੁਲਖੀਆ ਨਾੜ ਕੇ ਰਹਿ ਪਾਲਿਆ ਸਾਰੇ ਪਿੰਡਾਂ ਦੇ ਲੋਕ ਹੁੰਦੇ ਸੀ ਮੁਲਖੀਆ ਇਹਨਾਂ ਦਾ ਮੁਲਖੀਆ ਹੈ ਇਸ ਪਬਲਿਕ ਨੂੰ ਮਜਬੂਰੀ ਚਾਹੇ ਕੋਈ ਚਾਹੁੰਦਾ ਸੀ ਚਾਹੇ ਨਹੀਂ ਚਾਹੁੰਦਾ ਸੀ ਹੁਣਾ ਤੋਂ ਆਗਿਆਂ ਦੇ ਖਿਲਾਫ ਨਹੀਂ ਪਬਲਿਕ ਨੂੰ ਲੈ ਜਾਂਦੀ ਸੀ ਇਕੱਠੇ ਕਰਕੇ ਪਬਲਿਕ ਨੂੰ ਜਾਣਾ ਪੈਂਦਾ ਡਰਦੇ ਚਾਹੇ ਅੰਦਰੋਂ ਕੋਈ ਚਾਹੁੰਦਾ ਹੋਵੇ ਚਾਹੇ ਨਾ ਚਾਹੁੰਦਾ ਆਲੀਸੋ ਮਾਲੀਸੋ ਸੇਖੋਦੇ ਹੋਏ ਉਹਦੇ ਨੌਕਰੀ ਕਰਦੇ ਸੀ ਬੁਜੀਦਰ सीधे से खतरो पर जब चोट बजी फिर बज गए उदो तक मुसलमान खिलाफ नहीं सी, सिर्फ भाईदारी खिलाफ सी इन्हों ने जाना पए वजिदे रो थे सेंटर गवर्नमेंट ने कहे थे बदल मुक्की सी और जे पहला तो वजिदा खिलाफ हुदा आले सो वाले सो तो नहीं जिक्र कर सकते ਜਦੋਂ ਖਲਾਫ ਹੋਇਆ ਰਗੁਣੀ ਛੱਡ ਗਏ। ਰਗੁਣੀ ਨੇ ਤੇ ਕਰ ਸਕਦੇ ਉੱਤੇ। 22 ਤਰ੍ਹਾਂ ਦੀ ਡਿਮਾਂਡ ਤੇ ਗਏ। ਹਾਂ। 22 ਤਰ੍ਹਾਂ ਨੇ ਡਿਮਾਂਡ ਸੈਂਟਰ ਨੂੰ ਕਿਹਾ। ਫੇਡਰ ਦੇ ਅਧੀਲ ਸੀ ਉਹ ਸਾਡੀ ਮਦਦ ਤੇ ਆਓ। ਸੈਂਟਰ ਇਹ ਤਾਂ ਉਹਨਾਂ ਦੀ ਮਦਦ ਤੇ ਗਏ ਸੀ। ਇਹਨਾਂ ਦਾ ਕੋਈ ਰੌਲਾ ਨਹੀਂ ਸੀ ਉੱਤੇ। ਜੇ ਜਾਤ-ਪਾਤ ਨਹੀਂ ਭੇਦ-ਭਰਮ। ਜਦੋਂ ਬਜਿੱਤੇ ਦਾ ਹਮਲਾ ਕੀਤਾ ਵਾਇਦਾਰੀ ਇਹ ਨਹੀਂ ਆਇਆ ਆਇਆ ਕੋਈ ਕੋਈ ਨਹੀਂ ਆਇਆ ਜਾ ਕੇ ਵਾਇਦਾਰੀਆਂ ਦੇ ਇਲਾਕੇ ਲੁਕਦਾ ਸੀ ਖਾਲਸਾ ਉੱਥੇ ਵੀ ਵਾਇਦਾਰੀਆਂ ਕੁਝ ਨਹੀਂ ਸੀ ਕਹਿੰਦੇ ਯੁਵਾਤਵਾਦੀ ਮਾਰ ਕੇ ਪਾਕਿਸਤਾਨ ਚਲੇ ਜਾਂਦੇ ਨੇ ਅਸੀਂ ਇਤਰਾਜ ਨਹੀਂ ਕਰਦੇ ਉਹਨਾਂ ਤੇ ਐਤੋਂ ਸੁਣ ਹਮਲਾ ਕਰਕੇ ਬਾਹਲੇ ਚਲੇ ਜਾਂਦੇ ਤੇ ਉਹਨਾਂ ਦੇ ਵਾਇਦਾਰੀਆਂ ਦੇ ਰਾਜ ਚ ਉਹ ਨਹੀਂ ਸੀ ਕੁਝ ਕਹਿੰਦੇ ਰ ਉਹ ਲੋਗੜ ਦਾ ਕਲਾ ਬਣਾਇਆ ਸੀ ਬਾਈਦਾਰੀਆਂ ਦੇ ਏਰੀਆ ਚ ਬਣਾਇਆ ਸੀ ਉਹਦੇ ਬਾਦਾਂ ਇਹਨਾਂ ਦਾ ਹੋਰ ਨਹੀਂ ਸੀ ਕੁਝ ਉਹ ਤਾਂ ਹੋਰ ਗੱਲ ਸੀ ਸੈਟ ਕੌਂਸਲ ਦੇ ਕਹਿਦੇ ਗਏ ਸੀ ਬਾਈਦਾਰੀਆਂ ਨੂੰ ਸੈਟ ਕੌਂਸਲ ਦੇ ਕਿ ਹਰੀ ਬਿਨਾਂ ਦੇ ਕਰੋ ਵਜੀਦਾ ਦੀ ਹਮਲ ਸੀ ਵਜੀਦਾ ਉਹਨਾਂ ਨੂੰ ਕਹਿੰਦਾ ਵਜੀਦਾ ਉਹਨਾਂ ਦੀ ਸ਼ਿਕਾਇਤਾਂ ਕਰ ਸਕਦਾ ਸੀ ਵਜੀਦਾ ਉਹਨਾਂ ਦੀ ਸ਼ਿਕਾਇਤਾਂ ਕਰ ਸਕਦਾ ਸੀ ਜੇ ਜਨਾਦ ਕਰਦਾ ਸੀ ਉਹ ਸੈਂਟਰ ਗਵਰਨਮੈਂਟ ਨਾਲ ਸੀ ਸੈਂਟਰਲ ਗਵਰਨਮੈਂਟ ਤਾਂ ਗੁਰੂ ਸਾਹਿਬ ਦੇ ਨਾਲ ਸੀ ਉਹ ਹੋਰ ਨਹੀਂ ਸੀ ਕੁਝ ਕਹਿੰਦੇ ਉਹ ਤਾਂ ਕਹਿੰਦੇ ਆਪਣਾ ਬਦਲਾ ਤੁਸੀਂ ਆਪ ਲੈ ਲਓ ਅਸੀਂ ਨਹੀਂ ਦਖਲ ਦੇ ਸਰਦੇ ਇਹ ਤਾਂ ਕਮਿਟਮੈਂਟ ਸੀ ਇਹਨਾਂ ਨੂੰ ਕੀ ਪਤਾ ਕਮੇਟਨਾ ਬੇਟਰਾ ਹੁੰਦੀ ਵਜਿਦਾਰੀ ਹੈ ਤੂੰ ਸਾਰਿਆਂ ਨੂੰ ਹੁਕਮ ਦੇ ਦੇ ਨਾ ਕਹਿੰਦੇ ਜਦ ਇੱਕ ਮਿੰਟ ਚ ਬਾਹਰ ਦਿੱਲੀ ਬੈਠੀ ਹੈ ਕਮਾਂਡ ਕਰ ਰਹੀ ਆ ਉਹਦੀ ਕਮਾਂਡ ਇੱਥੇ ਲੜ ਰਹੀ ਆ ਖਾਲਸਾ ਮਾਦਾ ਨੂੰ ਗ੍ਰਿਫਤਾਰ ਕਰ ਲੰਦੇ ਦਿੱਲੀ ਦੇ ਸੈਂਟਰ ਗਵਰਨਮੈਂਟ ਉਹ ਤਾਂ ਕਰਵਾ ਰਹੀ ਆ ਸੈਂਟਰ ਗਵਰਨਮੈਂਟ ਸਭ ਕੁਝ ਬੰਦਾ ਬਾਦਰ ਕਰ ਲੈਣਾ ਵੀ ਉਹੇ ਕੋ ਖੜੀ ਕੀ ਸੀ ਬੰਦੇ ਬਾਦਰ ਕੋ ਜਾਤ ਪਾਤ ਨਹੀਂ ਭੇਦ ਭਰਮ ਜੇ ਜਾਤ ਪਾਤ ਨਹੀਂ ਭੇਦ ਪ੍ਰਭੂ ਨਾ ਕੋਈ ਜਾਤ ਪਾਤ ਆ ਨਾ ਭੇਦ ਪ੍ਰਭੂ ਜਾਤ ਪਾਤ ਤਾਂ ਸਾਡੇ ਜਿੱਥੇ ਵੇ ਧਰਮ ਸਾਡੇ ਚ ਜੇ ਰੰਗ ਰੂਪ ਨਹੀਂ ਏਕ ਜੇ ਰੰਗ ਰੂਪ ਨਹੀਂ ਐ ਤੇ ਕਬਲ ਹੋਣਾ ਜੇ ਰੰਗ ਰੂਪ ਨਹੀਂ ਰੰਗ ਕੋਈ ਨਹੀਂ ਇਸ ਕਰਕੇ ਤਰ ਵੀ ਕੋਈ ਹੈ ਏਕ ਵੀ ਨਹੀਂ ਹੈ ਦ્વਾਇਤ ਨਹੀਂ ਹੈ ਤੇ ਤੁਹਾਨੂੰ ਦੋ ਗਮੇ ਹੋ ਗਏ ਧਰਮ ਦੋ ਹੋਈ ਨਹੀਂ ਸਕਦੇ ਸੁੱਧ ਧਰਮ ਤਾਰਮਨ ਉਹ ਲੋਗ ਨੇ ਜਿਹਨਾਂ ਦੀ ਜਿਹਨਾਂ ਵਿੱਚ ਜਾਤ ਪਾਤ ਆ ਉਹ ਬੰਦੇ ਨੇ ਤਰਮ ਤੋਂ ਉਹਨਾਂ ਨੇ ਬਣਾਏ ਹੋਏ ਨੇ ਜਿਹਦੇ ਵਿੱਚ ਉੱਪਰੋਂ ਕੁਝ ਹੈ ਹੀ ਨਹੀਂ ਦੁਆਇਤ ਨਹੀਂ ਦੁਆਇਤ ਨਹੀਂ ਕੋਈ ਰਾ ਇਦਾਰੀ ਨਹੀਂ ਉਹਦੇ ਜਿਹ ਦੋ ਤਰਮ ਕਦੇ ਹੋ ਗਏ ਉਹਨੇ ਕੋਈ ਤਰਮ ਬਣਾਇਆ ਕੋਈ ਧਰਮ ਉਹਦਾ ਬਣਾਇਆ ਹੋਇਆ ਉਹੀ ਅਸਲ ਧਰਮ ਹੈ ਬਾਕੀ ਆਦਮੀ ਨੇ ਬਣਾਏ ਹੋਏ ਤਰਮ ਨੇ ਜਾਤ ਪਾਤ ਆਦਮੀ ਨੇ ਬਣਾਈ ਹੋਈ ਹੈ ਪੇਤ ਪਾ ਦੇ ਪਾਏ ਹੋਏ ਨੇ ਪੇਤ ਪਾ ਧਰਮ ਆਦਮੀ ਨੇ ਬਣਾਏ ਹੋਏ ਨੇ ਭੇਤ ਭਾਵ ਦੇ ਰਹਿਤ ਸਿੱਖ ਧਰਮ ਜੇ ਇਹਦੇ ਕੋਈ ਭੇਤ ਭਾਵ ਦੀ ਗੱਲ ਕਰਦਾ ਉਹ ਦੀ ਆਪਣੀ ਵਿਚਾਰ ਹੈ ਗੁਰੂ ਦੀ ਵਿਚਾਰ ਨਹੀਂ ਉਹ ਇਹਦਾ ਬਿਸ਼ੂ ਕਰਦਾ ਸਿੱਖਾਂ ਜਿਹੜਾ ਇਹ ਭੇਤ ਹੈ ਇਹ ਗੁਰੂ ਨੂੰ ਛੱਡ ਕੇ ਹੈ ਗੁਰਮਤਿ ਨੂੰ ਛੱਡ ਕੇ ਕਿਉਂਕਿ ਗੁਰਮਤਿ ਨੇ ਛੱਡ ਦਿੱਤੀ ਇਸ ਕਰਕੇ ਇਹਨਾਂ ਚ ਭੇਤ ਹੈ ਜਿੱਦਣ ਗੁਰਮਤਿ ਆ ਜਾਣਗੇ ਕਿ ਕੋਈ ਧਰਮ ਇਹ ਜੁਗ ਵਰਡ ਦਾ ਜਿਹੜਾ ਗੁਰਮਤਿ ਹੈ ਉਹਦੇ ਵਾਸਤੇ ਸਾਰੀ ਵਰਲਡ ਇੱਕ ਹੈ ਸਾਰੀ ਦੁਨੀਆ ਇੱਕ ਹੈ ਜਿਹਦੇ ਵਾਸਤੇ ਇੱਕ ਨਹੀਂ ਹੈ ਖਾਲਸ탄 ਅਟ ਹੈ ਉਹ ਸਿੱਖ ਨਹੀਂ ਹੈ ਨਾ ਅੱਜਾ ਨਾ ਕੱਲੂ ਰਹੂਗਾ ਅਜੇ ਤੱਕ ਲੋਕਾਂ ਨੂੰ ਪਤਾ ਨਹੀਂ ਸੀ ਜਿਹਨਾਂ ਨੂੰ ਪਤਾ ਨਹੀਂ ਸੀ ਉਹ ਚੁੱਪ ਸੀ ਜਿਹਨਾਂ ਨੂੰ ਪਤਾ ਸੀ ਉਹ ਚੁੱਪ ਸੀ ਪਰ ਹੁਣ ਟਾਈਮ ਆ ਗਿਆ ਡਿਕਲੇਅਰ ਕਰਨ ਦਾ ਨਹੀਂ ਤਾਂ ਸਾਡਾ ਧਰਮੇ ਬਦਨਾਮ ਹੋ ਧਰਮ ਨੂੰ ਬਚਾਉਣ ਵਾਸਤੇ ਸਿੱਖੀ ਨੂੰ ਬਚਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਟੈਸਨ ਜਿਹੜੀ ਚੱਲ ਰਹੀ ਉਹਨੂੰ ਬਚਾਉਣ ਵਾਸਤੇ ਇਹ ਜ਼ਰੂਰੀ ਆ ਸੱਚ ਨੂੰ ਬੋਲੋ ਫਾਦਰੂਏ ਸੇਖਾਂ ਮੰਨਣ ਦੇ ਹੋਰ ਗੋਲ ਬੋਲੂਗਾ ਪਹਿਲਾਂ ਸਿੱਖ ਦਾ ਫਰਜ਼ ਆ ਗੁਰੂ ਪਾਣੀ ਗੁਰਬਾਨੀ ਦਾ ਇੱਕ ਇੱਕ ਅੱਖਰ ਬੁੱਲੇ ਕਿਉਂਦਾ ਤਿਉ ਫਿਰ ਦੁਨੀਆਂ ਨੂੰ ਦੱਸੇ ਬੰਨੇ ਕੋਈ ਨਾਮ ਨਹੀਂ ਇਹ ਅਲੱਗ ਗੱਲ ਹੈ ਪਰ ਦੱਸਣਾ ਤਾਂ ਸਾਡਾ ਫਰਜ਼ ਹੈ ਅਸੀਂ ਇਹ ਚ ਬਲਾਵਟ ਕਰਕੇ ਨਹੀਂ ਬੋਲ ਸਕਦੇ ਬਲਾਵਟ ਕਰਕੇ ਬੋਲਾਂਗੇ ਅਪਰਾਧ ਐ ਇਤੋਂ ਵੱਡਾ ਅਪਰਾਧ ਐ ਕੋਈ ਨਹੀਂ ਬਲਾਵਟ ਕਰਕੇ ਬੋਲਿਆ ਸੀ ਨਾ ਹੋ ਮਿੱਟੀ ਮੁਸਲਮਾਨ ਕੀ ਕੀ ਹਾਲ ਹੋਇਆ ਸੀ ਮਿੱਟੀ ਬੇਈਮਾਨ ਕੀ ਕਹਿਤਾ ਸੀ ਨਾ ਹਾਲ ਕੀ ਹੋਇਆ ਸੀ ਸਾਰੀ ਓਵਰ ਦੀ ਮੂ ਲਗਣਾ ਤਾ ਉਰਾ ਉਰੇ ਜੈ ਮਿੱਤਰ ਦੋ ਇੱਕ ਸਾਲ ਸ਼ਤਰੂਆਂ ਮਿੱਤਰੂ ਦੋ ਇੱਕ ਸਾਲ ਨੇ ਅਸਲ 'ਚ ਉਹਦੇ ਵਾਸਤੇ ਕੋਈ ਸ਼ਤਰੂ-ਵਿੱਤਰੂ ਨਹੀਂ। ਗੁਰੂ ਘਰ ਦਾ ਕੋਈ ਸ਼ਤਰੂ ਨਹੀਂ ਨਾ ਕੋਈ ਬਿੱਤਰ ਹੈ। ਗੁਰੂ ਘਰ ਦਾ ਕੋਈ ਸ਼ਤਰੂ ਨਹੀਂ ਨਾ ਕੋਈ ਬਿੱਤਰ ਹੈ। ਸੱਚ ਬੋਲਦਿਆਂ ਜੇ ਕੋਈ ਸ਼ਤਰਤਾ ਸੱਚ ਨਾ ਕਰਦਾ ਉਹ ਕਰਦਾ ਹੈ। ਅਸੀਂ ਤਾਂ ਨਹੀਂ ਕਰਦੇ। ਜੇ ਕੋਈ ਉਪਦੇਸ਼ ਕਰਦੇ ਨਾ ਸ਼ਤਰਤਾ ਕਰਦਾ ਕਰੇ। ਸਾਨੂੰ ਨਹੀਂ ਉਹ ਸ਼ਤਰੂ ਲੱਗਦਾ। ਸਾਨੂੰ ਮੂਰਖ ਲੱਗਦਾ ਛਤਰੂ ਨਹੀਂ ਲੱਗਦਾ ਉਹ ਉਹ ਮੂਰਖਤਾ ਲੱਗਦਾ ਛਤਰੂ ਨਹੀਂ ਲੱਗਦਾ ਸਾਨੂੰ ਮੂਰਖਾ ਛਤਰੂ ਆ ਡੜਤੀ ਜਾਂ ਛਤਰੂ ਉਹ ਆਪਣੇ ਸਾਡਾ ਕਹਾ ਦਾ ਆਪਣਾ ਨੁਕਸਾਨ ਕਰ ਰਿਹਾ ਸਾਡਾ ਕੀ ਨੁਕਸਾਨ ਕਰ ਲੈ ਛਤਰੂ ਕਰਦਾ ਹੁੰਦਾ ਨੁਕਸਾਨ ਨੁਕਸਾਨ ਆਪਣਾ ਕਰ ਰਿਹਾ ਸੀ ਵੀ ਛਤਰੂ ਕੱਲ ਤੇ ਮੰਨ ਗਈ ਅਸੀਂ ਤਾਂ ਉਹ ਆਏ ਕਹਿ ਰਹੇ ਆ ਵੀ ਆਪਣਾ ਨੁਕਸਾਨ ਨਾ ਕਰ ਆਪਣਾ ਜਿਹੜਾ ਜੀਵਨ ਹੈ ਤੇਰਾ ਉਹ ਅਜਾਈ ਨਾ ਕੋ ਉਹ ਕਹਨਾ ਮੈਂ ਕੋਲ ਸਾਡਾ ਸ਼ਤਰੂ ਹੈ ਉਹ ਆਪਣਾ ਸ਼ਤਰੂ ਹੈ ਸਾਡਾ ਨਹੀਂ ਹੈਗਾ ਸਾਡਾ ਕਾਹਦੇ ਸ਼ਤਰੂ ਸਾਡੀ ਗੱਲ ਨਹੀਂ ਬੰਦੀ ਡਾਕਟਰ ਦਵਾਈ ਨਹੀਂ ਖਾਦੀ ਦਾ ਸ਼ਤਰੂ ਉਹ ਡਾਕਟਰ ਕਿਉਂ ਮੰਨੇ ਉਹ ਜਾਇ ਬੋਲਦਾ ਰਹੇ ਡਾਕਟਰ ਨੂੰ ਸ਼ਤਰੂ ਡਾਕਟਰ ਕਹਿੰਦੇ ਮੈਨੂੰ ਡਾਕਟਰ ਨੂੰ ਗੱਲ ਪੱਕਾ ਬਣਾਏ ਪਾਗਲ ਹੈ ਵਿਸ਼ਵਾਸ ਨਹੀਂ ਕਰਦਾ ਅਛਾਏ ਸਰੂਪ ਅਬਚਲ ਅਪਾਰ ਅਛਾਏ ਸਰੂਪ ਸਰੂਪ ਉਹ ਰਖੀਆ ਅੱਛਾ ਐਸੇ ਕਰਕੇ ਉਹ ਨੀਦ ਨਹੀਂ ਹੁੰਦੀ ਐਸੇ ਕਰਕੇ ਨੀਦ ਨਹੀਂ ਹੁੰਦੀ ਅੱਛਾ ਇਸ ਰੂਪ ਅਭੀ ਚੱਲ ਅਭੀ ਚੱਲ ਅਭੀ ਚੱਲ ਅਪਾਰ ਅਪਾਰ ਐ ਅਭੀ ਉਹਦੇ ਅੰਦਰ ਕੋਈ ਪਤਨਵਾ ਚਿੰਤਾਵਰੀ ਹੈ ਅਭੀ ਚੱਲ ਅਡੋਲਤਾ ਐ ਅਡੋਲਤਾ ਪੱਕੀ ਅਡੋਲਤਾ ਸਥਿਰਤਾ ਪੱਕੀ ਐ ਹਰ ਵਕਤ ਅਡੋਲਤਾ ਹੈ ਉਹਦਾ ਮਨ ਚਲਾਇਆ ਵਰਦੀ ਹੈ ਜਿੰਦਾ ਤਾਂ ਨਹੀਂ ਹੁੰਦਾ ਉਹ ਕਬਰਾਉਦਾ ਹੀ ਕਬਰਾੜ ਨਹੀਂ ਉਹਦੇ ਚ ਕੋਈ ਅਬ ਚੱਲ ਅਡੋਲਤਾ ਰਹਦੀ ਹੈ ਅਪਾਰ ਅਡੋਲਤਾ